को ਕਰਤਾਰ ਸ੍ਰੀ ਭਗਤ ਜਿਹੜਾ ਦੇਨ ਬੰਦੂ ਹੈ ਜਿਹਨੇ ਦੇਨ ਆਪਣੇ ਆਪ ਨੂੰ ਗਰੀਬ ਸਮਝਦੇ ਨੇ ਕਮਜ਼ੋਰ ਸੁਪਰੇ ਦੇ ਦੇਨ ਪੈਸੇ ਕਰਕੇ ਨਹੀਂ ਹੁੰਦਾ ਪੈਸੇ ਕਰਕੇ ਦੇਨ ਨਹੀਂ ਜਿਹੜਾ ਆਪਣੀ ਮਾਤਮ ਥੋੜੀ ਸਮਝਦਾ ਹੋ ਦੀ ਪੈਸੇ ਹੋਵੇ ਕੋਲ ਜਿਹੜਾ ਆਪਣੇ ਬੰਦੂ ਨੂੰ ਵੱਡੀ ਸਮਝਦਾ ਚਾਹੇ ਗਰੀਬ ਵੀ ਹੋਵੇ ਉਹ ਕਰੀਏ ਦੀਨ ਦਾ ਮਤਲਬ ਇੱਥੇ ਹੰਕਾਰ ਤੋਂ ਰਹਿਤ ਦਿਨਨ ਕੀ ਬਰਤਪਾਲ ਕਰੇ ਤਾਂ ਜਾਉ ਨਾ ਅੱਗੇ ਸਭ ਜਿਹੜੇ ਸਰੈਂਡਰ ਹੋ ਗਏ ਅੱਗੇ ਦੀਨ ਦੀ ਧਿਆਲ ਆ ਹੋ ਦੀਨ ਤੇ ਹੀ ਧਿਆਲ ਹੈ ਹੰਕਾਰ ਤੇ ਜਾ ਨਹੀਂ ਹੈ ਦੀਨ ਬੰਦ ਦਿਨਾਂ ਦੇ ਯੋਗ ਇਸਤੇਦਾਰ ਦਿਨਾਂ ਨਾਲੇ ਸੰਬੰਧ ਰੱਖਦਾ ਹੋ ਦੀਨ ਦੀ ਉਹ ਬਾਹ ਮੜਦਾ ਡੁਬਦੇ ਦੀ ਸਾਕਤ ਦੀ ਬਾਣੀ ਫੜਦਾ ਸਾਕਤ ਲੜਦੇ ਹੁਣ ਕਿਸੇ ਦੀ ਮਦਦ ਨਹੀਂ ਕਰਦਾ ਉਹ ਸਾਕਤ ਮਦਦ ਨੂੰ ਮੁਗਦਾ ਹੀ ਨਹੀਂ ਉਹ ਬਦਲ ਕਰਦਾ ਨਹੀਂ ਮੁਗੜੋ ਤਾਮਰੀ ਕਰਦਾ ਰੋ ਦੇਨ ਬੰਦੂ ਦੇਨ ਪ੍ਰਵੀਨ ਸ੍ਰੀਪਤ ਪ੍ਰਵੀਨ ਸ੍ਰੀਪਤ ਸ੍ਰੀਪਤ ਜਿਹੜਾ ਹੈਗਾ ਦੇਨ ਬੰਦੂ ਹੈ ਅਰ ਸਾਰ ਕਮਾਂਚ ਪ੍ਰਵੀਨ ਉਹ ਸਭ ਕੁਝ ਉਹਦੇ ਵਸ ਵਿੱਚ ਹੈ ਇਹ ਕੁਝ ਨਹੀਂ ਉਹਦੇ ਵਾਸਤੇ ਬਾਹਰ ਕੁਝ ਹੋਵੇ ਪ੍ਰਵੀਰ ਆ ਸਾਰੇ ਕੰਮਾਂ ਦੇ ਵਿੱਚ ਹਰ ਕੰਮ ਕਰਨ ਦੇ ਕਾਬਲ ਹੈ ਨਿਪੁੰਨ ਪ੍ਰਵੀਰ ਸਰਬ ਕੋ ਕਰਤਾ ਸਾਰਿਆਂ ਦਾ ਕਰਤਾ ਸਾਰਿਆਂ ਦੇ ਬਣਾਉਣ ਵਾਲਾ ਕਰਤਾ ਸਰਤਾ ਹੈ ਸਾਰਿਆਂ ਦਾ ਬਣਾਇਆ ਸਭ ਕੁਝ ਉਹਨੂੰ ਹੀ ਹੈ ਸਾਰਿਆਂ ਦੀ ਬੁੱਧ ਦੀ ਘੜਤ ਵੀ ਉਹਨੂੰ ਘੜੀ ਹੈ ਦੇਖੋ ਬੁੱਧ ਘੜੀ ਹੋਣੇ ਨੇ ਕਹਿੰਦੇ ਬੜੀ ਜਿਹਨੇ ਬਣਾਈ ਉਹਦਾ ਨਾ ਉਹ ਇਹਨਾਂ ਕਣਕੇ ਇੱਥੇ ਤਾਂ ਕਲਿਆਂਦੀ ਆ ਉਹਦੇ ਨਾਲ ਵੀ ਬੜੀ ਸਮਝਦੇ ਨੇ ਆਪਣੇ ਆਪ ਨੂੰ ਪਤਾ ਨਹੀਂ ਨਾ ਗਾਂ ਤੋਂ ਸਖੜਿਆ ਨੂੰ ਕੋ ਚੱਕਰ ਚਿਹਨ ਆਕਾਰ ਚੱਕਰ ਚਿਹਨ ਨਹੀਂ ਉਹਦਾ ਕੋਈ ਆਕਾਰ ਨਹੀਂ ਉਹਦਾ ਕੋਈ ਬਲ ਚਿੰਨ ਤੇ ਬਾਹਰ ਨਾ ਉਹਦਾ ਕੋਈ ਵਰਣ ਹੈ ਚਾਰ ਵੱਲ ਬਣਾਏ ਸੀ ਨਾ ਉਹਨਾਂ ਨੇ ਤੇ ਸ਼ਰੀਰ ਨਹੀਂ ਤਾਂ ਵਰਣ ਹੈ ਜੀ ਸਰੀਰ ਨਹੀਂ ਤੇ ਚੱਕਰ ਜਨ ਹੈ ਜੀ ਸਰੀਰ ਨਹੀਂ ਤਾਂ ਆਕਾਰ ਹੈ ਜੀ ਇਸ ਕਰਕੇ ਜਿਹਦਾ ਦੇਹ ਨਹੀਂ ਹੁੰਦੀ ਉਹਦਾ ਬਲ ਚੱਕਰ ਚ ਕੁਛ ਨਹੀਂ ਹੁੰਦਾ ਬਾਰ ਬਾਰ ਆਇਆ ਹੋਇਆ ਬਾਰ ਬਾਰ ਤਾਂ ਆਇਆ ਕਿ ਇਸ ਗੱਲ ਨੂੰ ਦਿਲ ਕਰ ਲੈਣਾ ਹੁੰਦਾ ਹੀ ਨਹੀਂ ਕਦੇ ਬਧਿ ਹੋ ਜਿਹੜਾ ਕੋਈ ਦੇਵੀ ਦੇਵਤਾ ਉਹਦਾ ਸਰੀਰ ਨਹੀਂ ਹੁੰਦਾ ਦੇਵਤੇ ਦਾ ਵੀ ਸਰੀਰ ਨਹੀਂ ਹੁੰਦਾ ਦੇਵੀ ਦਾ ਵੀ ਸਰੀਰ ਨਹੀਂ ਹੁੰਦਾ ਉਹ ਜਿਹੜੀ ਮੂਰਤੀ ਪੂਜਾ ਉਹਨੂੰ ਖਡੂੜ ਹੋ ਰਹੀ ਆ ਅਸਲ ਵਿੱਚ ਗੱਲ ਇਹ ਮੂਰਤੀ ਪੂਜਾ ਜੰਨਣਾ ਹੋ ਰਹੀ ਔਰ ਕੀ ਹੋ ਰਿਹਾ ਸਾਰੀ ਮੂਰਤੀ ਪੂਜਾ ਤੇ ਝੋਟਾ ਕਲੀ ਕਲੀ ਭਗਤੀ ਦੀ ਮੂਰਤੀ ਪੂਜਾ ਜੇ ਚੱਕਰ ਜਨ ਹੁੰਦਾ ਮੂਰਤੀ ਪੂਜਾ ਜੇ ਵੱਡਣਾ ਜਾਂਦੀ ਹੈ ਇਹ ਮੂਰਤੀ ਪੂਜਾ ਹੀ ਖੰਡਣਾ ਔਰ ਕੁਛ ਨਹੀਂ ਹੈ ਸਾਰਾ ਟਾਰਗੇਟ ਦਸਬਦੀ ਬਾਣੀ ਦਾ ਮੂਰਤੀ ਪੂਜਾ ਤੇ ਆ ਔਰ ਕਸੇ ਤੇ ਬਣੀ ਬਾਕੀ ਦਾ ਸਭ ਨੂੰ ਦੱਸਿਆ ਹੋਇਆ ਆਦ ਵਿੱਚ ਇਹ ਦੁਆ ਦਸਕੇ ਨਾਲ ਚੱਕਰ ਜੂ ਦਸਦੇ ਦੁਆ ਦਸਕੇ ਨਾਲ ਮੂਰਤੀ ਪੂਜਾ ਦੇ ਪ੍ਰਹਾਰ ਕਰਦੇ ਸਾਰਾ ਹੈਈ ਮੂਰਤੀ ਪੂਜਾ ਦੇ ਕਿਉਂਕਿ ਬਹੁਤੀ ਪੂਜਾ ਬਚ ਗਈ ਸੀ ਉਹ ਤਾਂ ਕਹਤਾ ਸੀ ਪਹਨਵੇਂ ਪਰ ਪਾਤੀ ਤੋੜੇ ਬਾਲ ਨਹੀਂ ਪਾਤੀ ਪਾਤੀ ਜਿਓ ਜਿਸ ਪਾਨ ਕੋ ਪਾਤੀ ਤੋੜਣ ਸੋ ਪਹਨਣ ਜਿਓ ਜਿਹੜੇ ਪੱਥਰ ਵਾਸਤੇ ਤੂੰ ਫੁੱਲ ਤੋੜਿਆ ਹੈ ਇਹ ਪੱਤਾ ਤੋੜਿਆ ਹੈ ਪੱਤਾ ਮਿਲਦਾ ਚੜਾਉਦੇ ਨੇ ਮਿਲਦਾ ਪੱਤਾ ਚੜਾਉਦੇ ਨੇ ਸ਼ਿਵਜੀਤ ਤੇ ਉਹ ਪੱਤਾ ਤੋੜਿਆ ਹੈ ਪੱਤਾ ਦਾ ਜਿਉਂਦਾ ਸੀ ਤੂੰ ਤੋੜਿਆ ਸਮਰ ਗਿਆ ਪੱਤਾ ਜਿਹੜੇ ਪੱਥਰ ਵਾਸਤੇ ਪੱਤਾ ਦਾ ਤੋੜਿਆ ਉਹਦੇ ਤੇ ਆਤਮਾ ਰਹੀ ਈ ਸੀ ਜਿਸ ਬਾਹਨ ਕੋ ਪਾਤੀ ਤੋੜਨੇ ਸੋ ਪਾਹਨ ਰਿਓ ਪੂਲੀ ਮਾਰਣੀ ਹੈ ਉਹ ਸਤਗੁਰ ਜਗਦਾ ਹੈ ਕਈ ਦਸੀ ਉੱਥੇ ਗੱਲ ਪਰ ਇੱਥੇ ਬਾਰ-ਬਾਰ ਕਹੀ ਜਾਂਦੀ ਹੈ ਇਹ ਗੱਲ ਜੋਰੇ ਸੇ ਗਲਤੀ ਹੈ ਸਾਰਾ ਜਾਤ ਪਾਤ ਨਾ ਗੋਤਰ ਗਾਥਾ ਰੂਪ ਰੇਖ ਨਾ ਮਰਨ ਨਾ ਕੋਈ ਜਾਤ ਪਾਤ ਹੈ ਨਾ ਉਹਦਾ ਕੋਈ ਗੋਤ ਹੈ ਗੋਤ ਉਹ ਤਾਂ ਸਾਡੇ ਫਰਾਦਰੀਆਂ ਨਾ ਕੋਈ ਉਹਨਾਂ ਦੀ ਗਾਥਾ ਚੱਲਦੀ ਹੈ ਕਹਾਣੀ ਪਿਛਲੀ ਸਾਡੇ ਉਹ ਫਰਾਨਾ ਬਜ਼ੁਰਗ ਸੀ ਜਿਵੇਂ ਰੱਬ ਜਿੱਦ ਦੀ ਚੱਲਦੀ ਹੈ ਉਹ ਚੱਲਦੀ ਹੈ ਭਾਈ ਜੀ ਦਾ ਜਨਮ ਹੋਊ ਉਹਦੀ ਤਾਂ ਗੱਲ ਚੱਲੂਗੀ ਚੱਲੂਗੀ ਗਾਥਾ ਮੁੰਦੀ ਹੈ ਕੁਝ ਸੁਣੀ ਹੋਈ ਕੁਝ ਦੇਖੀ ਹੋਈ ਦੇਖੀ ਹੋਈ ਘਾਟ ਸੁਣੀ ਹੋਈ ਜ਼ਿਆਦਾ ਜਿਹੜਾ ਸਾਡੇ ਬਜ਼ੁਰਗ ਹੋਏ ਨੇ ਦੇਖੇ ਤਾਂ ਇਹ ਨਹੀਂ ਸੁਣੇ ਹੋਏ ਨੇ ਜੋ ਸੁਣੀ ਕੰਨਾਂ ਨੂੰ ਸੁਣੀ ਹੋਈ ਹੈ ਗਾਥਾ ਅੱਖੀਂ ਦੇਖੀ ਹੋਈ ਹੈ ਗਾਥਾ ਜੋ ਖਿੰਦੇ ਕੇ ਗੱਲ ਬੋਲਨੀ ਉਹ ਕਾਥਾ ਹੁੰਦੀ ਹੈ ਜੋ ਕੰਨਾਂ ਨਾਲ ਸੁਣ ਕੇ ਬੋਲੀ ਹੈ ਉਹ ਗਾਥਾ ਹੁੰਦੀ ਗਾਥਾ ਤਾਂ ਆਇਆ ਹੋਇਆ ਲੱਗਦਾ ਹਾਂ ਰੂਪ ਰੇਖਾ ਨਾ ਵਰਨ ਰੂਪ ਰੇਖਾ ਨਾ ਵਰਨਾ ਰੂਪ ਨਾ ਰੇਖਾ ਨਾ ਵਰਣ ਸਰਬਦਾਤਾ ਸਰਬਗਿਆਤਾ ਸਰਭੂ ਕੋ ਭਰਨ ਸਰਬਦਾਤਾ ਸਰਬਗਿਆਤਾ ਸਾਰਿਆਂ ਨੂੰ ਦాతਾਂ ਦੇਣ ਵਾਲਾ ਸਾਰਿਆਂ ਨੂੰ ਜਾਣਨ ਵਾਲਾ ਇਹਨੂੰ ਇਹ ਚੀਜ਼ ਦੀ ਲੋੜ ਹੈ ਇਹਨੂੰ ਇਹ ਚੀਜ਼ ਨਹੀਂ ਦਿੰਦਾ ਮੰਗਦੇ ਅਸੀਂ ਫालतੂ ਉਹ ਚਾਹੇ ਦਿੰਦਾ ਹੋ ਆਪਣੇ ਹਿਸਾਬ ਨਾਲ ਕਿ ਉਹਨੂੰ ਸਮਝ ਹੈ ਸਰਬਗਿਆਤਾ ਸਰਬਗਿਆਤਾ ਹੈ ਸਾਰਿਆਂ ਦੇ ਅੰਦਰ ਦੀ ਗੱਲ ਜਾਣਦਾ ਹੋ ਸਰਵ ਭੂ ਕੋ ਪੜਿ ਅਸਾਰੀ ਧਰਤੀ ਨੂੰ ਉਹਨੇ ਪੜਿਆ ਹੈ ਉਹਦੇ ਆਦੇਹਾਂ ਬਣਾਈ ਹੋਈਆਂ ਨੇ ਉਹ ਹੀ ਪੜਨ ਕਰਦਾ ਉਹ ਹੀ ਰਸ਼ਨ ਪਾਣੀ ਦਾ ਇਤਲਾਮ ਕਰਦਾ ਇਹਨਾਂ ਦਾ ਤੁਸ਼ਟ ਗੰਜਨ ਦੁਸ਼ਟਾਂ ਦੇ ਉੱਤੇ ਦੁਸ਼ਤਾਂ ਦਾ ਨਾਸ ਕਰਨ ਵਾਲਾ ਦੁਸ਼ਕੌਲ ਦੁਸ਼ ਲੇ ਬਕਰ ਅਜਲ ਕਿ ਕਿਸੇ ਆਦਮੀ ਨਾਲ ਨਹੀਂ ਹੁੰਦਾ ਜੇ ਹੰਕਾਰ ਤੇ ਪ੍ਰਹਾਰ ਕਰਦਾ ਤਾਂ ਘਰ ਪਰ ਘਰ ਪਰ ਹਾਰੀ ਲਿਖਿਆ ਨਾ ਆਦਮੀ ਪਰ ਹਾਰੀ ਲਿਖਿਆ ਗਰਭ ਪਰ ਹਾਰੀ ਲਿਖਿਆ ਗਰਭ ਕਿਉਂ ਦੋਲਦਾ ਉਹਨੂੰ ਬਚਾਉਣ ਵਾਸਤੇ ਗਰਭ ਤੋਂ ਉਹਨੂੰ ਅਲੱਗ ਕਰ ਸਮਝਦੇ ਗਰਭ ਖਾਰ ਕਰਨ ਵਾਲੀ ਚੀਜ਼ ਹੈ ਜਿਹਦੇ ਕੋ ਜਿਹਦੇ ਅੰਦਰ ਗਰਭ ਹੈ ਉਸੇ ਨੂੰ ਬੁਖਾਰ ਕਰਦਾ ਜਿਹਨੂੰ ਬੁਖਾਰ ਹੈ ਉਸੇ ਨੂੰ ਤਕਲੀਫ ਹੁੰਦੀ ਡਾਕਟਰ ਟੀਕਾ ਲਾਉਂਦਾ ਦਵਾਈ ਦਿੰਦਾ ਬੁਖਾਰ ਹਟਾਉਣ ਵਾਸਤੇ ਉਹਦਾ ਦੁਖੂਰ ਕਰਨੇ ਵਾਸਤੇ ਗਰਭ ਦੁਖੀ ਕਰਦਾ ਜਿਹਦੇ ਅੰਦਰ ਗਰਭ ਹੈ ਉਹਨੂੰ ਉਹਦਾ ਡਾਕਟਰ ਹੈ ਉਹਦਾ ਗਰਭ ਉਹ ਦੂਰ ਕਰ ਰਿਹਾ ਹੈ ਦਵਾਈ ਦੇ ਦਵਾਈ ਕਹੇ ਜੀ ਕਹੇ ਜੀ ਉਹ ਅਲੱਗ ਹੈ ਆਪਰੇਸ਼ਨ ਹੈ ਠੀਕ ਹੈ ਦਵਾਈ ਹੈ ਗੋਲੀ ਹੈ ਖੱਟੀ ਹੈ ਕੋੜੀ ਹੈ ਇਹ ਮਿੱਠੀ ਹੈ ਉਹ ਅਲੱਗ ਹੈ ਪਰ ਉਹ ਸਿਰਫ ਕੀ ਕਰ ਰਿਹਾ ਗਰਭ ਨੂੰ ਦੂਰ ਕਰ ਰਿਹਾ ਚੋਟ ਮਾਰ ਕੇ ਕਰ ਰਿਹਾ ਹੈ ਜਿਪ ਪਿਆ ਗਿਆ ਝੋੜ ਮਾਰ ਕੇ ਕੱਢਣਾ ਪਊਗਾ ਜਿਪ ਕੱਢਣ ਵਾਸਤੇ ਵੀ ਝੋੜ ਮਾਰਨੀ ਪੈਂਦੀ ਔਰ ਬੜੀ ਝੋੜ ਨਾਲ ਜਿਪ ਪਿਆ ਹੁੰਦਾ ਝੋੜ ਮਾਰ ਕੇ ਕੱਢ ਹੁੰਦਾ ਜੇ ਕੋਈ ਕਹੇ ਵੀ ਝੋੜ ਬੱਜੀ ਤਾਂ ਜਿਪ ਪਿਆ ਦੀ ਇਹ ਝੋਟਾਂ ਫਿਰ ਮਾਰਨੇ ਸਹੀ ਗੱਲ ਹੈ ਸਮਝੋ ਇਹਦਾ ਫਰਕ ਇਹ ਸਮਝੋ ਇਹਦਾ ਫਰਕ ਹੈ ਹੇ ਹਰਤਾ ਸ੍ਰਿਸ਼ਟੀ ਕਰਤਾ ਜਗਤ ਮਹਾਂ ਜਿਹਗਾਤ ਤੁਸ਼ਟ ਜਿਹੜੇ ਦੁਸ਼ਟ ਨੇ ਵਕਾਰ ਨੇ ਸਾਡੇ ਅੰਦਰ ਈਨ ਖਾਤ ਹੋਏ ਸ਼ਿਵਕਾਰ ਕੰਕਰੋ ਲੋਭ ਕ ਇਰਾ ਨੂੰ ਦੂਰ ਕਰਦਾ ਸਾਡੇ ਅੰਦਰ ਉਹ ਅਸਲ ਦੇ ਵਿੱਚ ਦੁਸ਼ਾਰਤਾ ਦਾ ਮਤਲਬ ਇਹ ਹੈ ਉਹ ਕੱਢ ਰਿਹਾ ਸਾਰਿਆਂ ਦੇ ਅੰਦਰੋਂ ਅਸੀਂ ਕਢਾਰ ਹੀ ਦੀ ਆਵਾਜ਼ ਇਹ ਕੁਝ ਕਰ ਰਹੀ ਹੈ ਅੰਦਰ ਸ੍ਰਿਸ਼ਟੀਕਰਤਾ ਸ੍ਰਿਸ਼ਟੀ ਦਾ ਕਰਤਾ ਸ੍ਰਿਸ਼ਟੀ ਨੂੰ ਦੀ ਰਚਨਾ ਕਰਨ ਵਾਲਾ ਬਣਾਉਣ ਵਾਲਾ ਜਗਤ ਮੈਂ ਜਿਹਗਾਤ ਜਿਹਦੀ ਕਹਾਣੀ ਜਗਤੀ ਚਲਦੀ ਹੈ ਹਮੇਸ਼ਾ ਹੀ ਲੋਕ ਇਹੀ ਕਹਿੰਦੇ ਨੇ ਸ਼ੁਰੂ ਤੇ ਕਹਿੰਦੇ ਆ ਇਹ ਇਹ ਸੁਣਿਆ ਹੋਇਆ ਸੀ ਗਾਥ ਸੁਣੀ ਇਹੀ ਕਹਿੰਦੇ ਲੋਕ ਸਾਡੇ ਪੂਤ ਭਾਵੋ ਭਵਿਕ ਦੇਵ ਅਗੰਝ ਪੂਤ ਜੋ ਸੰਗ ਬੀਤ ਗਿਆ ਭਾਵੋ ਹੁੜਿਓ ਚੱਲ ਰਿਹਾ ਹੈ ਜੋ ਹੋਣ ਵਾਲਾ ਸਮਾਂ ਕਿੰਨੇ ਹੀ ਕਾਲਾਂ ਦੇ ਵਿੱਚ ਪ੍ਰਮਾਨ ਦੇਵ ਅਗੰਝ ਬਸ ਇੱਕੋ ਹੀ ਦੇਵ ਹੈ ਉਹ ਇੱਕੋ ਹੀ ਦੇਵ ਹੈ ਜਿਹੜਾ ਅਗੱਜ ਹੈ ਜਿਹਨੂੰ ਕੋਈ ਨਹੀਂ ਜਿੱਤ ਸਕਦਾ ਨਾ ਕੋਈ ਤੋੜ ਸਕਦਾ ਨਾ ਕੋਈ ਉਹਨੂੰ ਨਾਸ ਕਰ ਸਕਦਾ ਨਾ ਕੋਈ ਹਰਾ ਸਕਦਾ ਅਗੱਜ ਹੈ ਉਹ ਸਭ ਨੂੰ ਨਾਸ ਕਰਦਾ ਉਹਨੂੰ ਕੋਈ ਨਿਵਰਸ ਕਰਨ ਵਾਲਾ ਜਮੇ ਨਹੀਂ ਹੁਦਾਈ ਨਹੀਂ ਅਗੱਜ ਹੈ ਆਦੰਤ ਅਨਾਦੀ ਸ੍ਰੀਪਤ ਪਰਮਪੁਰਖ ਅਪੰਜ ਆਦੰਤ ਤੋਂ ਲੈ ਕੇ ਆਦਤੋਂ ਲੈ ਕੇ ਹੁੰਦਾ ਜਦੋਂ ਜੀਵ ਖੰ ਉਦੋਂ ਤੋਂ ਲੈ ਕੇ ਸੁਣਦੇ ਆ ਅਨਾਦੀ ਅਨਾਦੀ ਹੈ ਆਦ ਨਹੀਂ ਹੁੰਦਾ ਜੋਤ ਪੈਦਾ ਹੀ ਨਹੀਂ ਹੁੰਦੀ ਕਦੇ ਜਿਹੜੀ ਚੀਜ਼ ਪੈਦਾ ਨਹੀਂ ਹੋਈ ਅਨਾਦੀ ਹੈ ਜਿਹੜੀ ਪੈਦਾ ਹੋਈ ਹੈ ਉਹ ਆਦੀ ਹੈ ਉਹਦਾ ਆਦ ਹੈ ਜਿਹੜੀ ਪੈਦਾ ਹੀ ਨਹੀਂ ਉਹਦਾ ਆਦ ਹੈ ਅਨਾਦੀ ਦਾ ਮਤਲਬ ਇਹਦਾ ਆਦ ਨਹੀਂ ਦੀ ਕਿਤੋਂ ਸਾਲ ਹੋਈਆ ਕੋਈ ਪਤਾ ਨਹੀਂ ਸਟਾਰਟ ਹੀ ਨਹੀਂ ਹੋਈ ਕਿਤੋਂ ਲੱਲਦੀ ਕਿਸੇ ਨੇ ਦੱਸਿਆ ਹੀ ਨਹੀਂ ਵੀ ਫਲਾਣਾ ਟਾਈਮ ਤੇ ਜੋ ਇਸ ਤਰੀਕੇ ਨਾਲ ਪੈਦਾ ਹੋਈ ਹੈ ਇਸ ਕਰਕੇ ਅਨਾਦੀ ਬਣੀ ਹੋਈ ਹੈ ਸਹੀ ਸ੍ਰੀਪਾਤ ਅਨਾਦੀ ਹੈ ਪਰਮਪੁਰਖ ਹੈ ਆ ਪੰਜ ਇਹ ਗੋਲ ਦੇ ਉਹ ਕਟਿਆ ਨਹੀਂ ਜਾ ਸਕਦਾ ਤੋੜਿਆ ਨਹੀਂ ਜਾ ਸਕਦਾ ਆ ਪੰਜ ਧਰਮ ਕੇ ਅਨਕਰਮ ਜੇਤਕ ਕੀਨ ਜਿੰਨੇ ਵੀ ਧਰਮ ਦੇ ਕਰਮ ਨੇ ਉਹਨਾਂ ਦਾ ਪਸਾਰਾ ਉਸ ਨੇ ਕੀਤਾ ਹੋਇਆ ਲੋਕਾਂ ਬਰੋ ਵਿੱਚ ਧਰਮ ਦਾ ਕੁਝ ਕਰਮ ਹੁੰਦੇ ਨੇ ਜੀਵਾਂ ਦੇ ਵਿੱਚ ਹੁੰਦੇ ਸਾਰੇ ਜੀਵਾਂ ਦੇ ਵਿੱਚ ਜੀਵਨ ਦੇ ਸੁਭਾਅ ਦੇ ਚਾਹੋ ਬ੍ਰਹਮਵਾਰੀ ਵਿਚਰਨ ਜੀਵ ਸਾਰੇ ਦੇ ਸੁਭਾਅ ਦੇ ਉਹਨਾਂ ਨੇ ਵੀ ਕੁਝ ਕਰਮ ਨੇ ਜੀਵ ਜੀਵ ਦਾ ਹਾਲ ਕਰਵੇਂ ਰੂ ਇੱਕ ਦਰਸ ਖੜਾ ਖੜਾਈ ਰਹਿੰਦਾ ਹੈ ਕਰੰਗਵਾਰ ਕੋਈ ਤਾਂ ਦਾ ਰਹਦੇ ਦੋ ਲੱਪਾਂ ਹੁੰਦੀ ਹੈ ਜੀ ਕਿੰਨੇ ਉਹਨੂੰ ਫੁੱਲ ਲੱਗਦੇ ਨੇ ਫਲ ਲੱਗਦੇ ਨੇ ਪੱਤੇ ਲੱਗਦੇ ਨੇ ਕੌਣ ਕੌਣ ਖਾਂਦਾ ਹੈ ਕਿਹਦਾ ਕਿਹਦਾ ਗੁਜ਼ਾਰਾ ਹੈ ਉਸ ਦਰਖਤ ਦੇ ਉੱਤੇ ਤਾਂ ਕਰਮ ਕਰੇ ਰੋਬ ਜੀ ਉਹਦਾ ਵੀ ਧਰਮ ਮਿੱਟੀ ਵਿੱਚੋਂ ਪੈਦਾ ਕਰਕੇ ਸਭ ਕੁਝ ਜੋ ਦੀ ਡਿਊਟੀ ਲਈ ਹੋਈ ਹੈ ਪਰਮੇਸ਼ਰ ਦੀ ਡਿਊਟੀ ਕਰ ਰਹੇ ਡਿਊਟੀ ਕਰਨੇ ਧਰਮ ਖੜਾ ਕਰੇ ਥੜ ਲੱਗਦਾ ਹੋ ਲੱਗਦਾ ਦਰਖਤ ਆਪ ਤਾਂ ਉਹ ਅਰਤਦਾ ਨਹੀਂ ਫੜ ਖੋਲ ਨੂੰ ਜਨਵਰੀ ਉਹ ਬਰਤ ਤੇ ਜੂੜ ਫੜ ਵੀ ਜਨਵਰੀ ਖੰਦੇ ਨੇ ਅਬ ਤੱਕ ਹਨ ਨਹੀਂ ਲੇਕਿਨ ਖੜਾ ਆਪ ਹੈ ਧੁੱਪ ਦੇ ਵਿੱਚ ਕੋਈ ਤਾਂ ਉਹ ਕਹਿੰਦੇ ਨੇ ਜਿਹੜਾ ਦਰਖਤ ਹੈ ਆਪਣੇ ਰੁੱਖਾਂ ਦੀ ਜਿਹੜਾ ਰੁੱਖਾਂ ਪਰਗਾ ਜਿਹ ਚਾਹੀਦਾ ਜਿਹੜਾ ਗੁਰੂ ਗੋਬਿੰਦ ਸਿੰਘ ਜੀ ਰੁੱਖ ਵਰਗਾ ਚਾਹੀਦਾ ਰੁੱਖਾਂ ਦੀ ਜਰਾਣ ਆਬ ਤੋਂ ਪੇਖੜਾ ਕੋਈ ਆਇਸ਼ ਹੋ ਕੁਰੀ ਛੋਦ ਤਾ ਕੋਈ ਦੰਡਾ ਵਾਰਦਾ ਤੇ ਪੱਕੇ ਫਲ ਦੇ ਦਿੰਦਾ ਅੰਕੋ ਕੜਾ ਗਾਲ ਕੜਾ ਦਾ ਦਰਦ ਗਾਲ ਥੋੜੀ ਕਰਦਾ ਕੋਈ ਟਾਣੀ ਵੜ ਲੋ ਤਾਂ ਨਹੀਂ ਕੁਝ ਕਹਿੰਦਾ ਕੋ ਉਹਦੀ ਜबान ਬੰਦ ਕੀਤੀ ਰਹੀ ਤਾਂ ਇਹ ਕੁਝ ਕਹਿਣਾ ਜੋ ਹੁੰਦਾ ਹੋਣ ਦੇ ਕਰ ਇਹ ਭਗਤਾਂ ਦਾ ਸਵਾਲ ਸੀ ਨੇ ਜੋ ਕੇ ਜਿਗਰਾ ਕਰਕੇ ਉਹਨਾਂ ਨੂੰ ਸਹ ਲਿਆ ਰੁਖ ਵੀ ਤਾਂ ਸਹ ਲਿਆ ਤੇ ਰੁੱਖਾਂ ਦੀ ਜਰਾਂ ਤਾਂ ਕਹਿ ਦੇਵ ਅਦੇਵ ਗੰਧਰਵ ਕਿਨਰ ਮਛ ਕਛ ਅਪਾਰ ਦੇਵ ਅਦੇਵ ਦੇਵ ਤੇ ਰਾਕਸ਼ਸ ਨੇ ਉਹ ਧਰਵ ਨੇ ਕਿੰਨਾਂ ਨੇ ਮੱਛ ਕਾਛ ਨੇ અપਾਰ ਮੱਛ ਕਾਣ ਮੱਛ ਕਾਣ ਹੁੰਦੇ ਨੇ ਪਾਣੀ ਦੇ ਵਿੱਚ ਖੜ ਕੇ ਭਗਤੀ ਕਰਨ ਵਾਲੇ ਮੱਛ ਨੇ ਆਦਮੀ ਹੋਣਾ ਹੈ ਉਹ ਮੱਛ ਕਾਹਨ ਨੂੰ ਕਹਿੰਦੇ ਨੇ ਜਿਹੜੇ ਜਲ ਦੇ ਵਿੱਚ ਰਹਿੰਦੇ ਨੇ ਜਿਆਦਾ ਪਾਣੀ 'ਚ ਪਾਣੀ ਦੇ ਖੜ ਕੇ ਭਗਤੀ ਕਰਨਾ ਇੱਕ ਭਗਤੀ ਹੈ ਪਰਾਂਦੇ ਦੀ ਉਹ ਮੱਛ ਕਾਛ ਨੇ ਗਾਣਕੇ ਕੇ ਹਨ ਦੇ ਤੇ ਮੇੜ ਕਨਾਈ ਆ ਚਲ ਕੇ ਮੱਜਨ ਜੇ ਜਗਤ ਹੋਗਾ ਨਾ ਤੇ ਮੇੜ ਕਹਿੰਦੇ ਮੇੜ ਪਾਣੀ ਚ ਰਹਿਗਾ ਉਹ ਪਾਣੀ ਚ ਵੜੇ ਰਹਿੰਦੇ ਸੀ ਲੋਕ ਉਹ ਕਹਿੰਦੇ ਜਲ ਦੇ ਵਿਚ ਰਹਿਣ ਲਾਗਾ ਤੇ ਨਹੀਂ ਹੁੰਦੀ ਉਹਨਾਂ ਵਾਸਤੇ ਮੱਛੀ ਕਾ ਔਰ ਬੱਚਿਆਂ ਡੱਡੂਆਂ ਦੀ ਨਹੀਂ ਗੱਲ ਹੈਗੀ ਇਹਦੇ ਚ ਉਹ ਤਾਂ ਰਹਿੰਦੇ ਹੀ ਨਹੀਂ ਪਾਣੀ ਚ ਉਹਨਾਂ ਦਾ ਕੀ ਹੈ ਆदमी ਤਾਂ ਬਨਾ ਭਗਤ ਕਿਸੇ ਨੂੰ ਉਪਦੇਸ਼ ਦਈਏ ਦਾ ਗੁਰਬਾਣੀ ਵਹਿਜ ਆਦਿ ਨੂੰ ਉਪਦੇਸ਼ ਹੈ ਜੇ ਉੱਥੇ ਮਛਗਾ ਚ ਲਿਖਤਾ ਜੇ ਸੱਪ ਲਿਖ ਦਿੱਤਾ ਜਿਹੜੇ ਥਾਂ ਸੱਪ ਨੇ ਸ਼ਿਵਜੀ ਹੁਣ ਕਹਿੰਦੇ ਥੱਲੇ ਚਲਾ ਗਿਆ ਸੱਪ ਵੀ ਥੱਲੇ ਚਲੇ ਗਏ ਸ਼ਿਵਜੀ ਦੇ ਚੇਲੇ ਸਾਰੇ ਸੱਪ ਨੇ ਸ਼ਿਵਜੀ ਦੇ ਕਾਲੇ ਸੱਪ ਰਹਿੰਦੇ ਹਮੇਸ਼ਾ ਸਭਾ ਆ ਜਾ ਪੱਲੇ ਗਿਆਨ ਆਣੀ ਫਕਾਰੇ ਮਾਰ ਕੇ ਲੋਕਾਂ ਨੂੰ ਰੋਜ਼ਾਨੇ ਐ ਕਰਦਾਂਗੇ ਅਸੀਂ ਫੂਕ ਦਾਂਗੇ ਅਸੀਂ ਸਾਫ ਦੇ ਨਾਲ ਸੱਪੜੇ ਫੱਕਾਰੇ ਨੇ ਔਰ ਕੀ ਫਰਾਟੇ ਮਾਲ ਨੇ ਐਵੇਂ ਡਰਾਉਣ ਵਾਸਤੇ ਸੱਪ ਫੂਕ ਮਾਰਦਾ ਡਰਦਾ ਮਾਰਦਾ ਫੂਕ ਸੱਪ ਉਹੜਾ ਫਰਾਟਾ ਮਾਰਦਾ ਨੇ ਸੱਪ ਜਿਹੜੇ ਲੋਕਾਂ ਨੇ ਸੱਪਾਂ ਦੀ ਸਟੱਡੀ ਕੀਤੀ ਉਹ ਕਹਿੰਦੇ ਡਰਦਾ ਮਾਰਦਾ ਆਜ ਉਹਨੂੰ ਦੇਖ ਕੇ ਮਾਰਦਾ ਡਰਦਾ ਵੀ ਉਹਨੂੰ ਮਾਰੇ ਰਹਾ ਜਿੰਨਾ ਜੇ ਲੋਗ ਆ ਰਹੇ ਵਰਾਟਾ ਨਹੀਂ ਮਾਰਦਾ ਸੌਲੀ ਸਾਲ ਲੈਂਦਾ ਵੀ ਮੇਰਾ ਕੋਈ ਸਾਹ ਨਾ ਸੁਣ ਲਵੇ ਪਰ ਜਿਆਦਾ ਆਦਮੀ ਖੜਾ ਹੋਵੇ ਫੇ ਵਰਾਟੇ ਮਾਰਦਾ ਵਾਸਤੇ ਮਾਰਦਾ ਇਹਨੇ ਨੇ ਜੇ ਕੋ ਡੰਡਾ ਮਾਰਦੇ ਹੋਏ ਸੋਝ ਜਾਂਦੇ ਨੇ ਫਿਰ ਸਭ ਕੀ ਕਰਦਾ ਡੰਡਾ ਮਾਰਦੇ ਕੁਛ ਨਹੀਂ ਉੱਤੇ ਸੋਝ ਜਾਂਦੇ ਉਮ ਆਕਾਸ਼ ਜਲੇ ਜਲੇ ਥਲੇ ਜਲੇ ਥਲੇ ਬ ਚਾਇਆ ਆਕਾਸ਼ ਦੇ ਵਿੱਚ ਚਲੇ ਜਾਓ ਤੁਸੀਂ ਹੋਰ ਕੋਈ ਲੋਕ ਹੋਊਗਾ ਚੈਨ ਦੇਖ ਲਓ ਹੁਕਮ ਸਾਡੇ ਬੰਦੇ ਬਨਿਏ ਜਿਹੇ ਨਾਮ ਦਾ ਮਤਲਬ ਹੁਕਮ ਬਨਦੇ ਨੇ ਪਾਣੀ ਬਨਦੇ ਨੇ ਉਹਦਾ ਮੱਤਰਤੀ ਉਹਦਾ ਹੁਕਮ ਚਾਇ ਪਾਣੀ ਉਹਦੇ ਹੁਕਮ ਚਾਇ ਜਲਦ ਸੂਰਜ ਹਉਦੇ ਹੁਕਮ ਜਿਲੇ ਉਸ ਸਾਰੇ ਪੜੇ ਜਿਲੇ ਹੁਕਮ ਦੇ ਦਿੱਤਾ ਪਹਿਵੇਂ ਚੱਪਲ ਚੱਲੇ ਬਾਹਰ ਸਾਡ ਬਾਪ ਪਹਿਵੇਂ ਚੱਲੇ ਲਖਦ ਰਿਓ ਇਨਾਮਦਾਰ ਤੇ ਤੇ ਹੁਕਮ ਜਿਹਦਾ ਬਾਣਾ ਬੰਨਦੇ ਨੇ ਜਿਹਦਾ ਹੁਕਮ ਬੰਨਦੇ ਨੇ ਉਹ ਨਾਮ ਦਾ ਕੀ ਮਨਣਾ ਹੁੰਦਾ ਕੋਹੋਂ ਦਾ ਕੋਲ ਨਾ ਇੱਕੋ ਨਾਮ ਹੁਕਮ ਹੈ ਇਹ ਤੋਂ ਪਤਾ ਲੱਗਦਾ ਵੀ ਲਿਖਿਆ ਕੀ ਦਾ ਸਾਰੀ ਬਾਣੀ ਗੁਰਬਾਣੀ ਦਾ ਅੰਸਾਰ ਹੈ ਬਾਣੀ ਇਹ ਜਿਹੜਾ ਹੋ ਲੋ ਦੁਸ਼ਟ ਹਰਤਾ ਪੁਸ਼ਟ ਕਰਤਾ ਸ੍ਰਿਸ਼ਟੀ ਹਰਤਾ ਕਾਮ ਤੇ ਕੰਮ ਕੀ ਹੈ ਇਹਦਾ ਦੁਸ਼ਟ ਹਰਤਾ ਉਹ ਗੜਾਂ ਨੂੰ ਦੂਰ ਕਰਨਾ ਪੁਸ਼ਟ ਕਰਤਾ ਤੰਦਰੁਸਤ ਬਣਾ ਦੇਣਾ ਬਿਮਾਰੀਆਂ ਦੂਰ ਹੋ ਗਈ ਆਦਮੀ ਤੰਦਰੁਸਤ ਹੋ ਗਿਆ ਸ੍ਰਿਸ਼ਟੀ ਬਿਮਾਰੀਆਂ ਨੇ ਨਾ ਉਹ ਬਿਮਾਰੀਆਂ ਨੇ ਆਤਮਾ ਤੰਦਰੁਸਤ ਹੋ ਜਾਂਦੀ ਹੈ ਸਿਰਜ ਕਰਤਾ ਸ੍ਰਿਸ਼ਟੀ ਹਰਤਾ ਕਾਮ ਸ੍ਰਿਸ਼ਟੀ ਹਰਤਾ ਕਾਮ ਫਿਰ ਬਾਕੀ ਜਿਹੜੀ ਸੈਸ ਪੈਦਾ ਕੀਤੀ ਹੈ ਜਿਹਨੇ ਆ ਸਰੀਰ ਬਣਾਏ ਨੇ ਇਹਨਾਂ ਨੂੰ ਮਾਰਨਾ ਵੀ ਹੋ ਸਕਦਾ ਸਬਟਣਾ ਵੀ ਹੋ ਸਕਦਾ ਇਹ ਉਹਦਾ ਕਾਬੂ ਜੋ ਪਜੋਸੋ ਬਿਰਸਾ ਪਰ ਅੱਜ ਦੇ ਕਾਲ ਹੁਕਮ ਨਾਲੇ ਚੰਬਦੇ ਨੇ ਤੇ ਹੁਕਮ ਨਾਲੇ ਬਰਦੇ ਵੀ ਨੇ ਹੁਕਮ ਨਾਲੇ ਸਵਾਰੇ ਵੀ ਹੁਕਮ ਨਾਲੇ ਜਾਂਦੇ ਨੇ ਸਵਾਰਤਾ ਵੀ ਹੁਕਮ ਪੈਦਾ ਵੀ ਕਰਦਾ ਤੇ ਮਾਰਦਾ ਵੀ ਪਰ ਜੇਦਾ ਸਬਰ ਜਾਂਦਾ ਉਹ ਤੇ ਬਾਅਦ ਫਿਰ ਦੁਬਾਰਾ ਜਨਮ ਲੈ ਕੇ ਦੁਬਾਰਾ ਸਮਾਰਦਾ ਦੁਸ਼ਤ ਹਰਨਾ ਸ੍ਰਿਸ਼ਟੀ ਕਰਨਾ ਦਿਆਲਾਲ ਗੋਬਿੰਦ ਦੁਸ਼ਤ ਹਰਨਾ ਸ੍ਰਿਸ਼ਟੀ ਕਰਨਾ ਦੁਸ਼ਤ ਆਨੂ ਹਰਨਾ ਕਰਨਾ ਸ੍ਰਿਸ਼ਟੀ ਦੀ ਰਚਨਾ ਕਰਨਾ ਦਿਆਲਾਲ ਗੋਬਿੰਦ ਇਹ ਕੰਮ ਹੈ ਦਿਆਲਾਲ ਗੋਬਿੰਦ ਦਾ ਦਿਆਲ ਹੈ ਲਾਲ ਹੈ ਗੋਬਿੰਦ ਦਾ ਇਹ ਕੰਮ ਹੈ ਇਹ ਕੰਮ ਲਗਿਆ ਹੋਇਆ ਆਪਣੇ ਉਹ ਆਪਣਾ ਕੰਮ ਕਰੀ ਜਾਂਦਾ ਸੀ ਕਰੀਏ ਜਹਲੂਰੀ ਅਤੇ ਉਹਦਾ ਚੇਤਨ ਕਰੀਏ ਜੈਨੋ ਜਰੀ ਉਹ ਆਪਣੇ ਕੰਮ ਲੱਗਿਆ ਹੈ ਉਹਦਾ ਆਪਣੇ ਕੰਮ ਹੀ ਇਸ ਕੰਮ ਤੋਂ ਕੋਈ ਭਲਾ ਨਹੀਂ ਸਕਦਾ ਨਾ ਭੁੱਲੇ ਕਿਸੇ ਦਾ ਭਲਾਇਆ ਇਹਦੋਂ ਕੋਈ ਉਹਦਾ ਧਿਆਨ ਹਟਾ ਨਹੀਂ ਸਕਦਾ ਬਿਲਕੁਲ ਵੀ ਮਿੱਤਰ ਪਾਲਕ ਸ਼ਤਰ ਘਾਲਕ ਦੀਨ ਦਿਆਲ ਮੁਕੰਦ ਮਿੱਤਰਾਂ ਨੂੰ ਉਹਦੀ ਪਾਲਣਾ ਕਰਦਾ ਹੈ ਮਿੱਤਰ ਦਾ ਕੀ ਮਤਲਬ ਹੈ ਜਿਹੜਾ ਸਬਦਾ ਮਿੱਤਰ ਹੈ ਉਹਦਾ ਮਿੱਤਰ ਹੋਊ ਉਹ ਸਭ ਦੇ ਵਿੱਚ ਉਹ ਸਭ ਦੇ ਵਿੱਚ ਆ ਉਹਦਾ ਮਤਰਪੁਰਾ ਜਿਹੜਾ ਸਭ ਦਾ ਮਤਰ ਉਹ ਜਿਹੜਾ ਸਭ ਦੇ ਵਿੱਚ ਉਹ ਹੈ ਇੱਕ ਦੇ ਨਾਲ ਵੀ ਮਿੱਤਰਤਾ ਦੀ ਦੁਸ਼ਤਰੂਤਾ ਹੋਣੀ ਹੋ ਗਈ ਫਿਰ ਮਿੱਤਰ ਪਾਲਕ ਹੈ ਸ਼ਤਰੂ ਕਾਲਕ ਸ਼ਤਰੂ ਦਾ ਅਨੁਸਾਰ ਕਾਲ ਵਾਲਾ ਮਿੱਤਰ ਕੌਣ ਹੁੰਦਾ ਗੋਲਮੇ ਤਲ ਨੇ ਆਗਣ ਛਤਰੂ ਨੇ ਬਸ ਇੱਥੇ ਹੀ ਗੱਲ ਹੈ ਗੁਣਾ ਆਗਣਾਂ ਦੀ ਲੜਾਈ ਜਲਦੀ ਕੇ ਆਦਮੀ ਕਿਸੇ ਦੀ ਕੋਈ ਲੜਾਈ ਨਹੀਂ ਹੈ ਬਈ ਕਹਿ ਦੀ ਲਾਈ ਲੋਭ ਕਰਕੇ ਕਹਿ ਦੀ ਲੜਾਈ ਹੰਕਾਰ ਕਰਕੇ ਮੈਂ ਵੜਾ ਅ ਸੇਟ ਮੈਂ ਜਿੱਤਣੀ ਹੈ ਚੌਧਰ ਮੈਂ ਲੈਣੀ ਐ ਸਪੱਟ ਮੈਂ ਵੜਨਾ ਐ ਪਹਿਲੇ ਮੈਂ ਵੜਨਾ ਇਡੜਾ ਗਿਆ ਨਾ ਹੋਬੇ ਲੜਾਈ ਗਿਆ ਨਾ ਲੋਭ ਦੀ ਲੜਾਈ ਹੈ ਇਹ ਲੋਭ ਦੀ ਲੜਾਈ ਮੈਂ ਲੈਣੇ ਨੇ ਪੈਸੇ ਦੀ ਲੜਾਈ ਦੀ ਲੜਾਈ ਕਬਜ਼ੇ ਦੀ ਲੜਾਈ ਹੈ ਹੀ ਲੜਾਈ ਹੈ ਪੰਮ ਪੰਮ ਦੀਨ ਦੇ ਆਲ ਮੁਕੰਦ ਦੀਨ ਦੇ ਆਲ ਮੁਕੰਦ ਦੀਨ ਦਿਆਲਾ ਹੋ ਉਕੰਦ ਮਿੱਤਰਪਾਲ ਦਾ ਪਾਲਣ ਕਰਨਾ ਹੈ ਸ਼ਤਰੂ ਦਾ ਔਗੜਾਂ ਦੇ ਦਨਾਸ ਕਰਦਾ ਗੁਣਾ ਦਾ ਪ੍ਰਗਾਸ ਕਰਦਾ ਗੁਣਾ ਨਹੀਂ ਰੱਖੀ ਕਰਦਾ ਅਗੋ ਦੰਡਨ ਦੁਸ਼ਟ ਖੰਡਨ ਕਾਲ ਹੋਂ ਕੇ ਕਾਲ ਅਗੋ ਦੰਡਨ ਅਗੋ ਅਗ ਪਾਪ ਹੁੰਦੇ ਆ ਕੇ ਉਧਰ ਪਾਪ ਨਹੀਂ ਅਸਲ ਚ ਹੁੰਦੇ ਪਾਪ ਕਹਤੇ ਪਤਾ ਨਹੀਂ ਲੱਗਦਾ ਜਿਹੜੀ ਸਾਡੇ ਅੰਦਰ ਕਲਪਨਾ ਨੇ ਦੂਜੇ ਦਾ ਹੱਕ ਮਾਰਨ ਦੀ ਇੱਛਾ ਜ਼ਿਆਦਾ ਲੈਣ ਦੀ ਇੱਛਾ ਸਾਡੀ ਹਰ ਇੱਛਾ ਅਗ ਪਾਪ ਹਰ ਇੱਛਾ ਸਿਰਫ ਇੱਕ ਇੱਛਾ ਛੱਡ ਕੇ جے اوئے چھ کسی جت پھر دوی اور کوئی اچھہ بھی ہے۔ ایک کائ چھ چھڈ کے باقی ساری اچھاں دے پا پڑے۔ اوئے چھا کڑی ادب دی بھوک، جناب دی اچھہ جڑی، اینو چھڈ کے باقی ساری اچھاں اگن۔ جندیاں بھی اچھاں سادے اندر۔ چاہے کدی چنگیاں ہوو۔ چاہے اے ہووے وی میں بہت بڑا یگ کر دے۔ ਬੇਰੀ ਲਾੜੀ ਨਿਕਲਿਆ ਵੇ ਮੈਂ ਇਨਾ ਬੜਾ ਪਰਦਾ ਕਰਨਾ ਹੀ ਵੀ ਪਾਪ ਹੈ ਇਹ ਵੀ ਪਾਪ ਹੈ ਇੱਕ ਕਸਰ ਬਗਲ ਛੱਡ ਕੇ ਸਾਕੀ ਸਭ ਆ ਗਿਆ ਪਾਪ ਮਾਇਆ ਬੜਾ ਕੰਮ ਕਰਨਾ ਹੈ ਤਾਂ ਮੇਰਾ ਹੰਕਾਰ ਹੈ ਇਹਦੇ ਪਿੱਛੇ ਤਾਂ ਮੇਰਾ ਹੰਕਾਰ ਹੈ ਮੈਂ ਜੋ ਕਰਨਾ ਨਾ ਜਦੋਂ ਲੋਕ ਜਾਣੇ ਮੈਂ ਕੁਝ ਕਰਦਾ ਤਮ ਲੋਕ ਗਰਭ ਜੋਨ ਮੇਂ ਫਿਰਦਾ ਇਦਾਂ ਹੰਕਾਰ ਹੈ ਇੱਕ ਕੰਮ ਛੱਡ ਕੇ ਬਾਕੀ ਸਾਰੇ ਹੀ ਹੰਕਾਰ ਨੇ ਸਾਰੇ ਹੀ ਅਪਰਾਧ ਕੀ ਬਣਿਆਗਾ ਫਿਰ ਤੂੰ ਨਾਮ ਦੀ ਛਾ ਛੱਡ ਕੇ ਦੋ ਨਾਂ ਛੋਟਾ ਹੀ ਬਣੇਗਾ ਨਾਮ ਦੀਪਕ ਦਾ ਮਿਲੇ ਤੋਂ ਸਭ ਤੋਂ بڑا ਬਣੇਗਾ ਸਭ ਤੋਂ بڑا ਹੋ ਕਿਸੇ ਚੀਜ਼ ਨਾਲ ਨਹੀਂ ਬਣ ਸਕਦਾ ਉੱਥੇ ਵੀ ਬੂਰਖ ਹੈ ਫਿਰ ਅਗਿਆਨਤਾ ਦੋ ਹੀ ਛਾ ਜਾਂ ਅੰਤ ਦੀ ਗੱਲ ਹੈ ਅਗਿਆਨਤਾ ਵਾਲਾ ਵੀ ਇਥੇ ਰਹੋਗੇ ਸੰਸਾਰ 'ਚ ਇਹ ਸਾਰੀਆਂ ਇੱਛਾ ਨੁਕਸਾਨ ਕਾਬਲ ਪਾਪ ਦੀ ਸਜ਼ਾ ਕੀ ਹੈ ਪਾਪ ਦੀ ਸਜ਼ਾ ਇਹ ਸੰਸਾਰ ਤੋਂ ਬਾਹਰ ਨਹੀਂ ਜਾ ਸਕਦਾ ਜਿਹੜੇ ਰਹੂਗਾ ਜਿਹਨਾਂ ਜਿਹੜੇ ਪਾਪੀ ਅਪਰਾਧੀ ਹੈ ਜਿਹੜੇ ਬਾਹਰ ਨਹੀਂ ਜਾਣ ਦੇਣਗੇ ਨਾਮ ਦੀ ਭੁੱਖ ਤੋਂ ਬਿਨਾ ਹੋਰ ਕੋਈ ਵੀ ਜਿਹੜੀ ਇੱਛਾ ਹੈ ਉਹ ਪਾਪ ਹੈ ਅਪਰਾਧ ਹੈ ਬਸ ਜਿੱਦਣ ਇਹ ਗੱਲ ਸਮਝ ਆ ਗਈ ਉਦੋਂ ਜਿਹੜਾ ਸੰਸਾਰ ਦੀ ਭੁੱਖ ਤਿਆਗੇ ਪਹਿਲਾਂ ਨਹੀਂ ਜਾਗਣੀ ਕਿਸੇ ਨੇ ਜਿੰਨਾਂ ਇਹ ਗੱਲ ਸਮਝ ਚਾਗੀ ਉਦੋਂ ਸ਼ਾਇਦ ਇਹਦੀ ਸਲਾਹ ਵੱਲ ਜਪੇ ਵੀ ਹੁਣ ਛੱਡ ਲਈਏ ਇਹਨੂੰ ਜੇੜ ਜੇ ਰੱਖਣ ਦਾ ਕਾਰਨ ਦੀ ਭੁੱਖ ਤੋਂ ਬਿਨਾਂ ਭੁੱਖਾਂ ਦੇ ਪੱਕੀ ਸਾਰੀਆਂ ਆਸ ਰੱਖੋ ਮਨੁੱਖਾਂ ਬਾਹੇ ਕਿ ਕੋਈ ਆਸ ਰੱਖੋ ਮੁੱਝ ਦੂਜੀ ਨਾਲ ਰੱਖ ਲਿਓ ਕਿਤੇ ਕੋਈ ਹੋਰ ਕੇਵਲੇ ਕਾਸ ਰੱਖੋ ਬੁੱਲਦੇ ਵਿੱਚ ਦੂਜੀ ਨਹੀਂ ਰੱਖਣੀ ਕੋਈ ਹੋਰ ਉਹਦੀ ਆਮ ਦੀ ਹਾਂ ਅਬਰ ਆਸ ਅਗੋ ਦੰਡਨ ਦੁਸ਼ਟ ਖੰਡਨ ਕਾਲ ਦੰਡਨ ਆ ਜਿਹੜੀਆਂ ਹੋਰ ਹੋਰ ਆਸ ਹੋਰ ਆਸ ਨਾਮ ਨੂੰ ਛੱਡ ਕੇ ਅਗੋ ਇਹ ਅਗੋ ਹੈ ਪਾਪ ਹੈ ਇਹਦੇ ਤੇ ਸੱਟ ਵੱਜਣੀ ਹੋ ਬਜਣੀ ਹੈ ਜਿੰਨਾ ਚਿਰ ਇਹ ਆਸ ਨਹੀਂ ਟੁੱਟਦੀ ਤੋੜਨ ਵਾਸਤੇ ਸੱਟ ਮਾਰਦੇ ਨੇ ਇਹ ਕੀ ਹੈ ਜਦੀਰ ਗੱਲ ਚ ਪਈ ਹੋਈ ਨਾਨਕ ਔਗੜ ਜੇ ਤਰੇ ਤੇ ਤੇ ਗਲੀ ਜੰਜੀਰ ਜੇ ਜਦੀਰ ਕੱਟਣੀ ਹੋਵੇ ਤਾਂ ਸਟ ਆ ਹੱਥੜੀ ਲੱਗੀ ਹੈ ਕਿਸੇ ਹੁੰਦਾ ਫਿੱਟ ਹੋਇਆ ਹੋਇਆ ਕੜਾ ਵੱਡਾ ਹੋਵੇ ਹੱਥ ਕਿਤੇ ਅੜਾਉਣਾ ਬਹੁਤ ਤਕਲੀਫ ਹੱਥਰੂ ਵੀ ਹੁੰਦੀ ਹੈ ਗੁੱਟ ਨੂੰ ਹੁੰਦੀ ਹੈ ਕੜਾ ਵੱਡ ਵੇਲੇ ਕਾਇ ਵੱਡਾ ਕੜਾ ਕਨਾਂ ਵਜ ਕੇ ਚਲਾਇ ਜਾ ਰਹੀ ਕਿ ਹੱਥ ਨਾਲ ਵੱਢੇ ਮੇਰੀ ਬਾਹ ਨਾਲ ਵੱਢੀ ਜਾ ਫਿੱਟ ਜਿਆ ਜ਼ਿਆਦਾ ਜੇ ਜੀਰਾ ਕੱਟਣ ਵਾਸਤੇ ਵੀ ਤਕਲੀਫ ਹੁੰਦੀ ਐ ਜਿਹਦੇ ਜੀਰਾ ਨੇ ਉਹਨੂੰ ਨਾਂ ਦਾ ਉਗੜ ਤੇ ਤੜ ਗਈ ਜੀ ਵੀਰ ਉਹ ਜੀਰਾ ਕੱਟਣ ਵਾਸਤੇ ਉਹਨੂੰ ਡੰਡ ਦੇਣ ਡੰਡ ਜੀਰਾ ਦੇ ਉੱਤੇ ਚੋਟ ਪੈਂਦੀ ਆ ਨਾ ਉਹਨੂੰ ਪ੍ਰੇਮ ਕਰਦਾ ਉਹ ਕਰਦਾ ਉਹ ਬਹੁਤ ਐ ਚੋਟ ਪੈਂਦੀ ਐ ਫਿਰ ਚੋੜਦਾ ਬਹੁਤ ਐ ਪੈਂਦੀ ਐ ਬੋਲੀ ਚੋੜ ਨੂੰ ਮਹਿਸੂਸ ਹੁੰਦੀ ਐ ਅਗੋ ਦੰਡਨ ਦੁਸ਼ਟ ਖੰਡਨ ਕਾਲ ਹੁੰਕੇ ਕਾਲ ਅਗੋ ਦੰਡਨ ਕਿਵਾ ਦੁਸ਼ਟ ਕਰਨ ਅਸਾਂ ਦੇ ਵਿੱਚ ਖੰਡਨ ਕੀ ਕਰ ਰਹੇ ਆਂ ਅੰਦਰੋਂ ਪਾਪ ਪਾਪ ਕਰਨ ਕਰ ਰਹੇ ਕਰ ਰਿਹਾ ਜੁਨਾਈਰ ਬੁਖਾਰ ਅੰਦਰ ਆ ਦਵਾ ਲੈਣੀ ਪਊਗੀ ਗੋਲੀ ਜੋ ਕਹਿੰਦਾ ਮੇਰੇ ਤਾਂ ਹਲਕ ਤੇ ਡਿੱਗਰ ਦੀ ਹਲਕ ਪੱਕਾ ਕਹਿੰਦਾ ਕੁਝ ਪੱਕਿਆ ਹੋਵੇ ਇਹ ਟੀਕਾ ਲੱਗੂਗਾ ਯਾ ਭਾਈ ਪਊਗੀ ਵਰੀ ਦੀ ਵਰਜੇ ਦੀ ਰੇਜ ਉਹ ਕਰਨਾ ਹੀ ਪਊਗਾ ਜਿਹਨਾਂ ਜਰੋ ਮਾਰੀ ਹੈ ਕਾਲ ਹੋ ਕਾਲ ਹੋ ਕੇ ਕਾਲ ਕਾਲ ਹੋ ਕਾ ਜੋ ਕਾਲ ਹੈ ਕਰ ਕੇ ਖਾਲੂ ਕੋ ਕਾਲ ਇਹ ਜਿਹੜੇ ਔਗਣੇ ਤੇਰਾ ਕਾਲ ਆ ਇਹਨਾਂ ਦਾ ਕਾਲ ਹੋ ਆਪ ਸਾਡੇ ਔਗਣ ਸਾਡਾ ਕਾਲ ਓਏ ਔਗੜਾਂ ਦਾ ਕਾਲ ਆ ਹੋ ਔਗੜ ਵਰ ਜਾਣਗੇ ਤੂੰ ਬਰਨ ਨਹੀਂ ਫਿਰ ਬਾਅਦ ਚ ਜਿੰਨਾ ਚਿਰ ਔਗੜ ਨੇ ਨਜ਼ਰੇ ਵਰਤ ਲੈ ਕਾਲੂ ਕੋ ਕਾਲ ਤਾਂ ਕੇ ਉਨਾਬ ਦਾ ਕਾਲ ਉਪਕਾ ਕਾਲ ਹੈ ਜਦੋਂ ਨਾ ਮਿਲ ਗਿਆ ਤੇਰੇ ਆਕਰਣੇ ਜਿਹੜੇ ਜਿਹੜੀ ਤੇਰੀ ਕਲਪਨਾ ਨੂੰ ਸਾਡੀ ਜਿਹੜੀ ਇੱਛਾ ਕਲਪਨਾ ਸਾਡਾ ਕਾਲ ਹੈ ਇੱਛਾ ਨੂੰ ਖਤਮ ਕਰ ਦਿੰਦਾ ਉਧਰ ਪੈਦਾ ਨਹੀਂ ਹੁੰਦੀ ਇਹਦਾ ਕਾਲ ਫੈਦਾ ਹੀ ਨਹੀਂ ਹੁੰਦਾ ਇਹ ਕਾਲ ਪੈਦਾ ਹੁੰਦਾ ਹੀ ਨਹੀਂ ਕਾਲ ਨੂੰ ਜੱਪਣਾ ਹੀ ਬੰਦ ਕਰਨ ਦਾ ਕਾਲ ਕਲਪਨਾ ਹੈ ਕਾਲ ਹੈ ਸਾਡਾ कल्पना है तो कल्पना बंद गलती लोड़ है ये कल्पना है ही नहीं बंद की ने कर आप ही कल्पना बंद कर लिए ता फिर इजराइल फिर फरिश्ता उण की लोड़ है चल पंडे कहानी नहीं के करना ठि आज के करना ठि आज हु उण का इजराइल प्रेत ने की लोड़ है मेरी कल्पना बंद कर दी आगे बहुत उण की लोड़ है ਉਹ ਜਿਹਨਾਂ ਨਾਲ ਦਾ ਨਕਾ ਬੰਦ ਕਰ ਲਿਆ ਉਹਨੂੰ ਦੋ ਵਾਰ ਨੂੰ ਕਿਲੋੜਾ ਦੀ ਮਦਦ ਆਉਣ ਦੀ ਉਹ ਤਾਂ ਉਹਦੇ ਬੰਦ ਹੁੰਦਾ ਨਹੀਂ ਤਾਂ ਦੂਜਾ ਬੰਦ ਕਰ। ਬੰਦ ਕਰ ਲਿਆ ਪਹਿਲੇ। ਆਪਣਾ ਪਹਿਲਾਂ ਮੰਨ ਕੀਤਾ ਹੋਇਆ ਅੱਜ ਜਦ ਕਿ ਲਿਖਿਆ ਨਾ ਹੁਣ ਕਹਿੰਦਾ ਕੀ ਕਰਨਾ ਹੋਊਗਾ ਉਹ? ਉਡੀਓ ਦੀ ਲੋੜ ਹੈ ਕਿ ਜਾਈਲ ਫਰੇਸ ਤੇ ਦੀ। ਉਹ ਕਾ ਮੈਂ ਆਵੇ ਕਰ ਲਿਆ। ਜੋ ਕੀ ਕੀ ਕਰਦੇ ਨੇ ਕਲਪਨਾ ਬੰਦ ਕਰਦੇ ਨੇ। ਕਲਪਨਾ ਬੰਦ ਹੋ ਜੇ ਬੋਤਲ ਆ ਜਾ ਉਹ ਤਾਂ ਪਹਿਲਾਂ ਕੋਈ ਇਲਾਜ ਨਹੀਂ ਬੋਤਲ ਮੋਤ ਤਾਂ ਕਲਪਨਾ ਸਾਡੀ ਆਪਣੀ ਬਹੁਤ ਹੈ ਅਸੀਂ ਬਹੁਤ ਪੈਦਾ ਕਰਦੇ ਆ ਆਪਣੇ ਅੰਦਰ ਰੋਜ਼ ਹਰ ਬਖਤ ਮੋਤੇ ਪੈਦਾ ਕਰਿਆ ਤੂੰ ਆਪਣੇ ਅੰਦਰ ਜਿੰਨੀ ਇਛਾਵਾਂ ਨੇ ਉਹ ਹੀ ਹੈ ਸਾਡੀ ਮਾਇਆ ਦੀਆਂ ਛਾਵਾਂ ਰੋਜ਼ ਪੈਦਾ ਕਰ ਰਹੇ ਅੰਦਰ ਇਹ ਤਾਂ ਬਹੁਤ ਹੈ ਤੁਸੀਂ ਇਹ ਗੱਲ ਨਹੀਂ ਸਮਝੀ ਸਾਨੂੰ ਵੀ ਬਹੁਤ ਪੈਦਾ ਕਰਦੇ ਆ ਅਸੀਂ ਆਪ ਆਪਣੀ ਹੇ ਸਰਬਹਰਤਾ ਸਰਬ ਸੰਦੁਸ਼ਟ ਹਰਨੰਗ ਪੁਸ਼ਟ ਕਰਨੰ ਸਰਬਕੇ ਪ੍ਰਤਪਾਲ ਦੁਸ਼ਟਨ ਨਾਸ ਕਰਦਾ ਉਹ ਤਾਂ ਕਿ ਅਸੀਂ ਤੰਦਰੁਸਤ ਹੋ ਜਾਈਏ ਬੇਸ਼ਕ ਬਲ ਤੇ ਪੁਸ਼ਟ ਕਰਨੰ ਪੁਸ਼ਟ ਕਰਵਾਤੇ ਸਰਬਕੇ ਸਾਰਿਆਂ ਦਾ ਕੀ ਕਰਦਾ ਹਸਪਤਾਲ ਦੇ ਵਿੱਚ ਰੋ ਕਨਾਰ ਦਾ ਰਸ ਕਾਰਦਾ ਬਦਲਤਾ ਦਰੁਸਤ ਪੜਾ ਰਿਹਾ ਮੇਰਾ ਵੈਦ ਗੁਰੂ ਗੋਬਿੰਦਾ ਹਰ ਹਰ ਨਾਮ ਜਮ ਕੇ ਕਾ ਬੰਦਾ ਘਟਦਾ ਜਮ ਕਈ ਬੰਦਾ ਘਟ ਰਿਹਾ ਹੈ ਉਹ ਹੈ ਸਰਬ ਕਰਤਾ ਸਰਬ ਹਰਤਾ ਸਰਬ ਤੇ ਅਨ ਸਰਬ ਕਰਤਾ ਸਾਰਿਆਂ ਨੂੰ ਬਣੋੜ ਵਾਲਾ ਸਰਬ ਹਰਤਾ ਮਾਰਨ ਵਾਲਾ ਵੀ ਹੋਈ ਹੈ ਸਾਰਿਆਂ ਨੂੰ ਸਰਬਤੇ ਅਨਕਾਮ ਸਰੀਰ ਦੇ ਨਾਲ ਜੋੜਦਾ ਵੀ ਹੋ ਐਸੇ ਨੂੰ ਤੋੜਦਾ ਵੀ ਹੋ ਅਰ ਸਾਰਬਤੇ ਅਨਕਾਮ ਹੈ ਕਿਸੇ ਤੈਨੂੰ ਗਰਜ ਵੀ ਕੋਈ ਨਹੀਂ ਹੈ ਕਿਸੇ ਤੈਨੂੰ ਗਰਜ ਨਹੀਂ ਹੈ ਉਹਨੂੰ ਵੀ ਕੋਈ ਉਹਦੇ ਬਦਲੇ ਕੋਈ ਲੈਂਦਾ ਨਹੀਂ ਕਿਸੇ ਤੇ ਬਿਤਾਉਂ ਕਰਦਾ ਸਾਡਾ ਇਹਨੂੰ ਕਾਬੂ ਲੋ ਕੋਈ ਗਰਜ ਨਹੀਂ ਉਹਨੂੰ ਇਸ ਸੇਵਾ ਕਰਦਾ ਇਸ ਕੰਮ ਤਾਂ ਇਕਬੀਰ ਕਹਿੰਦਾ ਸੇਵਾ ਕੋ ਦੋ ਉਪਲੇ ਇੱਕ ਕਸਮ ਤੇ ਕਰਾਂ ਐ ਜੀ ਸੇਵਾ ਕੌਣ ਕਰ ਲੂ ਕੋਈ ਕਰ ਲੂ ਇਹ ਸੇਵਾ ਐ ਸੱਚ ਇਹ ਨਿਸਕਾਮ ਸੇਵਾ ਔਰ ਗੜੀ ਇਹ ਨਿਸਕਾਮ ਸੇਵਾ ਵੱਕੇ ਸਭ ਪਖੰਡ ਬਾਕੀ ਸਭ ਪਖੜਨਾ ਇਸ ਕਾਮ ਹੋਣਾ ਤਾਂ ਮੁਕਤੀ ਦਾ ਜੀਵਨ ਮੁਕਤ ਅਵਸਥਾ ਇਸ ਕਾਮ ਹੋ ਜਾਣਾ ਜੀਵਨ ਮੁਕਤ ਅਵਸਥਾ ਇਹ ਨਿਸਕਾਮ ਸੇਵਾ ਦੇ ਉਹ ਬੋਲ ਰਹਾ ਫਿਰ ਉਰ ਪਤਾ ਹੀ ਨਿਸਕਾਮ ਹੁੰਦਾ ਕੀ ਜੋ ਨਿਸਕਾਮ ਹੋ ਗਿਆ ਉਹਨੂੰ ਸੇਵਾ ਦੀ ਲੋੜ ਨਹੀਂ ਐ ਮੈਂ ਕਰਨ ਦੀ। ਨਿਸਕਾਮ ਸੇਵਾ ਜਿਹੜਾ ਕਹਿੰਦਾ ਸੇਵਾ ਹੀ ਤਾਂ ਇਹ ਕਰਦਾ ਉਹੀ ਤਾਂ ਹੰਕਾਰ ਹੈ ਵਿਚੋਂ ਦੇ ਸੇਵਾ ਦੇ ਥੱਲੇ ਹੰਕਾਰ ਹੈ ਪੜਦੇ ਤੇ ਥੱਲੇ। ਸੇਵਾ ਦਾ ਕਰਦਾ ਪਰਮੇਸ਼ਰ ਤੂੰ ਕਿੱਥੋਂ ਕਰਦਾ? ਉਹ ਤੱਕ ਦਾ ਦੂਪਲੇ ਤਸੰਤ ਕਰਾਂ ਜੇ ਤੂੰ ਕਰਦਾ ਤਾਂ ਕਰੀਂ ਤੂੰ ਪਰਮੇਸ਼ਰ ਦੇ ਬਰਾਬਰੀ ਕਰਨਾ ਚਾਹੁੰਦਾ। ਇਸ ਕਾਮ ਸੇਵਾੜੇ ਨੂੰ ਨਹੀਂ ਪਤਾ ਸੀ ਕਹਿ ਕੀ ਰਹੇ ਹੋ ਪੁਰਖ ਨੇ ਗੁਰਬਾਨ ਦੀ ਸਮਝ ਨਹੀਂ ਨਾ ਕਿਸੇ ਨੇ ਦਿੱਤੀ ਨਾ ਉਹਨਾਂ ਨੂੰ ਹੈ ਵਿੱਚ ਛੁਪਿਆ ਆ ਹੰਕਾਰ ਇਹਦੇ ਥੱਲੇ ਪਰਦੇ ਤੇ ਥੱਲੇ ਹੰਕਾਰ ਤੂੰ ਕਰੀਂ ਇਹ ਕਾਮ ਸੇਵਾੜੇ ਹੰਕਾਰੀ ਨੇ ਇਹਨਾਂ ਕਹਿੰਦੇ ਨਿਕਾਲੂ ਸਾਰੇ ਹੰਕਾਰੀ ਜਦੋਂ ਲਗ ਜਾਣੇ ਮੈਂ ਕੁਛ ਕਰਤਾ ਸੇਵਾ ਕਰਦੇ ਰਹੇ ਨਾ ਤਬ ਲਗ ਗਰਮਜੋੜ ਵਿੱਚ ਫਿਰਦਾ ਗਰਮਜੋੜ ਤੇ ਨਹੀਂ ਰਹਿੰਦੇ ਸਾਰੇ ਕੋਈ ਨਹੀਂ ਜਾ ਸਕਦਾ ਬਾਹਰ ਸਰਬਖੰਡਨ ਸਰਬਦੰਡਨ ਸਰਬਕੇ ਨਿਜਪਾਮ ਸਰਬਖੰਡਨ ਕਰਤੇ ਨਾ ਕਰਨੋਂ ਇਸ ਕਾਮ ਸੇ ਵਾਲੇ ਇਹ ਬ੍ਰह्म ਗਿਆਨ ਸਭ ਨੂੰ ਖੰਡਨ ਕਰ ਦਿੰਦਾ ਇਸ ਕਾਮ ਸੇ ਵਾਲੇ ਵੀ ਖੰਡਲ ਹੋਗੇ ਹੋਗੇ ਰਹੋਗੇ ਸਰਬਖੰਡਲ ਹੋਗੇ ਸੇ ਵਾਲੇ ਨਾਲ ਵਧੀਆ ਕੌਣ ਹੋਊਗਾ ਕੋਈ ਵੀ ਨਹੀਂ ਲੋ ਖੰਡਲੇ ਵੀ ਹੋਗੇ ਐ ਸਰਬਖੰਡਨ ਹੋ ਜਾਂਦਾ ਉਹ ਵੀ ਉਹਨਾਂ ਚੋਂ ਵੀ ਦੁਸ਼ਤਤਾ ਕੱਢ ਕੇ ਬਾਹਰ ਰੱਖਤੀ ਉਹ ਦੁਸ਼ਤਤਾ ਇੱਥੇ ਭਈ ਤੁਹਾਡੀ ਤੋ ਸ਼ਿਤਾ ਦੇ ਗੀਵ ਯਾ ਤੇ ਭੇਦੋ ਸ਼ਿਤਾ ਥਲੇ ਜਿਸ ਕੰਮ ਕਿਉਂ ਘਾਉਣੇ ਹੋ ਕਿਉਂ ਬੋਲ ਲਿਆ ਇਹ ਵੀ ਹੰਕਾਰ ਦਾ ਦੂਆ ਰੂਪ ਇਹਦੇ ਥਲੇ ਹੰਕਾਰ ਛੁਪਿਆ ਹੋਇਆ ਹੈ ਖੰਡਨ ਹੋਗੇ ਸਰਬ ਖੰਡਨਾ ਨਾ ਸਰਬ ਦੰਡਨ ਸਰਬ ਦੰਡਨ ਦਰੜ ਮਿਲ ਗਿਆ ਲੈ ਜਿਸ ਕੰਮ ਸੇਵਾਲੇ ਐ ਦਰਨ ਦੇ ਦਦਾ ਹੋ ਇਹ ਵੀ ਦਰਨ ਦੇ ਲੈ ਕੇ ਨੇ ਏ ਵੀ ਗੇੜਾ ਜੰਮਣ ਬੰਦ ਦੇ ਵਿੱਚ ਇਹ ਦੰਦਲੇ ਸਰਬ ਕੈ ਨਿਜ ਭਾਮ ਸਰਬ ਕੈ ਨਿਜ ਭਾਮ ਸਾਰਿਆਂ ਦਾ ਉਹ ਆਪਣਾ ਹੀ ਬਗਾਨਾ ਕਿਸੇ ਦਾ ਨਹੀਂ ਹੈ ਸਾਰੇ ਉਹਦੇ ਨੇ ਉਹ ਸਾਰਿਆਂ ਦੇ ਪਛਾਲਣ ਦੀ ਲੋੜ ਹੈ ਬਸ ਕੱਲ ਪਛਾਲਣ ਦੀ ਹੈ ਕਿਸੇ ਨਾਲ ਉਹਦਾ ਇਹ ਕਾਹਦਾ ਐਸਾ ਹੈ ਉਹ ਆਪਣੇ ਮਨ ਕੇ ਸਾਰਿਆਂ ਨੂੰ ਕਰਨ ਦਾ ਇਹਨਾਂ ਵਿੱਚੋਂ ਬੁਰਾਈ ਬੁਰਾਈ ਨਹੀਂ ਰੰਗਣੀ ਉਹ ਆਪਣੇ ਨੇ ਨਾ ਆਪਣੇ ਦੇ ਵਿੱਚ ਬੁਰਾਈ ਨਹੀਂ ਸਕਦਾ ਜੇ ਕਿਸੇ ਨੂੰ ਦੁਆ ਸਮਝਦਾ ਹੋਵੇ ਲੱਗੇ ਬੁਰਾਈ ਹੈਗੀ ਉਹਦੇ ਵਾਸਤੇ ਸਰਬ ਭੁਗਤਾ ਸਰਬ ਯੁਗਤਾ ਕਰਮ ਪਰਵੀਨ ਸਰਬ ਭੁਗਤਾ ਸਰਬ ਯੁਗਤਾ ਸਾਇਆ ਨੂੰ ਹੀ ਉਹ ਰੈਸ਼ਨ ਪਾਣੀ ਦੇਣਾ ਆਤਮਕ ਲੈਵਲ ਤੇ ਵੀ ਦੇਣਾ ਸਰੀਰਕ ਲੈਵਲ ਤੇ ਵੀ ਦੇਣਾ ਸਰੀਰ ਜਦੋਂ ਬਣਾਏ ਨੇ ਅਸਲ ਨੇ ਤਾਂ ਆਤਮਕ ਲੈਵਲ ਤੇ ਉਹ ਰੈਸ਼ਨ ਦੇਣ ਦੀ ਲੋੜ ਹੈ ਪਰ ਆਤਮਕ ਲੈਵਲ ਤੇ ਰੈਸ਼ਨ ਬਿਲਦਾ ਨਹੀਂ ਜੇ ਸਰੀਰ ਨਾ ਹੋਵੇ ਉੱਥੇ ਪਹੁੰਚਦਾ ਨਹੀਂ ਹੈ ਤ੍ਰਿਕਾ ਸਰਬ ਸਰੀਰ ਤੋਂ ਹੀ ਉਹ ਆਤਮਾ ਨੂੰ ਡਵੈਲਪਮੈਂਟ ਹੁੰਦੀ ਹੈ ਉਡੀ ਬੁੱਧੀ ਦੀ ਵੱਲ ਬੰਦੇ ਜੇ ਤੋਂ ਪਹਿਲਾਂ ਹੋ ਨਹੀਂ ਸਕਦੀ। ਕਾਟਾ ਵੱਧ ਦਾ ਸਰੀਰ ਠੇ। ਸਰੀਰ ਤਾਂ ਤਾਲ ਦੇਣਾ ਪਿਆ ਉਹਦੀ ਬੁੱਧੀ ਦੀ ਡਿਵੈਲਪ ਕਰਦੀ ਸੀ। ਸਰੀਰ ਤਾਂ ਤਾਲ ਲੋੜ ਹੈ। ਇਹ ਤਾਂ ਲੋੜ ਸੀ। ਅਸਲ ਦੇ ਵਿੱਚ ਬੁੱਧੀ ਡਿਵੈਲਪ ਕਰਦੀ। ਜੇ ਉਹਦਾ ਖੁਰਾਕ ਨਾ ਖਾਧੀ ਨਬਲੀ। ਸਰੀਰ ਦਾ ਕੀ ਫਾਇਦਾ ਹੋਇਆ? ਕੁਝ ਵੀ ਨਹੀਂ। ਇਸ ਕਰਕੇ ਦੋਏ ਪ੍ਰਕਾਰ ਦੀ ਹੋ। ਖੁਰਾਕ ਦੇ ਹੈ। ਸਰੀਰ ਦੀ ਵੀ। ਆਤਮਾ ਦੀ ਵੀ। ਆਤਮਾ ਦੀ ਅੰਦਰੋਂ ਆਤਮਾ ਦੀ ਅੰਦਰੋਂ ਹੀ ਦੇ ਰਹੀ ਹੈ ਅੰਤਰਾਤਮਾ ਦੀ ਆਵਾਜ਼ ਉਹ ਤਾਂ ਆਤਮਾ ਦੀ ਖੁਰਾਕ ਦੇ ਰਹੀ ਹੈ ਸਰੀਰ ਦੀ ਖੁਰਾਕ ਵਰ ਰਹੀ ਹੈ ਤ ਸਰਬਭੁਗਤਾ ਸਰਬਜੁਗਤਾ ਸਰਵਕਰਮਪ੍ਰਵੀਨ ਸਰਬਜੁਗਤਾ ਹਰ ਜੁਗਤੀ ਨਾਲ ਭੁਗਤਾ ਹੈ ਸਾਰਿਆਂ ਨੂੰ ਦੇ ਰਿਹਾ ਹਰ ਜੁਗਤੀ ਨਾਲ ਸਾਰਿਆਂ ਨੂੰ ਭੁਗਤਾ ਹੈ ਅੱਖਾਂ ਨਾਲ ਹੀ ਵੀ ਜਾਣਦੇ ਰਿਹਾ ਗੱਨਾ ਰਹੀ ਵੀ ਗਿਆਨ ਵੱਲ ਰਿਹਾ ਸਾਨੂੰ ਜਿ ਇਬਰਾਹੀਮ ਗਿਆਨ ਵਲ ਹੈ ਪੰਜ ਗਿਆਨ ਦਰਹਿਣਾ ਪੰਜ ਆਹ ਜੋ 6 ਬਲਕੇ ਆ ਰਹੇ ਹੋ ਗਿਆਂ ਤੇ ਸਹਿਯੁਕਤੀ 6 ਯੁਕਤੀਆਂ ਬਣਾਈਆਂ ਸਾਰੇ ਕਰਮਾਂ ਚ ਪਰਵੀਨ ਕਿਸੇ ਦੋਨੇ ਨੂੰ ਕੋਈ ਕੰਬ ਕਰਾਉਣਾ ਪੈਂਦਾ ਕੋਈ ਰੱਖਿਆ ਨਹੀਂ ਉਹ ਕੋਈ ਐਸਪਾਰਟ ਦੀ ਲੋੜ ਨਹੀਂ ਪੈਂਦੀ ਉਹਨੂੰ ਕਿਸੇ ਦੀ ਕਿਸੇ ਤੇ ਨਿਰਭਰ ਨਹੀਂ ਕਰਦਾ ਉਹ ਸਰਗੋਖੰਡਨ ਸਰਬ ਦੰਡਨ ਸਰਬ ਕਰਮ ਅਧੀਨ ਸਾਰਿਆਂ ਨੂੰ ਹੰਡਲ ਕਰਦਾ ਕੋਈ ਨਹੀਂ ਬਚਿਆ ਹੋਤਾ ਇਹ ਖਡੂੜੂ ਸਰਬ ਦੰਡਨ ਸਰਬ ਦੰਡੂ ਸਾਰੇ ਉਹ ਡੰਡ ਦੇ ਰਿਹਾ ਸਰਬ ਕਰਮ ਅਧੀਨ ਸਾਰੇ ਕਰਮ ਉਹਦੇ ਅਧੀਨ ਆਪ ਕਰਦਾ ਸਾਰੇ ਕੰਮ ਦੰਡ ਵੀ ਆਪ ਦਿੰਦਾ ਰੱਖਿਆ ਵੀ ਆਪ ਕਰਦਾ ਸਾਰੇ ਕੰਮ ਆਪ ਪਰ ਇਸ ਕਰਕੇ ਸਾਰੇ ਕਿਸੇ ਉਹ ਕੋਈ ਕੰਮ ਕਿਸੇ ਤੋਂ ਨਹੀਂ ਕਰਾ ਰਿਹਾ ਜਿੱਤੇ ਕੋਈ ਕੰਮ ਦੂਏ ਤੋਂ ਕਰਾਉਂਗਾ ਆਪਣੀ ਮਰਜ਼ੀ ਨਾਲ ਕਰ ਦਿੰਦਾ ਸਰਕਾਰਾਂ ਕਿਉਂ ਫੇਲ ਹੁੰਦੀਆਂ ਨੇ ਆਪਣੀ ਮਰਜ਼ੀ ਨਾਲ ਇੰਦਰ ਅਨੰਦਪੁਰ ਸਾਹਿਬ ਨਹੀਂ ਸੀ ਕਹਿੰਦਾ ਔਰੰਗਜ਼ੇਬ ਇਬਦੌਦਾਰੀ ਨਾਲ ਵੀ ਹਮਲਾ ਹੋਵੇ ਹਮਲਾ ਕਰਤਾ ਲੈਣ ਥੱਲੇ ਵਾਲੇ ਕਰ ਦਿੰਦੇ ਨੇ ਸਰਕਾਰ ਨਹੀਂ ਚਾਹੁੰਦੀ ਹੁੰਦੀ ਕੋਈ ਅਧਿਕਾਰੀ ਜਾਤੀ ਕਰੇ ਕਰਦੇ ਨੇ ਲੋਕ ਸਰਕਾਰੀ ਬੀਸੀਓ ਤੋਂ ਪਾਵਰ ਕਰਦੇ ਨੇ ਆਪਣੇ ਅਹੁਦੇ ਦਾ ਇਸਤੇਮਾਲ ਗਲਤ ਕਰਦੇ ਨੇ ਕੀ ਕਰੇ ਜੋ ਕਿਸੇ ਤੇ ਕੰਮ ਕਰਾਉਂਦਾ ਉੱਥੇ ਕਮਜ਼ੋਰੀ ਰਹਿੰਦੀ ਹੈ ਇਸ ਕਰਕੇ ਉਹ ਕਿਸੇ ਤੋਂ ਕੰਮ ਕਰਾਉਂਦਾ ਹੀ ਨਹੀਂ ਕਿਸੇ ਤੇ ਭਰੋਸਾ ਕਰਦਾ ਹੀ ਨਹੀਂ ਤਾਂ ਉੱਥੇ ਕੋਈ ਗੜਵੜੀ ਪੈਣਾ ਹੁੰਦੀ ਸਰਬ ਸਿਮਰਤਨ ਸਰਬ ਵੇਦ ਵਿਚਾਰ ਸਾਰੀਆਂ ਸਿਮਰਤੀਆਂ ਸਾਰੇ ਸ਼ਾਸਤਰ ਸਰਬ ਵਿਚਾਰ ਸਾਰੇ ਵੇਦ ਵਿਚਾਰ ਕੇ ਦੇਖ ਲੈ ਜੇ ਵਿਚਾਰੀਏ ਸਾਰਿਆਂ ਨੂੰ ਕਿਕਰ ਦਾ ਕੀ ਹੈ ਵਿੱਚੋਂ ਦੁਸ਼ਟ ਹਰਤਾ ਵਿਸ਼ਵ ਭਰਤਾ ਆਦ ਰੂਪ ਆਫਾ ਆ ਨਿਕਲਦਾ ਵਿੱਚੋਂ ਜੇ ਸਾਰਿਆਂ ਨੂੰ ਆਹੀ ਨਿਕਲਦਾ ਵਿੱਚੋਂ ਦੁਸ਼ਟ ਹਰਤਾ ਵਿਸ਼ਵ ਭਰਤਾ ਸਾਰੇ ਵਿਸ਼ਵ ਨੂੰ ਨੇ ਪਰਿਆ ਵਿਸ਼ਵ ਨੂੰ ਸਾਰੇ ਜੀਵ ਬਣਾਏ ਵੀ ਉਹਦੇ ਹੋਏ ਨੇ ਉਹ ਖਰਾਕ ਵੀ ਉਹ ਨਹੀਂ ਪਹਿਲਾਂ ਕੀਤੀ ਜੇ ਸਾਰੇ आदि ਰੂਪ अपार आदि रूप है जड़ा अपार रूप है जड़ा आदि ओने कीता है ए सारे इस गल ते सहमत ने स्मृतियां भी सहमत ने शास्त्र भी सहमत ने वेद भी सहमत ने और गल्ला जाके ਖੰਡ ਕੀ ਹੈ ਦੋ ਚਿੱਤੀ ਨਹੀਂ ਹੁੰਦੀ ਉਹਦੇ ਚ ਕਦੇ ਵੀ। ਜੇ ਚਿੱਤੀ ਨਹੀਂ ਹੁੰਦੀ ਆਪ ਕਰਾਂ ਗਰਾਂ ਜ਼ਰਾ। ਨਾ ਨਾ ਦੋ ਚਿੱਤੀ ਦਾ ਘਾਟਾ ਖਲਾਲੇ ਚ ਹੁੰਦੀ ਹੈ। ਉਹਦੇ ਖਲਾਲੇ ਦੋ ਚਿੱਤੀ ਹੁੰਦੀ ਹੋਣੀ। ਜਿੱਦਾਂ ਦੋ ਚਿੱਤੀ ਐਕਸੀਡੈਂਟ ਹੋ ਸਿੰਘ ਉਹਦਾ। ਜੇ ਡਾਕਟਰ ਦੋ ਚਿੱਤੀ ਜਾ ਜਵਿਆ ਲੇਕਿਨ ਨਾ ਮਰ ਨਾ ਮਰ ਉਹ ਅਕਲ ਕੱਟ। ਉਹ ਸਮਝ ਨਹੀਂ ਆਈ ਉਸ ਉਹਦਾ ਕੰਫੀਡੈਂਸ ਹੱਲ ਗਿਆ। ਉਹਦਾ ਕੰਫੀਡੈਂਸ ਨਹੀਂ ਹੁੰਦਾ ਕਦੇ ਵੀ। ਅਖੰਡ ਰਹੇ ਤਾਂ ਚਿੱਤ ਹੀ ਪੈਦਾ ਹੀ ਨਹੀਂ ਹੁੰਦੇ ਤੇ ਚਿੱਤੀ ਦਾ ਜੀਵਾਂ ਚ ਸਾਡੇ ਚ ਤੇ ਚਿੱਤੀ ਉਹ ਬਿਮਾਰੀ ਹੈ ਹੋਰ ਕੀ ਹੈ ਜਿਨ੍ਹਾਂ ਜੇ ਬਿਮਾਰੀ ਹੈ ਦੋ ਟੋਟੇ ਨੇ ਢਾਲ ਹੈ ਜੇ ਇੱਕ ਆਇਆ ਆ ਕੇ ਮੇ ਜਾਊਗੀ ਉਹ ਇੱਕ ਚ ਦੁਚਿੱਤੀ ਨਹੀਂ ਹੁੰਦੀ ਤੇ ਜੱਤੇ ਕੀ ਦੋਈ ਥੂਨ ਗਰਾਂਡੀ ਉਹ ਬਲੈਂਡਰ ਟੁੱਟਾ ਆ ਜਾ ਦੀ ਜਿਹੜੀ ਬੋਨਾਲੀ ਸੁ ਥੱਬੀ ਘਰ ਪਵੇ ਨਾ ਬੰਦ ਕਾਬੂ ਚ ਹੁੰਦਾ ਤਾਂ ਤਾਂ ਪੈਦਾ ਹੁੰਦੀ ਹੈ ਉਮਾ ਆਕਾਸ਼ ਜਲੇ ਥਲੇ ਮਹਿਨ ਜਾਪਦ ਜਾਪ ਅਮੰਡ ਉਹ ਉਹਦੇ ਵਿੱਚ ਆਕਾਸ਼ ਜਲੇ ਥਲੇ ਸਾਰੇ ਜਾ ਉਹਨੂੰ ਸੁਭਜਨ ਦੀ ਕੋਸ਼ਿਸ਼ ਕਰ ਰਹੇ ਨੇ ਜਪੇ ਜਾਪਦਾ ਬਦਲੇ ਉਹਨੂੰ ਜਾਣਨ ਦੀ ਕੋਸ਼ਿਸ਼ ਹੋ ਰਹੀ ਹੈ ਹਰ ਜੀਵ ਉਹਨੂੰ ਜਾਣਨ ਦੀ ਕੋਸ਼ਿਸ਼ ਕਰ ਰਿਹਾ ਹੈ ਚੜਦੇ ਜਾਂਦੇ ਨੇ ਕਾਹਦੇ ਵਾਸਤੇ ਜਾ ਰਹੇ ਨੇ ਉਹ ਚਾਹੇ ਥੱਲੇ ਵਾਲੇ ਨੇ ਚਾਹੇ ਉੱਤੇ ਵਾਲੇ ਨੇ ਜਾ ਉਹਦੇ ਵੱਲੋਂ ਜਾ ਰਹੇ ਨੇ ਜਿਹੜੇ ਜਾ ਰਹੇ ਨੇ ਉਹਦੇ ਵੱਲੋਂ ਕਾਹਦੇ ਵਾਸਤੇ ਜਾ ਰਹੇ ਨੇ ਉਹਨੂੰ ਸੁਭਜਨ ਦੇਖਣ ਵਾਸਤੇ ਜਾ ਰਹੇ ਨੇ ਜਾਣਨ ਵਾਸਤੇ ਜਾ ਰਹੇ ਨੇ ਜਾਣੇ ਰਹੇ ਨੇ ਸਮਝ ਲੋ ਸਭ ਦੀ ਗੱਲ ਕਰ ਰਹੇ ਨੇ ਸਾਰੇ ਆਪਣੇ ਆਪ ਨੂੰ ਜਾਣਨ ਵੱਲ ਜਾ ਰਹੇ ਨੇ ਸਾਰੇ ਲੋਕ ਆਤਮਾ ਕੀ ਹੈ ਇਹਦਾ ਦਰਸ਼ਨੇ ਕਰਨ ਜਾ ਰਹੇ ਨੇ ਸਾਰੇ ਜੀਵ ਬਹੁਤ ਪਿੱਛੇ ਨਾਲ ਗਈ ਕਈ ਅੱਗੇ ਜੀ ਕਈ ਜੂ ਨਾ ਪਿੱਛੇ ਲੱਗਈ ਹੁੰਦਾ ਕਰ ਹਜ਼ਾਰ ਕਿਲੋ ਤੇ ਕੋਈ ਸਥਾਨ ਹੈ ਜਿੱਥੇ ਜਾਣਾ ਸੰਗ ਕੋਈ ਅਜ ਤੁਰਿਆ ਕੋਈ ਲੈ ਲੈ ਬੋ ਜਿਆ ਕੋਈ ਰਾਜਾ ਕੋਈ ਪਿੱਛੇ ਕੋਈ ਅੱਗੇ ਇਹ ਇਹ ਗੱਲ ਜੁਨਾਂ ਦੀ ਹਜੂਰ ਨੂੰ ਰਖੀ ਹੈ ਜੁਨੀਆਂ ਹੋਰ ਕੀਤੇ ਇਹ ਗੱਲ ਜੁਨੀਆਂ ਜਿਹੜਾ ਗਲਤੀ ਕਰਦਾ ਔਰ ਪਿੱਛੇ ਕਰ ਉਹਨੇ ਜਾ ਕੇ ਕੋਈ ਗਲਤੀ ਕਰਦਾ ਜਿਹੜਾ ਕਿਸੇ ਰਾਜ ਚ ਉਹ ਫਿਰ ਗੜੋਂ ਕਲਾਨ ਨੂੰ ਵਿਸ਼ੇ ਕਰਦ ਨੂੰ ਚੱਕੇ ਉੱਤ। ਅਜੀ ਸਿਸ਼ਟਾਚਾਰ ਵਿਚਾਰ ਜਿੱਤੇ ਜਾਨੀਆਂ ਸਭ ਚਾਰ। ਸਿਸ਼ਟਾਚਾਰ ਦੇ ਜਨੇ ਵਿਚਾਰ ਦੇਦੋ। ਸਿਸ਼ਟਾਚਾਰ ਹੁੰਦਾ ਇੱਕ ਦੂਏ ਨਾਲ ਪ੍ਰੇਮ ਭਾਵਨਾ ਰਹਿਣਾ ਸਿਸ਼ਟਾਚਾਰ ਕਹਿੰਦੇ। ਸਾਰਿਆਂ ਨਾਲ ਪ੍ਰੇਮ ਭਾਵ ਪੈਦਾ ਕਰਨਾ ਔਰ ਪ੍ਰੇਮ ਭਾਵਨਾ ਰਹਿਣਾ। ਸੱਚ ਬੇਲਜੋਲ ਕਰਕੇ ਰਹਿਣਾ, ਬੇਲਜੋਲ ਪੈਦਾ ਕਰਨਾ ਸਿਸ਼ਟਾਚਾਰ ਹੈ। ਸਾਰਿਆਂ ਦਾ ਬੇਲ ਬਣਾਪ ਵਧਾਉਣਾ ਮੇਲ ਮਿਲੋ ਗੁਲਾਬ ਵਧਾਉਣ ਦੀ ਗੱਲ ਕਰਦੀ ਸੁਭਜੋੜਾ ਭਾਈ ਮੇਲ ਮਿਲ ਆਪਣਾ ਇਸੇ ਸਤਾ ਜਾ ਰਿਹਾ ਐਸਾ ਕੋਈ ਮੋਹ ਬੋਲ ਨਹੀਂ ਬੋਲਣਾ ਐਸਾ ਕੋਈ ਕਰਮ ਨਹੀਂ ਕਰਨਾ ਜਿਹਦੇ ਨਾਲ ਕੋਈ ਝਗੜਾ ਕਿਸੇ ਕਿਸਮ ਦਾ ਪੈਦਾ ਹੋਵੇ ਕਿਸੇ ਤੇ ਬੰਦੇ 60 ਦੁੱਖ ਪਹੁੰਚੇ ਕਲੇਸ਼ ਵਧੇ ਐਜਾ ਕੁਝ ਕਰਨਾ ਹੀ ਨਹੀਂ ਸੋਚਣਾ ਨਹੀਂ ਐਸਾ ਇਹਨੂੰ ਸੇਸਤਾ ਜਾਰ ਕਹਿੰਦੇ ਜਾਨੀ ਸਬਚਾਰ ਅਸਲ ਜਿ ਸਿਸ਼ਟਾਚਾਰ ਦਾ ਸ੍ਰਿਸ਼ਟੀ ਦਾ ਅਚਰਣ ਕਿਹਦਾ ਹੈ ਸ੍ਰਿਸ਼ਟੀ ਚਾਹੀਦਾ ਹੈ 14 ਵਾਲੀ ਹੈ ਜੇ ਸ੍ਰਿਸ਼ਟੀ ਦੇ ਸਾਰੇ ਮੁਕਤ ਹੋ ਗਏ ਜੇ ਸੱਚਾ ਜਾੜ ਹੋ ਜਵੇ ਨਾ ਮੁਕਤੀ ਦਾ ਮਾਰਗ ਹੈ ਸਿਸ਼ਟਾਚਾਰ ਜੇ ਸਿਸ਼ਟਾਚਾਰ ਜੀ ਨੂੰ ਸਮਝ ਆ ਗਿਆ ਮੁਕਤੀ ਦੇ ਮਾਰਗ ਤੇ ਚੱਲ ਪਿਆ ਜਾਨੀਏ ਸਭ ਚਾਲ ਸਿਸ਼ਟਾਚਾਰੀ ਵਾਲਿਆਂ ਦੀ ਭਗਤ ਭਗਤ ਨੇ ਉਹੀ ਚਾਲ ਕਿਸੇ ਦਾ ਹੱਕ ਖੋਲ ਨਹੀਂ ਉਹਨਾਂ ਦੇ ਅੰਦਰ ਚੀਜ਼ ਪੈਦਾ ਹੀ ਪੈਦਾ ਹੁੰਦੀ ਬੁਰੇ ਦਾ ਵੀ ਭਲਾਈ ਕਰਦੇ ਨੇ ਸਿਸ਼ਟਾਚਾਰ ਹੈ ਸਿਸ਼ਟਾਚਾਰ ਜਾਨੀਏ ਸਭ ਚਾਲ ਸਿਸ਼ਟਾਚਾਰ ਵਿਚਾਰ ਜਿੱਤੇ ਜਾਨੀਏ ਸਭ ਵਿਚਾਰ ਇਹ ਇਹ ਜਿਹੜੇ ਸਿਸ਼ਟਾਚਾਰ ਦੇ ਜਿੰਨੇ ਵਿਚਾਰ ਨੇ ਇਹ ਅਚਰਣ ਆਦਮੀ ਦਾ ਘੜ ਵਾਲੀ ਨੇ ਅਸਲ ਦੇ ਵਿੱਚ ਇਹ ਬੱਤਾਂ ਨੇ ਜਿਹੜੀਆਂ ਜਿੱਦੀਆਂ ਵੀ ਬੱਤਾਂ ਨੇ ਇਸ ਸਿਸ਼ਟਾਚਾਰ ਦੇ ਨੇ ਸਾਨੂੰ ਤਾਂ ਚੰਗਾ ਆਦਮੀ ਬਣਨ ਦੀਆਂ ਦਿੰਦੀਆਂ ਨੇ ਸਾਨੂੰ ਬਣਦੇ ਆ ਨਾ ਬਣਦੇ ਜਿਹੜੇ ਕਹਿੰਦੇ ਨੇ ਉਹ ਉਹ ਵੀ ਉਹ ਖਾਲੂ ਬਣਦੇ ਨੇ ਨਹੀਂ ਬਣਦੇ ਅਮਲ ਕਰਦੇ ਨੇ ਨਹੀਂ ਕਰਦੇ ਗੱਲ ਅਲੱਗ ਆ ਪੱਤਾ ਸਾਰੀਆਂ ਸਿਸ਼ਟਾ ਜਾ ਰਹੇ ਸਖਲ ਦਾ ਵਿਚਾਰ ਹੀ ਆ ਸਾਰੀਆਂ ਮੱਤਾਂ ਵਿੱਚ ਇੱਥੇ ਆ ਕੇ ਸਾਨੂੰ ਐ ਲੱਗਦਾ ਵੀ ਸਾਰੇ ਧਰਮ ਇੱਕੋ ਨੇ ਅਸਲ ਜੇ ਧਰਮ ਇੱਕ ਬੱਤਾਂ ਇੱਕ ਬੱਤਾਂ ਦੀ ਗੱਲ ਹੈ ਧਰਮ ਕੋਈ ਆ ਸਾਰੇ ਸੰਸਾਰ ਦਾ ਤਨ ਬਕਰੇ ਬਕਰੇ ਨਹੀਂ ਹੁੰਦੇ ਤਾਰ ਮੂਰ ਗੱਲ ਹੈ ਮਤ ਹੋਰ ਗੱਲ ਹੈ ਤਾਰ ਮੇਕਾ ਬੱਤਾਂ ਬਖਰੀ ਬਖਰੀ ਜਿਵੇਂ ਕਿਸੇ ਦੀ ਬੁੱਧਾ ਹੋ ਜਾਉ ਸਮਝ ਲਏ ਉਹਦੇ ਚ ਗਲਤੀਆਂ ਕੀਤੀਆਂ ਹੋ ਜਾਂਦੀਆਂ ਸਾਰਾ ਕੁਝ ਛੱਡਿਆ ਨਹੀਂ ਹੋਇਆ ਜਿੰਨਾ ਕਿਹਾ ਹੋਇਆ ਨਾ ਸਾਨੂੰ ਆਚਾਰ ਦੇ ਵਿੱਚ ਜੇ ਉਹ ਪੂਰਾ ਛੱਡਿਆ ਨਹੀਂ ਹੋਇਆ ਸਾਡਾ ਤਾਂ ਮਤ ਵਿੱਚ ਫਰਕ ਆ ਗਿਆ ਉਹ ਤੇਨਤਾ ਹੈ ਬੱਤਾਂ ਵਿੱਚ ਪਿੰਨਤਾ ਹੈ ਉਹ ਤਾਂ ਮਤ ਬੱਕਰੀ ਹੋਗੀ ਬੱਕਰੀ ਲੱਗਦੀ ਐ ਸਾਨੂੰ ਜਆ ਸਾਰੇ ਉੱਥੇ ਨੂੰ ਰਹੇ ਨੇ ਆਦਿ ਦੇਵ ਅਪਾਰ ਸ੍ਰੀਪਤ ਦੁਸ਼ਟ ਪੁਸ਼ਟ ਪ੍ਰਹਾਰ ਕਾਈ ਜ਼ਬਰਤ ਸ਼ਾਸਤਰ ਔਰ ਉਹ ਕਿਹਾ ਨਾ ਵੀ ਇੱਕ ਉਧਰ ਜਾ ਇੱਕੋ ਹੀ ਜੀ ਰਿਕਣ ਦੀ ਵਿੱਚੋਂ ਜੇ ਸਾਰਿਆਂ ਨੂੰ ਸਬਜੀ ਤਾਂ ਗੱਲ ਕੋਈ ਨਾ ਕਰਨ ਸਾਰੇ ਕਹਿੰਦੇ ਨੇ ਪਰਮੇਸ਼ਰ ਇੱਕ ਸਾਰੇ ਕਹਿੰਦੇ ਨੇ ਜਾਂਦਾ ਵਰਦਾ ਦੀ ਸਾਰੇ ਕਹਿੰਦੇ ਨੇ ਘਰੋਂ ਦਿਨਾਰੀ ਸਾਰੇ ਕੰਨ ਨੇ ਉਹਦੇ ਹਲੂਆ ਸਾਰੇ ਮੰਦਰ ਨੇ ਗੱਲਾਂ ਫਿਰ ਜਦੋਂ ਉਹਦੇ ਦਰਸ਼ਨ ਦੀ ਗੱਲ ਆਉਂਦੀ ਹੈ ਫਿਰ ਆਪਣੀ ਬੜੀ ਗੱਤਾ ਜਾਂਦੀ ਹੈ ਸਵਾਲ ਕੋਈ ਹੈ ਹੱਲ ਆਪਣੇ ਆਪਣੇ ਨੇ ਹੱਲ ਉਹ ਸਹੀ ਹੈ ਜਿਹਦਾ ਜਵਾਬ ਸਹੀ ਆ ਗਿਆ ਹੱਲ ਤਾਂ ਆਪਣੇ ਆਪਣੇ ਹੱਲ ਜਿੱਥੇ ਕਿਤੇ ਕਿਸੇ ਕਿਸੇ ਦੀ ਕਿਤੇ ਗਲਤੀ ਪੈ ਗਈ ਕਿਸੇ ਦੀ ਕਿਤੇ ਗਲਤੀ ਪੈ ਗਈ ਅਸਰ ਜੇ ਰਸਤਾ ਇੱਕ ਸੀ ਪਹਾੜ ਦੀ ਚੋਟੀ ਤੇ ਚੜ੍ਹਨ ਨੂੰ ਸੀ ਤੇ ਜਾਣ ਲੱਗੇ ਕੋਈ ਐਨੂ ਹੋ ਲਿਆ ਕੋਈ ਐਨੂ ਹੋ ਲਿਆ ਵੀ ਮੈਂ ਛੇਤੀ ਪਹੁੰਚੂ ਕੋਈ ਕਿਵੇਂ ਹੋ ਲਿਆ ਕਾਹ ਜਾ ਕੇ ਰਸਤੇ ਬੰਦ ਹੋ ਗਏ ਉਹ बंद ਇੱਕ ਸੀ ਦੋ ਜਨ ਪਹਾੜ ਦੇ ਰਾ ਸਾਰੇ ਨਹੀਂ ਚੜਦੇ ਹੁੰਦੇ ਰਾਜ ਛੁੱਟਣਗੇ ਵੀ ਦੇਖ ਕਰੋ ਉਹ ਤੁਰ ਪਹੁੰਚ ਗਿਆ ਜਿਹੜੇ ਹੋਰ ਹੋਰ ਰਸਤੇ ਬਣਾ ਵੀ ਐਂ ਦੀ ਚਲੇ ਜਾਈਏ ਸ਼ਾਇਦ ਨੇੜੇ ਹੋ ਐਂ ਦੀ ਚਲੇ ਜਾਈਏ ਇੱਥੋਂ ਪੂਰੇ ਆਗੇ ਐਂ ਦੀ ਉਹ ਸਾਰੇ ਫਸੇ ਹੁਰਾਜ ਚਾੜੋ ਸੇ ਪਹਾੜ ਤੇ ਰਹੇ ਨੇ ਉੱਥੇ ਨੂੰ ਜਾਣਾ ਇਹ ਸਾਰੇ ਇੱਕੋ ਜਗ੍ਹਾ ਤੇ ਰੂ ਪਾਉਂ ਜਣ ਸੇ ਬੈ ਗੇ ਚਾਹੇ ਤਾਂ ਕਿਸੇ ਨੇ ਬਾਹਰ ਤੇ ਥੱਲੇਓ ਥੱਲੇ ਵਾਲੇ ਨੇ ਕੋ ਲੋ ਦੱਸ ਨਹੀਂ ਰਹੇ ਥੱਲੇ ਵਾਲੇ ਰਾ ਵਦ ਐ ਨਹੀਂ ਕਹਿ ਰਹੇ ਭਾਈ ਰਾ ਬੰਦਾ ਤੁਸੀਂ ਹੋਰ ਪਾਸੇ ਦੀ ਆ ਜਾਓ नहीं ਨਹੀਂ ਸਾਡੇ ਵਾਲਾ ਵਧੀਆ ਐਂ ਕਹੀ ਜਾਂਦੇ ਸਾਡੇ मत ਮਤ ਵਧੀਆ ਉਹ ਗਾਂਹ ਜਾ ਕੇ ਬੱਸਦਾ ਇਹ ਕਹਿਣਾ ਅਪਰਾਧ ਹੈ ਜਿਹੜੀ ਵੱਤ ਧੁਰ ਤੇ ਨਹੀਂ ਲਗ ਜਾਂਦੀ ਜਿਹੜੀ ਮਤ ਦੇ ਵਿੱਚ ਪਰਮੇਸ਼ਰ ਦਾ ਗਿਆਨ ਪੂਰਾ ਜਿਹੜੀ ਮੱਤ ਵਿੱਚ ਸਮਝ ਆਈ ਆਤਮ ਗਿਆਨ ਦੀ ਉਹ ਮੱਤ ਨੂੰ ਪੂਰੀ ਮੱਤ ਕਹਿਣਾ ਅਪਰਾਧ ਹੈ ਦੂਜਿਆਂ ਨਾਲ ਨੁਕਸਾਨ ਆਪਣਾ ਤਾਂ ਕਰ ਲਿਆ ਦੂਜਿਆਂ ਨਾਲ ਅਪਰਾਧ ਪਰਮੇਸ਼ਰ ਦੇ ਘਰ ਚ ਅਪਰਾਧ ਹੈ ਇੱਥੇ ਵੀ ਅਪਰਾਧ ਹੈ ਤੁਸੀਂ ਦੂਜਿਆਂ ਨੂੰ ਕਿਉਂ ਬਜ਼ਾਰ ਰਹੇ ਹੋ ਬਸ ਇਹ ਗਾਉਨ ਐਸ ਤਰੀਕੇ ਨਾਲ ਜਦ ਗੱਲ ਕਰਦੀਏ ਕੋਈ ਮਤ ਸਾਰਿਆਂ ਨੂੰ ਬੁਰੀ ਲੱਗਦੀ ਵੀ ਸਾਨੂੰ ਬੁਰਾ ਕਹਿੰਦੇ ਔਰ ਤੁਨੂ ਬਰਾ ਗਾ ਨੂੰ ਕਹਿੰਦੇ ਤੁਸੀਂ ਫਸਾ ਰਹੇ ਹੋ ਬਾਕੀਆਂ ਤਾਂ ਕਹਿੰਦੇ ਆ ਜੇ ਤੁਸੀਂ ਨਹੀਂ ਪਹੁੰਚੇ ਤੁਸੀਂ ਕਹੋ ਭਾਈ ਅਸੀਂ ਇਹ ਰਾਤ ਪਹੁੰਚ ਨਹੀਂ ਸਕਦੇ ਇੱਥੇ ਆ ਕੇ ਬੰਦ ਹੋ ਗਏ ਤੁਸੀਂ ਕੋਈ ਹੋਰ ਦੇਖ ਲਓ ਦੇਖਿਆ ਲੋਕਰ ਕਬੀਰ ਨੇ ਦੇਖਿਆ ਮਾਰੀ ਛੱਡੇ ਉਹ ਗੁਰੂ ਅਮਰਦਾਸ ਨੇ ਛੱਡੇ ਗੁਰੂ ਅਬਦ ਦੇਵ ਨੇ ਛੱਡੇ ਰਸਤਾ ਸੋਭੀ ਰਾਮਾਨੰਦ ਨੇ ਛੱਡਿਆ ਰਸਤਾ ਉਹ ਛੱਡਣ ਦੇ ਵੀ ਸਾਡੇ ਕੋਲ ਮਸਾਲਾ ਉਹ ਰਸਤਾ ਛੱਡ ਕੇ ਫੇਰ ਆਏ ਨੇ ਫੇਰ ਫੇਰ ਪਹੁੰਚ ਗਏ। ਜੋ ਰਸਤਾ ਤਿਆਗਦਾ ਪਹੁੰਚ ਗਏ। ਇਹ ਗੱਲ ਦਾ ਪ੍ਰਚਾਰ ਜੋ ਵੀ ਕਰਦੇ ਵੀ ਸਾਡੇ ਆਲਾ ਕਾਟਾ ਕਲਾਲੇ ਜਿਹੜੇ ਲੋਕ ਨੇ ਨਾ ਕਾਟਾ ਕਲਾਲੇ। ਉਹ ਲੀਡਰ ਬਣੇ ਬੈਠੇ ਨੇ। ਉਹ ਕਹਿੰਦੇ ਨੇ ਅਗਲ ਮਹੀਨ ਵੀ ਸਾਡੇ ਕੋਲ ਜਿਆਦਾ ਪਾ ਲੀਡਰ ਵੀ ਅਸੀਂ ਹੋ ਰਹੇ ਨੇ। ਪਸਕਲਾ। ਗੁਰੂ ਵੀ ਅਸੀਂ ਬਣੇ ਨਾ ਸਾਡੀ ਤਾਰਾ ਨਾ ਘਾੜੀ ਬੇ ਝੂਠ ਬੋਲੀ ਜਾਂਦੇ ਸੀ। ਦਾ ਨੁਕਸਾਨ ਹੋ ਜਾਂਦਾ। ਸੰਸਾਰ ਦਾ ਨੁਕਸਾਨ ਪਰਮੇਸ਼ਰ ਨੂੰ ਚੰਗਾ ਨਹੀਂ ਲੱਗਦਾ ਸੱਚੇ ਆਦਮੀਆਂ ਤੋਂ ਪਰਮੇਸ਼ਰ ਕਹੋਂਦਾ ਇਹ ਗੱਲ ਜ਼ਬਰਦਸਤੀ ਵੀ ਇਹ ਕਹੋ ਨਾਨਕ ਜ਼ਬਰਦਸਤੀ ਕਬੀਰ ਨਹੀਂ ਕਹਿ ਰਿਹਾ ਕਬੀਰ ਕੀ ਕਹ ਰਿਹਾ ਕਬੀਰ ਜਿਹਨ ਕੋਈ ਜਾਣਿਆ ਹੋ ਨਹੀਂ ਸੁਖ ਦੀ ਰਹੀ ਹੈ ਨੇ ਕੋਈ ਚੀਜ਼ ਜਾਣੀ ਨਹੀਂ ਰਿਓ ਚੁੱਪ ਅਨੰਦ ਮੈਨੂੰ ਸਮਝ ਆ ਗਈ ਮੇਰੇ ਗੱਲ ਬੜਾ ਪੈ ਗਈ ਜੇ ਤਾਂ ਮੈਂ ਕਹਿਣਾ ਤਾਂ ਸਾਰੇ ਭੌੜ ਬੰਝਦਾ ਤਾਂ ਲੋਕ ਔਖੇ ਉਧਰ ਕਿ ਨਹੀਂ ਕਹਿੰਦਾ ਫਿਰ ਪਰਮੇਸ਼ਰ ਕਹਿੰਦਾ ਵੀ ਤੂੰ ਦੋ ਨਹੀਂ ਦੱਸਦਾ ਸੱਚੇ ਨਹੀਂ ਦੱਸਦਾ ਲੋਕਾਂ ਨੂੰ ਤੂੰ ਆਪਾ ਥਾਰੇ ਫਸ ਗਿਆ ਜੇ ਤਾਂ ਸੱਚ ਦੱਸਦਾ ਭਾਈ ਇਹ ਰਾਹ ਬੰਦ ਨੇ ਨਾ ਜਾਉ ਤਾ ਤਾਂ ਹੋਖੇ ਹੁੰਦੇ ਨੇ ਸਾਰੇ ਕੋਈ ਦੱਸੋ ਵੀ ਸੱਚ ਦੱਸੇ ਜਾਂ ਨਾ ਦੱਸੇ ਨਹੀਂ ਦੱਸਦਾ ਤਾ ਉਹ ਉਧਰ ਝੂਠਾ ਜੇ ਦੱਸਦਾ ਤਾਂ ਇਹ ਓਖੇ ਹੁੰਦੇ ਨੇ ਸੱਚ ਆਖਣੇ ਪਰ ਬੜਾ ਤਾਲੀ ਮਾਜਦਾ ਨਾ ਕੰਨਾ ਬੂਗਾ ਵੇ ਤਰ੍ਹਾਂ ਬੰਦਾ ਭਾਈ ਅੱਗੇ ਨਹੀਂ ਜਾਂਦਾ ਇੱਧਰ ਨੂੰ ਹੋ ਜਾਓ ਤਾਂ ਉਹ ਖੜੇ ਇਹ ਦੁਬਲਾ ਅਜ ਫਸੇ ਗੱਲ ਇਸ ਸੰਸਾਰ ਦੀਆਂ ਬੱਤਾਂ ਵਿਰੋਧ ਕਰਦੀਆਂ ਨੇ ਇਸ ਮੱਤ ਦਾ ਤਾਂ ਕਰਦੀਆਂ ਨੇ ਆਪ ਝੂਠੀਆਂ ਨੇ ਸੱਚ ਝੂਠ ਅਬੇ ਸੱਚ ਦਾ ਵਿਰੋਧ ਕਰਦਾਂ ਝੂਠੇ ਨੂੰ ਨਹੀਂ ਸੱਚੰ ਦਾ ਲੱਗਦਾ ਤਾਂ ਹੀ ਲੋਕ ਇਹਨਾਂ ਸੱਚ ਬੜਾ ਕੌੜਾ ਹੈ ਕੌੜਾ ਕਾਦੇ ਝੂਠੇ ਨੂੰ ਜਦੋਂ ਨਹੀਂ ਲੱਗਦਾ ਜੇ ਗਰੀ ਲੱਗਦਾ ਮੈਂ ਸੱਚ ਬੋਲੋ ਤਾਂ ਖੜੀ ਹੋ ਜਾਂਦਾ ਭੱਜੋ ਮਜ਼ਾਕ ਤਾਂ ਬਣਾਇਆ ਉਹਨਾਂ ਨੇ ਸੱਚ ਕੌੜਾ ਹੁੰਦਾ ਸੱਚ ਨੂੰ ਸੱਚ ਦੀ ਜਕੌੜਾ ਲੱਗਦਾ ਝੂਠੇ ਨੂੰ ਸੱਚ ਕੌੜਾ ਲੱਗਦਾ ਝੂਠਿਆਂ ਦੀ ਤਾਂ ਜਿਆਦਾ ਉਹਨਾਂ ਦੀ ਆਪਣੇ ਸਰਦਾਰੀਆਂ ਵੜੀ ਹੋਈਆਂ ਨੇ ਹਲਬੂਰਤੀ ਪੂਜਾ ਹੋ ਰਹੀ ਹੈ ਇਹਨਾਂ ਨੇ ਕਰੋੜਾ ਰੁਪਏ ਚੜਦੇ ਨੇ ਜੇ ਕਹੋਗੇ ਮੂਰਤੀ ਹੈ ਨਹੀਂ ਉਹ ਤਾਂ ਸਾਰੇ ਖਲਾਫ ਹੋ ਜਾਣਗੇ ਲੋਕਾਂ ਦੀ ਸ਼ਰਧਾ ਸ਼ਰਧਾ ਅੱਡੀ ਹੁੰਦੀ ਹੈ ਸ਼ਰਧਾ ਤਾਂ ਨਹੀਂ ਹੁੰਦੀ ਜੋ ਨਹੀਂ ਕਹਨੇ ਵੀ ਗ੍ਰੰਥ ਗੁਰੂ ਨਹੀਂ ਹੁੰਦਾ ਤਾਂ ਉਹ ਕਿਉਂਦਰ ਗੱਲ ਸੱਚਾ ਹੈ ਉਹ ਗਿਆਨ ਗੁਰੂ ਤਾਂ ਹੁੰਦਾ ਹੈ ਗ੍ਰੰਥ ਗੁਰੂ ਨਹੀਂ ਹੁੰਦਾ ਗਿਆਨ ਗੁਰੂ ਤਾਂ ਹੈਗਾ ਕਿਹਾ ਹੈ ਬੰਦਿਆ ਹੈ ਗੁਰਬਾਣੀ ਚ ਗਿਆਨ ਗੁਰੂ ਪਰ ਗ੍ਰੰਥ ਗੁਰੂ ਨਹੀਂ ਹੁੰਦਾ ਰਤਨ ਕੋਲ ਨਹੀਂ ਮੰਦਿਰ ਗੁਰਬਾਣੀ ਕਿਹਦਾ ਖਾਣਾ ਦੀਦਾ ਗੁਰੂ ਪਰਮੇਸ਼ਰ ਖਾਣਾ ਦੀਦਾ ਨਹੀਂ ਗੁਰੂ ਪਰਮੇਸ਼ਰ ਹੁੰਦਾ ਉਦਾ ਖਾਣਾ ਜਿਹੜਾ ਖਾਣ ਦੀ ਦਾ ਗੁਰੂ ਨਹੀਂ ਉਤ ਉੱਥੇ ਦੇਖੋ ਇਹ ਪਰਮੇਸ਼ਰ ਦਾ ਖਾਣਾ ਦੀਦਾ ਨਹੀਂ ਨਾਲੇ ਬੰਦੇਓ ਨਾਲੇ ਤੁਸੀਂ ਦਿਖਾਤਾ ਵੀ ਆਹ ਹੈ ਦਰਸ਼ਨ ਕਰਨ ਆਜੋ ਰੋਹੀ ਗੱਲ ਹੋਈ ਨਾ ਪੂਰਤੀ ਪੂਜਾ ਦੀ ਇਹ ਕਹਿ ਰਹੀ ਤਾਂ ਭੰਬੜ ਬਚੂਗਾ ਤੇ ਭਾਪ ਬ੍ਰਤ ਜਿਹੜੇ ਲੋਕ ਹੁੰਦੇ ਘੱਟ ਬੁੱਧੀ ਵਾਲੇ ਉਹ ਲੀਡਰ ਬਣ ਜਾਂਦੇ ਨੇ ਜੇ ਕਹਿਦੀ ਆ ਉਹਨਾਂ ਦੀ ਲੀਡਰ ਹੀ ਗਈ ਕਹਿੰਦੇ ਅਸੀਂ ਤਾਂ ਲੋਕ ਸਾਨੂੰ ਤਾਂ ਲੋਕ ਬੰਦੇ ਸੀ ਫਿਰ ਤਾਂ ਸਾਨੂੰ ਗਰਰ ਨਹੀਂ ਕਿ ਸਾਨੂੰ ਲੋਕ ਕਹਿੰਣਗੇ ਬੇਵਕੂਫ ਹੈ ਉਹ ਵਿਰੋਧ ਕਰਦੇ ਨੇ ਅਤਲ ਚ ਆਉਣਾ ਜੀ ਆਪਣੇ ਹੋਵੇ ਨੂੰ 6:00 ਵਜਦੀ ਹੈ ਆਪਣੇ ਝੂਠ ਨੂੰ 6:00 ਵਜਦੀ ਹੈ ਤਾਂ ਵਿਰੋਧ ਕਰਦੇ ਨੇ ਉਹਨਾਂ ਦੀ ਅਗਿਆਨਤਾ ਜਾਹਰ ਹੁੰਦੀ ਹੈ ਤਾਂ ਵਿਰੋਧ ਕਰਦੇ ਨੇ ਉਹ ਸਾਬਤ ਹੁੰਦਾ ਵੀ ਇਹ ਮੂਰਖ ਨੇ ਤਾਂ ਵਿਰੋਧ ਕਰਦੇ ਨੇ ਕਿਸੇ ਨੂੰ ਮੂਰਖ ਕਹ ਦੀ ਗੱਲ ਪੈ ਜਾਂਦਾ ਚਾਹੇ ਮੂਰਖ ਹੋਵੇ ਜੇ ਕਹਿ ਦਿਆ ਨਾ ਕਿ ਆਰਾਧਵੀ ਜਿਵੇਂ ਤੂੰ ਇਹ ਮੂਰਖ ਹੈ ਬੂਰ ਗਾਲੀ ਗੱਲ ਕਰ ਦੇਵੇ ਤਾਂ ਵੀ ਲੜਨ ਨੂੰ ਤਿਆਰ ਰਹੋ ਅ ਸੱਚ ਕਿਹਾ ਹਾਇ ਵੀ ਲੜਨ ਨੂੰ ਤਿਆਰ ਰਹੋ ਇਸ ਕਰਕੇ ਸੱਚ ਬੋਲਣ ਵਾਲੇ ਗੱਲ ਲੜਾਈ ਪੈਣੀ ਭਗਤਾਂ ਨੇ ਗੱਲ ਲੜਾਈ ਪਈਆ ਗੁਰੂਆਂ ਨੇ ਗੱਲ ਇਹੋ ਜਿਹੀ ਲੜਾਈ ਪਈਆ ਨਾ ਸੱਚ ਬੋਲੇ ਉਹਨਾਂ ਸੱਚ ਬੋਲੋਗੇ ਲੜਾਈ ਗੱਲ ਪਊਗੀ ਫਿਰ ਨਬਟਾ ਵੀ ਸਾਨੂੰ ਪਊਗਾ ਲੜਾਈ ਦਾ ਚਾਏ ਚੁੱਪ ਕਰਕੇ ਨਬਟਲੋ ਚਾਏ ਮੁਕਾਬਲਾ ਕਰੋ ਕਾਇ ਗੋਲੀ ਦਾ ਜਵਾਬ ਗੋਲੀ ਨਾਲ ਦੇ ਦੋ ਤਲਵਾਰ ਦਾ ਜਵਾਬ ਤਲਵਾਰ ਨਾਲ ਦੇ ਕੇ ਨਿਭਲੋ ਕਾਇ ਚੁੱਪ ਕਰਕੇ ਨਿਭਲੋ ਭਗਤ ਚੁੱਪ ਕਰਕੇ ਵੀ ਨਿਭੜੇ ਨੇ ਨਵੇਂ ਪਾਸ਼ਾ ਚੁੱਪ ਕਰਕੇ ਵੀ ਨਿਭੜੇ ਨੇ ਪੰਜਵੇਂ ਪਾਸ਼ਾ ਚੁੱਪ ਕਰਕੇ ਵੀ ਨਿਭੜੇ ਨੇ ਤਾਂ ਵੀ ਜਿੱਤਿਆ ਉਹਨਾਂ ਦੇ ਦੋ ਹੱਥੀ ਲਡੂਰ ਤਲਵਾਰ ਦਾ ਮੁਕਾਬਲਾ ਤਲਵਾਰ ਨਾਲ ਦੇ ਬੜਲੇ ਤਾਂ ਵੀ ਉਹ ਜਿੱਤ ਉਹਨਾਂ ਦੀ ਜਿੱਤ ਹੈ ਜੁਲਮ ਦਾ ਟਾਕਰਾ ਸ਼ਾਂਤੀ ਨਾਲਨ ਤਾਂ ਵੀ ਉਹਨਾਂ ਦੀ ਜਿੱਤ ਹੈ ਉਹਨਾਂ ਨੇ ਦੋ ਹੀ ਅੱਧੀ ਲੱਡੂ ਦੇ ਸੱਚਾ ਦੇ ਤਾਂ ਇਹ ਰੰਗ ਦੇ ਨੂੰ ਦੱਸ ਬਾਸ਼ਾ ਕਹਿੰਦਾ ਵੀ ਤੂੰ ਜਿੱਤਿਆ ਹੋਇਆ ਵੀ ਹਾਰਿਆ ਹੋਇਆ ਵੱਧ ਸਮਝ ਲਈ ਮੇਰੀ ਜਿੱਤ ਹੋਈ ਹੈ ਜਿੱਤ ਮੇਰੀ ਹੋਈ ਹੈ ਕਿ ਮੇਰਾ ਧਰਮ ਬਚ ਗਿਆ ਤੇਰਾ ਧਰਮ ਨਹੀਂ ਬਚਿਆ ਜਫਰ ਨਾਂ ਲਿਖਦੇ ਨੇ ਵੱਧ ਸਮਝ ਲਈ ਜਿੱਤ ਮੇਰੀ ਹੋਈ ਹੈ ਮੈਂ ਇਹਦੇ ਬੱਚੇ ਵੀ ਸ਼ਹੀਦ ਕਰਤੇ ਨੂੰ ਕੁਝ ਨਹੀਂ ਛੱਡਿਆ ਇਹ ਸੰਸਾਰ ਇੱਥੇ ਨਹੀਂ ਰਹਿਣਾ ਕਿਸੇ ਨੇ ਵੀ ਨਾ ਤਾਣਾ ਨਾ ਨਾ ਰਹਿਣਾ ਕੋਈ ਪਹਿਲਾਂ ਚਲੇਗਾ ਕੋ ਪਿੱਛੇ ਚਲੇ ਰਹਿਣਾ ਕੀ ਹੈ ਰਹਿਣਾ ਸੱਚ ਰਹਿਣਾ ਇਹ ਵੀ ਸੱਚ ਤੇ ਕੌਣ ਪਹਿਲਾਂ ਦੇ ਗਿਆ ਕੌਣ ਪਹਿਲਾਂ ਨਹੀਂ ਦੇ ਗਿਆ ਇਹ ਤੇ ਫੈਸਲਾ ਹੋਣਾ ਪਿੱਛੋਂ ਇਹ ਤੇ ਫੈਸਲਾ ਉਹ ਫੈਸਲਾ ਐਸੇ ਗੱਲ ਤੇ ਖੜਾ ਇਹਨੂੰ ਜਿੱਤੇਗਾ ਕੌਣ ਜਿਹਦਾ ਸੱਚ ਤੇ ਸੀ ਜਿੱਤੇਗਾ ਜਿਹੜਾ ਝੂਠ ਤੇ ਸੀ ਹਾਰ ਗਿਆ ਕੌਣ ਹਾਰੇ ਕੌਣ ਉਹ ਵਟੀ ਹੈ ਹਰੂਗਾ ਇਹ ਨਾ ਝੂਠ ਤੇ ਖੜਾ ਐ ਅੱਜ ਚਾਹੇ ਉਹਦੇ ਕੋਈ ਸ਼ਕਤੀ ਐ ਅੱਜ ਚਾਹੇ ਉਹਦੇ ਕੋਈ ਪਾਵਰ ਐ ਪਰ ਹਰੂਗਾ ਉਹੀ ਜਿਹੜਾ ਝੂਠ ਤੇ ਖੜਾ ਐ ਜੇ ਤੂੰ ਉਹ ਜਿਹੜਾ ਸੱਚ ਨਾਲ ਜੁੜਿਆ ਐ ਪਿੱਛੇ ਹੁਲਦਾ ਆ ਕਹਾਨੂੰ ਉੱਧਰ ਰਹੂਗਾ ਇਹ ਹੀ ਰਹੂਗਾ ਹਨ ਦਾਤਾ ਗਿਆਨ ਗਿਆਤਾ ਸਰਬ ਮਾਨ ਮਹਿੰਦਰ ਹਨ ਦਾਤਾ ਅਨੇਕ ਤੁੰਗਲ ਦਾ ਅਨੇ ਕੀਨੇ ਬਣਾਇਆ ਇਹ ਠੀਕ ਐ ਕ੍ਰਾਸ ਬਰੀਡ ਬਣਾਈ ਜਾਂਦੇ ਨੇ ਪਰ ਇੱਕ ਨਵਾਂ ਦਾਲਾ ਅਨ ਦਾ ਬਣਾ ਕੇ ਦਿਖਾ ਦੇਣ ਕ੍ਰਾਸ ਬ੍ਰੀਡ ਬਰਬੂਰੀ ਹੋਰ ਗੱਲ ਹੈ ਅਨ ਪਹਿਲਾ ਹੈਗਾ ਉਹਦੀ ਕ੍ਰਾਸ ਬ੍ਰੀਡ ਬਰਬੂਰੀ ਤੁਸੀਂ ਦਵਾ ਦਾਣਾ ਦਾ ਬਣਾ ਕੇ ਦਿਖਾਓ ਇੱਕ ਬਣਾ ਕੇ ਦਿਖਾਉਣਾ ਦਾਣਾ ਕੋਈ ਅਨ ਇਹ ਸਭ ਉਹਨੇ ਬਣਾਇਆ ਹੋਇਆ ਉਹਦੇ ਬਣਾਏ ਨੂੰ ਜੋ ਵਰਗੀ ਬਣਾਈ ਜਾਓ ਉਹਦੇ ਬਣਾਏ ਦੀ ਤੁਸੀਂ ਢਾਲ ਬਣਾ ਲਓ ਬਣਾਏ ਦਾ ਦਲੀਆ ਬਣਾ ਲਓ ਉਹਦੇ ਬਣਾਏ ਦਾ ਆਟਾ ਬਣਾ ਲਓ ਉਹਦੇ ਬਣਾਏ ਦੀ ਡਬਲ ਰੋਟੀ ਬਣਾ ਲਓ ਕੋਸ ਬਣਾ ਲਓ ਪਹਿਲਾਂ ਉਹ ਤਾਂ ਬਣਾਇਆ ਹੋਇਆ ਹੈ ਸਾਡੇ ਕੋਲ ਰੈਡੀमेड ਹੈ ਨਾ ਉਹ ਦਬੋਂ ਬਣਾ ਕੇ ਦਿਖਾਓ ਲੋ ਨਵਾਂ ਕੁਝ ਨਹੀਂ ਬਣਦਾ ਅਨ ਦਾ ਆਤਾ ਹੋਰ ਗਿਆਨ ਗਿਆਤਾ ਹੈ ਗਿਆਨ ਨੂੰ ਸਭ ਜਾਣਦਾ ਹੈ ਗਿਆਨ ਕਹਦਾ ਕਿ ਅਨ ਉਹ ਨਹੀਂ ਬਣਾਇਆ ਉਹਨੂੰ ਪੜ੍ਹੋੜ ਦਾ ਗਿਆਨ ਹੈ ਅਨ ਬਣਾਉਣ ਦਾ ਗਿਆਨ ਉਹਦੇ ਕੋਲ ਹੈ ਸਾਡੇ ਕੋਲ ਗਿਆਨ ਕੋਈ ਨਹੀਂ ਅਨ ਬੜੋੜ ਦਾ ਪ੍ਰੋਡਕਸ਼ਨ ਬਣਾਉਣ ਦਾ ਸਾਡੇ ਕੋਲ ਗਿਆਨ ਹੈ ਉਡੀ ਪ੍ਰੋਡਕਸ਼ਨ ਜ਼ਿਆਦਾ ਕਰ ਲਈਏ ਇਹ ਤਾਂ ਗਿਆਨ ਆਦਮੀ ਕੋਲ ਹੈ ਪਰ ਨਵਾਨ ਬਣਾਉਣ ਦਾ ਗਿਆਨ ਨਹੀਂ ਹੈ ਲੋਕ ਫਿਰ ਤਾਂ ਪ੍ਰੋਡਕਸ਼ਨ ਵਧਾਉਣ ਦੀ ਲੋੜ ਹੈ ਨਹੀਂ ਫਿਰ ਵਧਾਉਣ ਦੀ ਕੀ ਲੋੜ ਹੈ ਅਨ ਬੜਾ ਜਾਓ ਫਿਰ ਕੀ ਤੇ ਬਣਾ ਨਹੀਂ ਬਣਾ ਸਕਦੇ ਸੀ ਪ੍ਰੋਡਕਸ਼ਨ ਵਧਾ ਸਕਦੇ ਹੋ ਜੀ ਮੈਨੂੰ ਹਸਾਮੀ ਕਰ ਲਾਂਗੇ ਜੇ ਪ੍ਰੋਡਕਸ਼ਨ ਵਧਾ ਨਾ ਲੋੜ ਤੋਂ ਵੱਧ ਜਿਹੜੀ ਚੀਜ਼ਾਂ ਦਾ ਵਧਾਵੋਗੇ ਉਹ ਨੁਕਸਾਨ ਵੀ ਹੋ ਜਾਣਾ ਉਹਦੇ ਵਿੱਚ ਦੋ ਜਿਹੜਾ ਦਾ ਹੋਰ ਚੀਜ਼ਾਂ ਦਾ ਵੀ ਖਾਦਾਂ ਦਾ ਉਹ ਵੀ ਅਸੀਂ ਕਈ ਗਲਤੀਆਂ ਕਰ ਲਾਂਗੇ ਨੁਕਸਾਨ ਹੋਇਆ ਹੀ ਨੁਕਸਾਨ ਹੋ ਹੀ ਰਿਹਾ ਹੁਣ ਹਾਂਜੀ ਸਰਬਮਾਨ ਮਹਿੰਦਰ ਸਰਬਮਾਨ ਮਹਿੰਦਰ ਮਹਿੰਦਰ ਉਹ ਆਪ ਹੀ ਆ ਮਹਾਨ ਇੱਦਰ ਇਦਰਾ ਨਵ ਇੱਦਰਾ ਆਪ ਹੈ ਹੋ ਸਾਰੇ ਮਾਨ ਸਾਰੇ ਜਿਹੜੇ ਮਾਨ ਨੇ ਕਿਸੇ ਦਾ ਮਾਨ ਕੋਈ ਨਹੀਂ ਹੈ ਸਾਰੇ ਮਾਨ ਦਾ ਸਰਮਾਨ ਦਾ ਅਖਰਾਰ ਆਪ ਹੀ ਹੈ ਉਹ ਦੀਆਂ ਪਾਗਲ ਨੇ ਜਿਹੜੇ ਲੈਣ ਵਾਲੇ ਨੇ ਉਹ ਦੁਨੀਆ ਦੇ ਜਿਹੜੇ ਮਾਨ ਸਰਮਾਨ ਦਿੰਦੇ ਨੇ ਨਾ ਇਹ ਤਾਂ ਪਾਗਲ ਲਿਖੇ ਨੇ ਕੋਲ ਹਨ ਬਾਬਲੇ ਲੈਦੇ ਬੜੇ ਨੁਲਜ ਇੱਥੇ ਜਿਹੜੇ ਵਡਿਆਈਆਂ ਦੇਣ ਵਾਲੇ ਨੇ ਨਾ ਸਦਾਈ ਤਾਂ ਹੋਰ ਬੜੀ ਦੇਣ ਵਾਲੇ ਕੁਲਾ ਕੁਲਾ ਕੁਲਾ ਦੇ ਦਿੰਦੇ ਸੀ ਮੁਸਲਮਾਨਾਂ ਦੇ ਜਿਵੇਂ ਸਿਰੋਪੇ ਦਿੰਦੇ ਨੇ ਆਪਣੇ ਇਹ ਮੈਡਲ ਦਿੰਦੇ ਨੇ ਆਪਣੇ ਮੈਡਲ ਨਹੀਂ ਦਿੰਦੇ ਕੁਲਾ ਦਿੰਦੇ ਬਾਬਲੇ ਇਹ ਸੰਸਾਰੀ ਵਡਿਆਈਆਂ ਦੇਣ ਵਾਲੇ ਬਾਬਲੇ ਨੇ ਸਾਰੇ ਪਾਗਲ ਨੇ ਲੈਣ ਵਾਲੇ ਲੈਂਦੇ ਬੜੇ ਨਲਜ ਲੈਣ ਵਾਲੇ ਬੜੇ ਬੇਸ਼ਰਮ ਨੇ ਚੂਹਾ ਖਾਡਣਾ ਮਾਵੀ ਕਹਿੰਦੇ ਚੂਹਾ ਖਾਡੀ ਤਾਂ ਪਹਿਲਾਂ ਨਹੀਂ ਵੱਡਦਾ ਖੱਡ ਪੱਛੋਟੀ ਹੈ ਚੂਹਾ ਵੱਡਾ ਗਾਰ ਇਹਦਾ ਐਡਾ ਵੱਡਾ ਅਸਮਾਨ ਛੋਟਾ ਹੈ ਇਹਦਾ ਪਹਿਲਾਂ ਹੀ ਖੱਡ ਚ ਨਹੀਂ ਵਿਉਂਦਾ ਚੂਹਾ ਤੇ ਕਲ ਬੰਨੇ ਛੱਜ ਬੜਿਆਈ ਦਾ ਛੱਜ ਹੋਰ ਬਣ ਲਿਆ ਛੱਜ ਬੰਦੀ ਹੈ ਚੂਹਾ ਨਾ ਫੇਰ ਖੱਡ ਚ ਬੜੂਗਾ ਮਾਰਿਆ ਜਾਊਗਾ ਇਹ ਸਨਮਾਨ ਹੰਕਾਰ ਪੈਦਾ ਕਰ ਦਿੰਦੇ ਨੇ ਬਿਲਾ ਦਿੰਦੇ ਨੇ ਅੱਗੇ ਹੀ ਹੰਕਾਰ ਬਥੇਰਾ ਤੇਰੇ ਜੀ ਹੋ ਹੰਕਾਰ ਹੀ ਤਾਂ ਆ ਗਈ ਐ ਤੂੰ ਹੰਕਾਰ ਹੋਰ ਵਧਾ ਕੇ ਬੁਲਿਆ ਦੇਣੇ ਵਾਲੇ ਤਾਂ ਦੇ ਰਹੇ ਨੇ ਕੋਈ ਗੱਲ ਨਹੀਂ ਉਹਦਾ ਸਦਾਈ ਨੇ ਲੈਣੇ ਵਾਲੇ ਮੂਰਖ ਨੇ ਹੰਕਾਰ ਹੋਰ ਵਧਾਈ ਜਾਂਦੇ ਨੇ ਉਹ ਸਲਮਾਨ ਨੂੰ ਤਾਂ ਲੋਕ ਭਜ ਭਜ ਪੈਂਦੇ ਨੇ ਸਲਮਾਨ ਖਤਮ ਤਾਂ ਲੜਾਈ ਹੈ ਸੰਸਾਰ ਦੀ ਲੜਾਈ ਸਲਮਾਨ ਵਾਸਤੇ ਗੁਰਬਾਣੀ ਕੀ ਕਹਿੰਦੀ ਐ ਅਜੀਬੇ ਕੌਲ ਹੋਏ ਅਗਲਾੜੇ ਹੋਏ ਗੁਰਬਾਣੀ ਦੀ ਦੇਖੋ ਗੁਰਬਾਣੀ ਦੇ ਦੇਸੀ ਕੋਲ ਤੋਂ ਆਪਾਂ ਦੇਖਦੇ ਹਾਂ ਸੰਸਾਰ ਸੰਸਾਰ ਦੇਸੀ ਕੋਲ ਆਪਣਾ ਸੰਸਾਰ ਦੀ ਸੋਚ ਅਪੜੀ ਇਹਦੇ ਕਰਕੇ ਭਗਤਾਂ ਦੇ ਸਾਰੀਆਂ ਜੋੜ ਤੇ ਦਿਨ ਹੋਇਆ ਵਿਦਵਾਨ ਸਾਰੇ ਇਸ ਗੱਲਾਂ ਸਾਬਤ ਨਹੀਂ ਹੋ ਸਕਦੇ ਜਿਹੜੀ ਮੈਂ ਕਹਿ ਰਿਹਾ ਗੁਰਬਾਣੀ ਕਹਿ ਰਹੀ ਹੈ ਵਿਦਵਾਨ ਨਹੀਂ ਸਾਬਤ ਹੋ ਸਕਦੇ ਕੋਈ ਵਿਦਵਾਨ ਸੰਸਾਰੀ ਨੇ ਜਿਹੜੇ ਸੰਸਾਰੀ ਨਾਲ ਡਲ ਚੜੇ ਸਾਰੇ ਉਹਨਾਂ ਨੂੰ ਪੁੱਛੇ ਨਰਜਨੋ ਵੇ ਜਦ ਭਗਤਾਂ ਦੀ ਗੱਲ ਹੈ ਵਿਚਾਰਧਾਰਾ ਹੈ ਤੁਸੀਂ ਉਹ ਜੀ ਦਖਲ ਕਿਉਂ ਦਿੰਦੇ ਹੋ ਤੁਹਾਨੂੰ ਕੀ ਲੋੜ ਹੈ ਬੋਲਣ ਦੀ ਤੁਸੀਂ ਸੰਸਾਰੀ ਗੱਲ 'ਚ ਬੋਲੋ ਧਰਮ ਸੰਸਾਰੀਆਂ ਦਾ ਨਹੀਂ ਹੁੰਦਾ ਸੰਸਾਰੀ ਆਦਮੀਆਂ ਨੂੰ ਧਰਮ 'ਚ ਦਖਲ ਧਰਮ 'ਚ ਬੋਲਣਾ ਨਹੀਂ ਚਾਹੀਦਾ ਇਹ ਰਸਤਾ ਹੀ ਵੱਖਰਾ ਮਾਰ ਕੇ ਵੱਖਰਾ ਤੁਹਾਡੀ ਸਮਝ ਆ ਜੇ ਹੋਈ ਨਹੀਂ ਸਕਦਾ ਉਹ ਦਰਸ਼ਨ ਸਭ ਨੂੰ ਰੋਸ ਸਨਮਾਨ ਕਰਦੇ ਨੇ ਸਨਮਾਨ ਲੈਂਦਾ ਜੇ ਉਹ ਨਲਜਾ ਉਹਦੇ ਤੇ ਭਗਤੀ ਲੱਗਦੀ ਆ ਲੈਂਦੇ ਬੜੇ ਨਲਜ ਔਰ ਜਿਹੜੇ ਦੇਣ ਵਾਲੇ ਨੇ ਸਨਮਾਨ ਉਹ ਬਾਬਲੇ ਨੇ ਗੁਰਮਤ ਤੇ ਦੋਏ ਖੋਟੇ ਦੇ ਗੁਰਮਤੀ ਦ੍ਰਿਸ਼ੀ ਕੋਣ ਤੋਂ ਤੋਂ ਦੋਏ ਖੋਟੇ ਨਾਲ ਸਨਮਾਨ ਕਰਨ ਵਾਲੇ ਵੀ ਖੋਟੇ ਸਿੱਖ ਨਹੀਂ ਹਣ ਲੈਣ ਵਾਲਾ ਵੀ ਖੋਟਾ ਤੇ ਗੱਲਾਂ ਕਰ ਟਿੱਪਣੀਆਂ ਕਰਦਾ ਦਸੂ ਤੇ ਉਹਦਾ ਰਾਈਟਾ ਨਹੀਂ ਬੋਲਣ ਦਾ ਹੈ ਜਿਹੜਾ ਆਦਮੀ ਧਰਮ ਬਾਰੇ ਨਹੀਂ ਬੋਲੇ ਨਹੀਂ ਸਕਦਾ ਸਾਰੇ ਆਦਮੀ ਧਰਮ ਤੇ ਬੋਲੂਗਾ ਮੂਰਖਾ ਬਹੁਤ ਮੂਰਖ ਕੋਰਟ ਦੇ ਵਿੱਚ ਵਕੀਲ ਤੋਂ ਬਿਨਾ ਬੋਲ ਨਹੀਂ ਸਕਦਾ ਕੋਈ ਇਹ ਨਹੀਂ ਬੋਲ ਸਕਦਾ ਬੈਠ ਵਕੀਲ ਕਰੂਗਾ ਦੂਜਾ ਆਦਮੀ ਨਹੀਂ ਬੋਲ ਸਕਦਾ ਜਾ ਕੇ ਇਹ ਧਰਮ ਦੇ ਵਿੱਚ ਧਰਮ ਆਦਮੀ ਬੋਲੇ ਤੂੰ ਸਾਡੀ ਬੋਲ ਸਕਦਾ ਉਹਦਾ ਉਹਨੂੰ ਆ ਗਿਆ ਨਾ ਧਰਮ ਦਾ ਇਹਨਾਂ ਨੂੰ ਕੀ ਪਤਾ ਜੇ ਕੋਰਟ ਦੇ ਵਿੱਚ ਦੂਜੇ ਆਦਮੀ ਬੋਲਣ ਕੋਰਟ ਦਾ ਤੇ ਕੋਰਟੇ ਨਾਲ ਚੱਲਣ ਦੇ ਦੂਜੇ ਆਦਮੀ ਕੰਮੇ ਨਾਲ ਚੱਲਣ ਦੇ ਜਿੱਦਾਂ ਇਹ ਗੱਲ ਸਮਝ ਆ ਗਈ ਇਹ ਗੱਲ ਹੈ ਜਿਹੜੀ ਸਮਝਾਉਣੀ ਹੈ ਸਿੱਖ ਕਿਸੇ ਦਾ ਕੰਮ ਨਹੀਂ ਬੋਲਣ ਦਾ ਇਹ ਪੰਥ ਖਾਲਸਾ ਹੈ ਪੰਥ ਜਿਗਰੀ ਰਹਾ ਪੰਥ ਦੇ ਸਿੱਖਾਂ ਦੇ ਵਿੱਚ ਸਾਰੇ ਭਗਤ ਆਏ ਫਿਰ ਭਗਤਾਂ ਦੇ ਜੇਲੇ ਵੀ ਸਾਰੇ ਸਿੱਖ ਨੇ ਪੰਥ ਖਾਲਸਾ ਜਿਹੜਾ ਇੱਕ ਸਪੈਸ਼ਲ ਚੀਜ਼ ਹੈ ਖਾਲਸਾ ਗਲਪੁਰਖ ਦੀ ਫੌਜ ਹੈ ਉਹਦਾ ਭਗਤਾਂ ਨਹੀਂ ਬਣ ਜੀ ਕੋਈ ਦਖਲ ਨਹੀਂ ਦੇ ਸਕਦਾ ਸੰਸਾਰੀ ਆਦਮੀ ਕੋਈ ਨਹੀਂ ਦਖਲ ਦੇ ਸਕਦਾ ਜਿਹਨੇ ਤਨਮਨ ਤਨ ਸੋਪਿਆ ਹੋਇਆ ਇਹ ਮਾਰਗ ਤੇ ਚੱਲ ਰਿਹਾ ਹੈ ਦੂਰ ਚਲਾ ਗਿਆ ਜਿੱਦ ਛੱਡੀ ਹੋਈ ਹੈ ਇਧਰ ਆਪਸੇ ਛੱਡਿਆ ਆ ਮਾਇਆ ਵਾਲਾ ਉਹੀ ਬੈਠ ਕੇ ਵਿਚਾਰ ਕਰ ਸਕਦੇ ਨੇ ਦੂਜਿਆਂ ਨੂੰ ਕੋਈ ਰਾਈਟ ਨਹੀਂ ਕਿਉਂ ਉਹਨਾਂ ਦਾ ਕੰਮ ਹੈ ਨਹੀਂ ਹੈ ਇਧਰ ਉਹ ਕੀ ਸਿਖਾ ਦੇਣਗੇ ਸਾਨੂੰ ਉਹ ਕੀ ਕੀ ਦੇਣਗੇ ਕੀ ਆ ਉਹਨਾਂ ਦੇ ਪੱਲੇ ਕੀ ਛੱਡਿਆ ਉਹਨਾਂ ਨੇ ਉਹਨਾਂ ਨੇ ਤਾਂ ਰੋਟੀਆਂ ਕਾਰਨ ਤਾਲਪੁਰੇ ਨੇ ساری عمر ਬਾਜਾ ਬਜਾ ਕੇ ਆ ਮਾਇਆ ਗੱਠੀ ਕੀਤੀ ਹੈ ਬੇਸਿਰਦ ਕੀਤਾ ਦਰਫ ਦਾ ਰੋਟੀਆਂ ਖਾਧੀਆਂ ਨੇ ਉਹ ਸਿਖਿਆ ਦੇਣ ਲੱਗੇ ਜੇ ਤੁਸੀਂ ਸਿੱਖ ਕੁਝ ਸਿੱਖੀ ਦਾ ਤੁਹਾਡੇ ਅੰਦਰ ਕੋਈ ਜਰਾ ਵੀ ਹੁੰਦਾ ਤਾਂ ਬਾਜੇ ਤੇ ਪੈਸੇ ਨਹੀਂ ਛਿਲਾਣ ਤੇ ਪੈਸੇ ਫਿਰ ਸੇਵਾ ਸੀ ਉਹ ਸਾਰੀ ਉਹ 900 ਖਾ ਕੇ ਚੂਹਾ ਬਿੱਲੀ ਹੱਜ ਨੂੰ ਜਾਂਦੀ ਹੈ ਗੱਲਾਂ ਕਰਦੇ ਨੇ ਸਿੱਖੀ ਦੀ ਹਾਂਜੀ ਬੇਦ ਬਿਆਸ ਕਰੇ ਕਈ ਦਿਨ ਕੋਟ ਇੰਦਰ ਉਪਿੰਦਰ ਬੇਦਬਿਆਸ ਕਰੇ کئی کئی ਬੇਦਬਿਆਸ ਪੈਦਾ ਕੀਤੇ ਨੇ ਬੇਦਬਿਆਸ ਨੂੰ ਕਹਿੰਦੇ ਜੀ ਨੇ ਬੇਸਮਝ ਲਿਆ ਬੇਸ ਬਹੁਤ ਗੋਲ ਚੀਜ਼ ਹੈ ਇਹ ਗੋਲਦਾਰ ਹੈ ਜੇ ਕੋਈ ਜੰਦਾ ਆ ਰਹੀ ਬਾਹਰ ਨਿਕਲਣਾ ਬੜਾ ਔਖਾ ਹੈ ਬਿਆਸ ਹੈ ਜਿਹੜਾ ਪਾਰ ਕਰ ਜਵੇ ਗੋਲਦਾਰੇ ਨੂੰ ਜਿਹੜਾ ਸੜਝਾ ਲਵੇ ਸੜਝਾ ਲਵੇ ਉੜ ਹੋਈ ਤਾਂ ਹੈ ਗਾਲ ਦੀ ਸੜਝਾ ਲਵੇ ਜਿਹੜਾ ਆਪਣਾ ਗਿਆਨ ਨੂੰ ਸਮਝ ਲਵੇ ਬੁੱਝ ਲਵੇ ਜਿਹੜਾ ਇਹਨੂੰ ਜਿਹੜਾ ਇਸ ਗਿਆਨ ਨੂੰ ਬੁੱਝ ਰਵੇ ਨਾ ਬੇਦਰੂ ਆਤਮ ਗਿਆਨ ਨੂੰ ਬੇਦਬਿਆਸ ਕਹਿੰਦੇ ਨੇ ਬੇਦਬਿਆਸ ਕਈ ਪੈਦਾ ਕੀਤੇ ਨੇ ਗੁਰਨਾਨਕ ਬੇਦਬਿਆਸ ਹੈ ਕਬੀਰ ਬੇਦਬਿਆਸ ਹੈ ਸਾਰੇ ਭੱਟ ਬੇਦਬਿਆਸ ਨੇ ਜਿਹੜੇ ਭਗਤਾਂ ਦੀ ਬਾਣੀ ਹੈ ਸਭ ਬੇਦਬਿਆਸ ਨੇ ਸੱਤਾਵਰ ਵੰਡ ਬੇਦਬਿਆਸ ਨੇ ਸਾਰੇ ਬਰਾਬਰ ਨੇ ਕੋਈ ਫਰਕ ਨਹੀਂ ਹੈ ਸੱਚ ਜੀ ਜਿਹਨੂੰ ਸਮਝ ਆ ਗਈ ਬੇਦਬਿਆਸ ਅਸੀਂ ਸਮਝ ਰਹੇ ਹਾਂ ਅਧਵਜਤ ਵੀ ਸਮਝ ਆ ਗਿਆ ਜੀ ਨੂੰ ਉਹ ਵੀ ਚੱਲ ਗੱਲ ਹੈ ਜੀ ਨੂੰ ਕੱਖ ਵੀ ਸਮਝ ਨਹੀਂ ਆਇਆ ਉਹ ਕਿਵੇਂ ਕਰੇ ਉਹ ਕਿਉਂ ਬੋਲੇ ਛੱਜ ਤਾਂ ਕਹਿੰਦਾ ਬੋਲੇ ਛਰਣੀ ਬੋਲਦੀਆਂ ਨੇ ਛੱਜ ਚੁੱਪ ਨੂੰ ਤਾਂ ਪਤਾ ਹੈ ਵੀ ਕੀ ਹੁੰਦਾ ਧਰਮ ਉਹ ਚੁੱਪ ਨੇ ਤਾਂ ਜੋ ਪਰ ਇਹਨਾਂ ਨੂੰ ਪਤਾ ਧਰਮ ਕੀ ਹੁੰਦਾ ਇਹਨੋਂ ਤਾਂ ਪਤਾ ਧਰਮ ਦਾ ਕੀ ਹੈ ਹਾਂਜੀ ਵੇਦ ਵਿਆਸ ਕਰੇ ਕਰੇ ਕਈ ਦਿਨ ਕੋਟ ਇੰਦਰ ਉਪਿੰਦਰ ਦਿਰ ਕੋਡ ਇੱਧਰ ਉਹਬਿੰਦਰ ਇੱਧਰ ਉਹਬਿੰਦਰ ਵੀ ਕਰੋੜਾਂ ਹੀ ਬਣਾਏ ਨੇ ਇੱਕ ਇੱਧਰ ਉਹਬਿੰਦਰ ਬਣਾਇਆ ਹੁਣ ਇਹਦਾ ਇੱਕ ਦਿਲ ਦੀ ਗੱਲ ਕਰਦੇ ਨੇ ਇੱਕ ਬੇਦ ਬਿਆਸ ਦੀ ਗੱਲ ਕਰਦੇ ਤੇ ਸਾਡੇ ਪਿੱਛੇ ਤਾਂ ਕਹਿੰਦੇ ਕਰੋੜਾਂ ਹੀ ਨੇ ਬੇਦ ਬਿਆਸ ਪਹਿਲਾਂ ਕੀਤੇ ਇੱਧਰ ਉਹਬਿੰਦਰ ਕਰੋੜਾਂ ਹੀ ਦੇ ਪਹਿਲਾਂ ਕੀਤੇ ਕਿਹੜੀ ਗੱਲ ਕਰਦੇ ਇਹਦਾ ਮਤਲਬ ਜਿਹੜਾ ਸਾਨੂੰ ਤਾਂ ਮਿਲਿਆ ਹੋਇਆ ਨਾ ਸਿੱਧੂ ਉਹ ਤਾਂ ਸਮਝ ਲੋ ਵੀ ਇੱਕ ਕਣਕਾਏ ਕਰੇ ਗੁਸਤਾਨ ਦਾ ਜਿਹੜਾ ਹੈ ਨਾ ਰੇਗਿਸਤਾਨ ਚ ਕਣਕਾ ਲੈ ਲਈ ਇੱਕ ਇੱਕ ਦਿਨਾਂ ਲੈ ਲਈ ਰਿਹਾ ਤੇ ਇੰਨਾ ਅਕੇ ਧਰਮ ਹੋਇਆ ਫਿਰ ਉਹਦਾ ਗਿਆਨ ਕਣਕੇ ਮਾਤਰ ਕਣਕਾਏ ਇੱਕ ਜੀਓ ਦਾ ਸਾਹ ਹੈ ਤਾਂ ਕਿ ਮਰਦਾ ਤਾਂ ਕਿ ਮੈਂ ਮਗੜੀ ਨਾ ਆਵਾਂ ਇਹ ਸਾਡੇ ਕੋਲ ਕਣਕੇ ਜੰਦਰੀ ਗਿਆਨ ਹੈ ਵੀ ਇਹਦੇ ਬਿਨਾਂ ਵੀ ਬਹੁਤ ਗਿਆਨ ਹੈ ਆ ਸਾਰੇ ਬਣਾਏ ਨੇ ਆਲੂ ਵਗੈਰਾ ਬਣਾਏ ਨੇ ਕੀਨੇ ਬਣਾਏ ਨੇ ਇੱਥੇ ਤਾਂ ਲਿਖਿਆ ਨਹੀਂ ਹੋਇਆ ਅਸੀਂ ਤਾਂ ਬਣਾ ਨਹੀਂ ਸਕਦੇ ਸਾਨੂੰ ਤਾਂ ਇੰਨਾ ਹੀ ਗਿਆਨ ਆ ਵੀ ਆਤਮਾ ਕੀ ਹੈ ਬਸ ਇਤੋਂ ਜ਼ਿਆਦਾ ਕੁਝ ਨਹੀਂ ਹੈ ਆਪਣਾ ਪਤਾ ਨੀ ਸਾਨੂੰ ਆਤਮਾ ਕੀ ਹੈ ਗੱਲਾਂ ਕਰਦੇ ਆ ਵੱਡ-ਵੱਡੀ ਆਪਣਾ ਹੀ ਨਹੀਂ ਪਤਾ ਬਈ ਕੀ ਉਹ ਦੂਏ ਨੂੰ ਕੀ ਦੱਸੂ ਜੇਕਰ ਆਤਮ ਗਿਆਨ ਦੀ ਗੱਲ ਦੱਸ ਦਵੇ ਸਾਨੂੰ ਕੋਈ ਵੀ ਆਦਮ ਕੀ ਹੁੰਦਾ ਗਿਆਨ ਕੀ ਹੈ ਫਿਰ ਸਾਨੂੰ ਕੋਈ ਸੁਝਾਅ ਦੇ ਦਵੇ ਉਦੋਂ ਨਾ ਕਹਾਦਾ ਸੀ ਬਹੁਤ ਕੁਝ ਜਾਣਦੇ ਆ ਜਿਹੜਾ ਇਹ ਗੱਲਾਂ ਕਰਦੇ ਤਾਂ ਬਹੁਤ ਘਾਹਾਂ ਜਾਣਦੇ ਨਾ ਸੀ ਬਹੁਤ ਕੁਝ ਘਾਹ ਇਹ ਤਾਂ ਜੋ ਇਹ ਤਾਂ ਉਹ ਲਾਈਨ ਲੱਗੇ ਵਾਲੀ ਜੇ ਆ ਜੋ ਕੀਰਤਨ ਕਰਕੇ ਮਾਇਆ ਘਬੌੜੇ ਜਾਣਦੇ ਰਹੇ ਮਾਇਆ ਧਾਰੀ ਨੇ ਇਹਨੇ ਬੋਲੇ ਨੇ ਜੇ ਇਹ ਤਾਂ ਮਾਇਆ ਧਾਰੀ ਨੇ ਬੋਲੇ ਨੇ ਅੰਨੇ ਬੋਲੇ ਦਾਤੇ ਨੇ ਉਹ ਕਥਾ ਕਰ ਸਾਨੂੰ ਸਮਝਾਉਣ ਲੱਗੇ ਘਰ ਬਕਾਲੇ ਨੇ ਯਾਰ ਬੁਰਾ ਜੀਵਨ ਲਾਇਆ ਹੋਏ ਕਿਸੇ ਗੱਲ ਤੇ ਚਾਹੇ ਕੋ ਮਿਲਿਆ ਚਾਹੇ ਨਾ ਮਿਲਿਓ ਉਹ ਜਿੰਨਾ ਕੋ ਮਿਲਿਆ ਦਿਖਾਤਾ ਜਿੰਨਾ ਕੋ ਮਿਲਿਆ ਉਹਨਾਂ ਕੋ ਦੱਸਤਾ ਅੱਗੇ ਜਾ ਕੇ ਪਤਾ ਲੱਗੂਗਾ ਕੱਚ ਪੱਕਦਾ ਅੱਗੇ ਪਤਾ ਲੱਗੂਗਾ ਉਹਨਾਂ ਕੋ ਦੱਸਤਾ ਜੇ ਨਾਲ ਸਾਨੂੰ ਮਿਲਿਆ ਜਿਹੜਾ ਉਹਨੂੰ ਮਿਲਿਆ ਦਿਖਾਵੇ ਕੀ ਮਿਲਿਆ ਦਿਖਾਵੇ ਵੀ ਕੁਝ ਜਿਹੜਾ ਮਿਲਿਆ ਗੱਲਾਂ ਨਾਲ ਨਹੀਂ ਗੱਲ ਗੱਲੀ ਕਿਰੇ ਨਾ ਪਾਇਆ ਦਿਖਾਉਣਾ ਬਹੁਤ ਬਹੁਤ ਆਟਾ ਕਰਨਾ ਤੇਰੀ ਜੋੜੀ ਚ ਉਹ ਦਿਖਾ ਕੀ ਹੈ ਤੇਰੇ ਕੋਲ ਕੀ ਹੈ ਦਿਖਾ ਕਿਉਂ ਹਾਂ ਤੇਰੇ ਕੋਲ ਪ੍ਰਾਪਰਟੀ ਹੈ ਭਾਜੀ ਤੈਨੂੰ ਪੈਸੇ ਮਿਲ ਰਹੇ ਕੀਰਤਨ ਵਧੀਆ ਕਰਨ ਜਾਣਨਾ ਉਹ ਤਾਂ ਮਾਇਆ ਹੈ ਉਹ ਮਾਇਆ ਬਾਕੀ ਜਿਹੜੇ ਤੈਨੂੰ ਮੰਨਣ ਵਾਲੇ ਹਨ ਵਾਬਲੇ ਨੇ ਜਿਹੜੇ ਸਨਮਾਨ ਕਰਦੇ ਨੇ ਕੋਲਾਂ ਦਿੰਦੇ ਵਾਬਲੇ ਜੇ ਤੂੰ ਲੈਣਾ ਤੂੰ ਲੱਜਾ ਬੇਸ਼ਰਮ ਕੁਰਬਾਨੀ ਦਾ ਸਾਹ ਬਰੋ ਲੈਦੇ ਬੜੇ ਨਰਾਜ ਜਨਮ ਜਾਤਾ ਕਰਮ ਗਿਆਤਾ ਧਰਮ ਚਾਰ ਵਿਚਾਰ ਜਨਮ ਜਾਤਾ ਜਨਮ ਜਾਤਾ ਕਰਮ ਗਿਆਤਾ ਕਰਮ ਗਿਆਤਾ ਜਿਹਨੇ ਜਨਮ ਨੂੰ ਜਾਣ ਲਿਆ ਜਨਮ ਕੀ ਹੁੰਦਾ ਜਾਣਤਾ ਹੁੰਦਾ ਜਾਣਣਾ ਜਨਮ ਕੀ ਹੁੰਦਾ ਆ ਜਿਹੜਾ ਸਾਡਾ ਜਨਮ ਹੈ ਜਾਨੂੰ ਹੁੰਦਾ ਹੀ ਨਹੀਂ ਨਾ ਸੰਸਾਰ ਦਾ ਮਾਲ ਨਾ ਮੜਨਾ ਨਾ ਜਨਮ ਜਨਮ ਜਨਮ ਕਰਮ ਦਾ ਹੀ ਪਤਾ ਨਹੀਂ ਹੈ ਸੰਸਾਰ ਨੂੰ ਜਨਮ ਜਾਤਾ ਕਰਮ ਗਿਆਤਾ ਜਿਹਨੇ ਜਨਮ ਨੂੰ ਜਾਣ ਲਿਆ ਕੀ ਹੁੰਦਾ ਉਹਨੂੰ ਕਰਮ ਦਾ ਪਤਾ ਲੱਗਦਾ ਕਰਮ ਦਾ ਗਿਆਤਾ ਗਿਆਨ ਕਰਮ ਦਾ ਗਿਆਨ ਕੀ ਕਰਨਾ ਕੀ ਨਹੀਂ ਕਰਨਾ ਕਰਮ ਦਾ ਕੀ ਹੁੰਦਾ ਕਰਮ ਉਹਨੂੰ ਪਤਾ ਲੱਗੂ ਜਿਹਨੂੰ ਜਨਮ ਦਾ ਪਤਾ ਹੈ ਜਨਮ ਹੁੰਦਾ ਕੀ ਹੈ ਸੰਸਾਰ ਦਾ ਜਲ ਬਜਲ ਨਹੀਂ ਹੈ ਸ਼ਰੀਰ ਤਾਦ ਕਰਨਾ ਜਲ ਨਹੀਂ ਹੈ ਕਿੱਥੇ ਜਨਮ ਹੈ ਨਾ ਕਿਛ ਮਰ ਹੈ ਆਪੜ ਜਲਤ ਆਪ ਹੀ ਕਰਾ ਹੈ ਆਵੜ ਜਾਵੜ ਸਿਸ਼ਟ ਪਹਿਲਾਂ ਜਨਮ ਦਾ ਹੀ ਨਹੀਂ ਜਨਮ ਕੀ ਕਿਵੇਂ ਹੁਣ ਏਹੀ ਤਾਂ ਜਲ ਦੱਸਦੀ ਹੈ ਗੁਰਬਾਣੀ ਜਨਮ ਜਾਤਾ ਕਰਮ ਗਿਆਤਾ ਧਰਮ ਵਿਚਾਰ ਧਰਮ ਵਿਚਾਰ ਧਰਮ ਦੀ ਚਾਰ ਵਿਚਾਰੋਂ ਤੋਂ ਬਾਅਦ ਚ ਇਹੜੀ ਧਰਮ ਦੀ ਚਾਰ ਵਿਚਾਰ ਕਰਨ ਲੱਗੇ ਨਾ ਤਾਂ ਮੈਂ ਬੋਲਦਾ ਇੱਥੇ ਹੁਣ ਅਜੂ ਧਰਮ ਦੀ ਚਾਰ ਵਿਚਾਰ ਕਰਨ ਲੱਗੇ ਨਾ ਦੱਸਣ ਵੀ ਧਰਮ ਆ ਜੀ ਹੈ ਧਰਮ ਜਾ ਨਹੀਂ ਜਾਂਦਾ ਹੋਰ ਨਹੀਂ ਜਾਂਦਾ ਪਹਿਲਾਂ ਐ ਸਟੇਜ ਵਾਲੇ ਨੂੰ ਗੱਲ ਕਰਨ ਦੀ ਹਦਾਇਤ ਹੈ ਜਨਮ ਜਨਤਾ ਕਰਮ ਗਿਆਤਾ ਜਨਮ ਜਨਤਾ ਕਰਮ ਗਿਆਤੇ ਤੋਂ ਬਿਨਾ ਧਰਮ ਦੀ ਚਾਰ ਵਿਚਾਰ ਨਹੀਂ ਕਰ ਸਕਦਾ ਬੋਲ ਨਹੀਂ ਸਕਦਾ ਇਹਦੇ ਬਾਰੇ ਪਹਿਲਾਂ ਸਿੱਖ ਲਓ ਕੁਛ ਫੇ ਬੋਲਿਓ ਪਹਿਲਾਂ ਕੋ ਜਾਣ ਲਓ ਫਿਰ ਬੋਲੇਓ ਜਦ ਤਨ ਜਾਣ ਲੋਗੇ ਉਦੋਂ ਕੋਈ رائے ਦੇ ਸਕਦੇ ਉਹ ਪਹਿਲਾਂ رائے ਵੀ ਕੋਈ ਦੇ ਸਕਦੇ ਧਰਮ ਚਾਰ ਵਿਚਾਰ ਚਾਹ ਹਜ਼ਾਰਾਂ ਵਾਰੇ ਵਿਚਾਰ ਧਰਮ ਦੇ ਅਚੜਵਾਰੇ ਸਲਾਹਕਾਰ ਵਾਰੇ ਵਿਚਾਰ ਹੈ ਉਦੋਂ ਹੋ ਸਕਦੀ ਹੈ ਜੇ ਇੰਨਾ ਕੋਈ ਤੁਹਾਨੂੰ ਗਿਆਨ ਹੋਵੇ ਜਨਮ ਜਾਤਾ ਕਰਮ ਗਿਆਤਾ ਜਾਂ ਕਰਮ ਗਿਆਤਾ ਹੋ ਜੇ ਜਨਮ ਜਾਤ ਜਾਣ ਲਵੇ ਜਨਮ ਕੀ ਕਿਵੇਂ ਹੁੰਦਾ ਜਿਹਨੇ ਜਨਮ ਜਾਣ ਲਿਆ ਉਹਨੂੰ ਜਨਮ ਦਾ ਮਿਲ ਵੀ ਗਿਆ ਇਹ ਵੀ ਗੱਲ ਹੈ ਆਹ ਹਨੇ। ਕਰਮ ਗਿਆਤਾ। ਕਰਮ ਦਾ ਕਰਪਾ। ਕਰਮ ਦਾ ਕਰਪਾ। ਜੇ ਕਰਮ ਕੋਈ ਕਰਮ ਨਹੀਂ ਹੁੰਦਾ। ਜਬ ਲਗ ਜਾਣੇ ਮੈਂ ਕੁਝ ਕਰਤਾ। ਤਾਂ ਲਗ ਗਿਆ। ਇਹ ਕਰਮ ਗਿਆਤਾ ਹੋਰ ਹੈ। ਹੁਕਮ ਨੂੰ ਮੁਝਲਵੇ ਹੁਕਮ ਕਰ। ਮੁਕਮ ਨੇ ਵਿਚਰੇਣਾ ਕਰਮ ਹੈ ਸਾਡਾ। ਹੁਕਮ ਦੇ ਵਿੱਚ ਪਾਣੀ ਚ ਚਲਾਣਾ ਸਾਡਾ ਕਰਮ ਔਰ ਕੋਈ ਕਰਮ ਨਹੀਂ ਪਾਣੀ ਨੂੰ ਮੁਝ ਲੈਣਾ ਇਹ ਕਰਮ ਗਿਆਤ ਹੁਕਮ ਨੂੰ ਮੁਝ ਚਾਰ ਵਿਚਾਰ ਦਰਮ ਦੀ ਕਰੇ ਉਹ ਤਾਂ ਪਹਿਲਾਂ ਬਕਵਾਸ ਨਾ ਕਰੇ ਚੁੱਪ ਕਰਕੇ ਬੈਠਾ ਰਹੇ ਸੁਣ ਲਵੇ ਗੱਲ ਕੀ ਹੈ ਸੁਣ ਲਵੇ ਦਰਮ ਕੀ ਹੈ ਅਜੋ ਤਾਂ ਤਾਂ ਸੁਣਿਆ ਵਰੀ ਕੀ ਹੈ ਤੈਨੂੰ ਕਿੱਥੋਂ ਪਤਾ ਲੱਗ ਗਿਆ ਯੋ ਨ ਸੁਣਿਆ ਹੀ ਨਹੀਂ ਹੈ ਉਹਨੂੰ ਪਤਾ ਕਿਵੇਂ ਲੱਗ ਗਿਆ ਵੀ ਤਰਮ ਕੀ ਹੈ ਸੋ ਜੀ ਬੇਦ ਭੇਦ ਨਾ ਪਾ ਬਈ ਸ਼ਿਵ ਰੁਦਰ ਔਰ ਮੁਖਚਾਰ ਲੈ ਰੁਦਰ ਬੇਦ ਭੇਦ ਮੁਖਚਾਰ ਬ੍ਰਹਮਾ ਇਹਨਾਂ ਨੂੰ ਲੱਗਦੇ ਪਤਾ ਨਹੀਂ ਲੱਗਿਆ ਬੇਦਾਂ ਨੂੰ ਭੇਦ ਨਹੀਂ ਪਾਇਆ ਉੱਪਰਲੀ ਗੱਲ ਜਿਹੜੀ ਕਹੀ ਹੈ ਚਾਰ ਵਿਚਾਰ ਦਾ ਬੇਦ ਬੇਦ ਭੇਦ ਨਾ ਪਾ ਸ਼ੇਵ ਰੁੱਦਰ ਔਰ ਮੁਖਤਾਰ ਸ਼ੇਵ ਦੇ ਨਹੀਂ ਪੇਤ ਪਾਇਆ ਰੁੱਦਰ ਨੇ ਨਹੀਂ ਪਾਇਆ ਔਰ ਬ੍ਰਹਮਾ ਨੇ ਨਹੀਂ ਪਾਇਆ ਮੁਖਤਾਰ ਉਹਨਾਂ ਨੇ ਪਹਿਚਾਨੀ ਪਾਇਆ ਤੈਨੂੰ ਪਤਾ ਲੱਗ ਗਿਆ ਸੁਪਨਾ ਆ ਗਿਆ ਨਾ ਤੈਨੂੰ ਵੀ ਕੀ ਹੈ ਉਪਿੰਦਰ ਵ્યાਸ ਸੰਕ ਸੰਤ ਕੁਮਾਰ ਕਰੋੜਾ ਇੰਦਰ ਬਣਾਤੇ ਉਹਨਾਂ ਨੂੰ ਨਹੀਂ ਪਤਾ ਲੱਗਿਆ ਵ્યાਸ ਵ્યાਸ ਕਰੋੜਾ ਬਣਾਵੇ ਉਹਨਾਂ ਨੂੰ ਹੀ ਸਮਝਾਈ ਸੰਕ ਸੰਤ ਕੁਮਾਰ ਸਾਨਕ ਸਨੰਦਨ ਉਹਨਾਂ ਨੂੰ ਨਹੀਂ ਪਤਾ ਲੱਗਿਆ ਬੜੇ ਤਪਸਵੀ ਹੋਏ ਨੇ ਗਾਏ ਪਤਾ ਲੱਗਿਆ ਆ ਰੂਪਤਾ ਨਹੀਂ ਲੱਗਿਆ ਇੰਨੇ ਸਬਰਦਿਸ਼ਾਤਣ ਬਣਾਏ ਨੇ ਕਿਸੇ ਨੂੰ ਨਹੀਂ ਪਤਾ ਲੱਗਿਆ ਤੈਨੂੰ ਕਿੱਥੋਂ ਲੱਗਿਆ ਇਹਨੂੰ ਕਿੱਥੋਂ ਲੱਗਿਆ ਪਤਾ ਗਾਏ ਗਾਏ ਥੱਕੇ ਸਵੇਰ ਗਾਏ ਗਾਏ ਥੱਕੇ ਸਵੇਰ ਉਹ ਤੇਰੇ ਮੰਗੂ ਹੀ ਗਾਉਂਦੇ ਤੇ ਜਿਵੇਂ ਤੂੰ ਕੋਲ ਉਹ ਥੱਕ ਗਏ ਸਾਰੇ ਥੱਕ ਗਏ ਗਾ ਗਾ ਕੇ ਚੱਕਰਤ ਪਏ ਮੁਖਚਾਰ ਚੱਕਰਤ ਪਏ ਚੱਕਰ ਚ ਪਏ ਹੋਏ ਤੇ ਸਾਰੇ ਜਿਵੇਂ ਚੱਕਰ ਨੇ ਚੱਕਰ ਜੇ ਪਿਆ ਹੈਰਾਨ ਹੋ ਜਾਣ ਚੱਕਰ ਚ ਪਿਆ ਹੋਇਆ ਆਦ ਹੈਰਾਨ ਹੁੰਦਾ ਸਮਝ ਨਹੀਂ ਆਈ ਕਿ ਆਤਮ ਗਿਆਨ ਆਤਮ ਕੀ ਚੀਜ਼ ਹੈ ਜਨਮ ਪਦਾਰਥ ਕੀ ਹੁੰਦਾ ਇਹ ਦੀ ਸਮਝ ਆਈ ਓਏ ਬੀਜ ਦਾ ਪਤਾ ਲਗੂ ਪਹਿਲਾਂ ਤਾਂ ਹੀ ਉਹਦਾ ਜਨਮ ਹੋਊ ਬੀਜ ਦਾ ਬੀਜ ਕੀ ਹੈ ਨਾ ਬੀਜਣਾ ਕਿਵੇਂ ਬੀਜਣਾ ਨਾਮ ਕੀ ਹੁੰਦਾ ਜਿਹੜਾ ਬੀਜਣਾ ਨਾ ਬੋ ਬੋਵੋ ਧਾੜ ਕੀ ਹੈ ਧਾਲੇ ਕਿਵੇਂ ਹੋ ਜੰਮੂ ਕਿੱਥੇ ਕਿੱਥੇ ਵੀ ਜਾਊ ਸਵਾਗਾ ਸੰਤੋਖ ਦਾ ਕੀ ਹੁੰਦਾ ਨਾ ਬੀਜ ਸੰਤੋਖ ਸੁਖ ਇਹ ਸਾਰੀਆਂ ਗੱਲਾਂ ਦਾ ਜਵਾਬ ਦੇਣ ਫੇਰ ਗੱਲ ਕਰਾਂਗੇ ਫੇਰ ਕਹਾ ਬੋਲਣ ਪਹਿਲਾਂ ਇਹ ਗੱਲਾਂ ਦਾ ਜਵਾਬ ਸਤ ਨੂੰ ਸਮਝਾ ਦੇਣ ਇਆ ਸੁਣ ਲੈਣ। ਇਆ ਸੁਣ ਲੈਣ ਜਵਾਬ ਦੇਈ ਜਾਂਦੇ 2 ਜਾਣ। ਸੁਣ ਲੈਣ ਫੇ ਦੱਸ ਬੁਲ। ਗੱਲ ਉਹਦੀ ਮੰਨਣੀ ਐ ਜਿਹਦੇ ਸਭ ਕੁਝ ਸੁਣ ਜਾ ਦੇਣ। ਜਿਹਦੇ ਤਸੱਲੀ ਕਰਾ ਦੇਣੀ ਐ ਨਾ ਉਹਦੀ ਗੱਲ ਸਭ ਤੇਰੇ ਸੁਣਦੀ ਐ ਕਿਸੇ ਦੀ ਨਹੀਂ ਸੁਣਦੀ। ਅੱਗੇ ਵੀ ਗੁਰੂ ਬਥੇਰੇ ਬਣ ਕੇ ਬਹਿਦੇ ਰਹੇ ਜੀ ਬਾਈਬਲ ਜੀਆਂ ਲਾ ਕੇ। ਕਿਸੇ ਦੀ ਨਹੀਂ ਸੁਣੀ। ਸੁਣੀ ਉਹਦੀ ਅਜੇ ਤੱਕ ਕੋਈ ਥਾ ਕੁਝ। ਜਿਹਦੇ ਕੋ ਥਾ ਕੋ ਤਸल्ली ਕਰਾਤੀ ਜਿਹਨੂੰ ਦੀ ਸੁਣ ਲਈ ਜਿਹੜਾ ਤਸल्ली ਨਹੀਂ ਕਰਾ ਸਕਿਆ ਉਹ ਕੱਢ ਬਾਹਰ ਧਰੋਤਾ ਜਾ ਕੇ ਸੰਗਤ ਨੇ ਦੁਨੀਆ ਮੂਰਖ ਹੈ ਤੁਸੀਂ ਬਹੁਤ ਦੁਨੀਆ ਤੁਸੀਂ ਮੂਰਖ ਸਮਝਦੇ ਜੇ ਮੂਰਖ ਸਮਝਦਾ ਮੂਰਖ ਤੁਸੀਂ ਆਪ ਹੋ ਜਿਨ੍ਹਾਂ ਨੇ ਦੁਨੀਆ ਨੂੰ ਮੂਰਖ ਸਮਝਿਆ ਮੂਰਖ ਆਪ ਹੁੰਦਾ ਉਹ ਐਸਾ ਮੂਰਖ ਸਾਬਤ ਹੁੰਦਾ ਜੇ ਮਰਾ ਰਾਵਰੇ ਸਾਬਤ ਹੋ ਗਿਆ ਐਸਾ ਮੂਰਖ ਸਾਬ ਦੁੰਦੇ ਜੇ ਮੀਰ ਬੁੱਲ ਸਾਬਤ ਹੋ ਗਿਆ ਇਹ ਜਬ ਧਰੇ ਹੋ ਗਏ ਸਾਬਤ ਆਦ ਅੰਤਨ ਮਦ ਜਾ ਕੋ ਭੂਤ ਭਭ ਭਵਾਨ ਆਦ ਅੰਤਨ ਵੱਧ ਜਾ ਕੋ ਨਾ ਉਹਦਾ ਆਦਾਨ ਅੰਤਨ ਵੱਧ ਵਿਚਾਲਾ ਤੇਨੇ ਕਾਲ ਹੁੰਦੇ ਕਾਲ ਤਾਂ ਹੀ ਪਰੇ ਜਿਹੜਾ ਉਹਦਾ ਆਦ ਅੰਤ ਵੱਧ ਕਦੇ ਹੋ ਜਿਹੜਾ ਕਾਲ ਦੇ ਵਸਾ ਉਹਦਾ ਆਦ ਅੰਤ ਵੱਧ ਹੁੰਦਾ ਸਤ ਦਵਾਪਰ ਤ੍ਰਿਤੀਆ ਕਲਯੁਗ ਚਤਰਕਾਲ ਪ੍ਰਧਾਨ ਸਹਜੁਗ ਹੋਇਆ ਦਵਾਪਰ ਹੋਇਆ ਕਲਯੁਗ ਹੋਇਆ ਜਿਹੜੇ ਨੇ ਯੁਗ ਬਣੇ ਹੋਏ ਨੇ ਇਹ ਚਾਰਾਂ ਯੁਗਾਂ ਚ ਪ੍ਰਧਾਨ ਰਹਿਂਦਾ ਸੱਚੇ ਰਹਿਂਦਾ ਸੱਚ ਚਾਰਾਂ ਯੁਗਾਂ ਚ ਪ੍ਰਧਾਨ ਰਹਿੰਦਾ ਚਾਰਾਂ ਯੁਗਾਂ ਚ ਸੱਚ ਦੀ ਗੱਲ ਨੂੰ ਕੋਈ ਨਹੀਂ ਕੱਟ ਸਕਦਾ ਜੋ ਵੇ ਗੁਰਬਾਣੀ ਦੀ ਹੋ ਰਹੀ ਹੈ ਇਹਨੂੰ ਕੋਈ ਸਾਬਤ ਨਹੀਂ ਕਰ ਸਕਦਾ ਵੀ ਗਲਤ ਹੈ ਕਰਕੇ ਦਿਖਾਉਣ ਸਾਬਤ ਇਸੇ ਨੂੰ ਕੱਲਣ ਚਲੇ ਇਸੇ ਤੇ ਟੈਸਟ ਸੀ ਕਿਉਂ ਗੁਰਬਾਨੀ ਦੀ ਬਿਆਖਿਆ ਕਮੀ ਕੱਢ ਕੇ ਦਿਖਾਉਣ ਇਹ ਹੀ ਲੋਚਾਰਾਂ ਜੁਗਾਂ ਚ ਤੇ ਆਏ ਤੇ ਆਏ ਥੱਕੇ ਮਹਾਮੁਨੀ ਗਾਇ ਗੰਧਰਵ ਆਪਾਰ ਤੇ ਆਏ ਤੇ ਆਏ ਧਿਆਨ ਲਾ ਲਾ ਕੇ ਮਹਾਮੁਨੀ ਥੱਕ ਗਏ ਧਿਆਨ ਜੋੜ ਜੋੜ ਕੇ ਧਿਆਨ ਲਾਉਂਦੇ ਸੰਬੰਧੀ ਲਾਉਂਦੇ ਰਹੇ ਤੇ ਆਏ ਤੇ ਆਏ ਥੱਕੇ ਮਹਾਮੁਨੀ ਮਹਾਮੁਨੀ ਬਥੇਰੇ ਥੱਕ ਗਏ ਸੰਬਧੀਆਂ ਲਾ ਲਾ ਕੇ ਤੁਸੀਂ ਤਾਂ ਕੱਖਵਰੀ ਕੀਤਾ ਤੁਸੀਂ ਤਾਂ ਮਾਇਆ ਕੱਢੀ ਕੀਤੀ ਆ ਤਾਂ ਬਹੁਤ ਕੁਝ ਕੀਤਾ ਧਰ ਲੋਕਾਂ ਨੇ ਉਹਨਾਂ ਦੇ ਹੱਥ ਨਹੀਂ ਕੁਝ ਆਇਆ ਤੁਹਾਡੇ ਕਿੱਥੋਂ ਆਜੂਗਾ ਕਾਏ ਗੰਧਰ ਬਪਾਰ ਅਪਾਰ ਗੰਧਰਮ ਕਾ ਕੇ ਬਥੇਰੇ ਥੱਗੇ ਕੁਛ ਨਹੀਂ ਮਿਲਿਆ ਉਹਨਾਂ ਨੂੰ ਹਾਰ ਹਾਰ ਥੱਕੇ ਸਭਾ ਨਹੀਂ ਪਾਈ ਐ ਤਹਬਾਰ ਹਾਰ ਹਾਰ ਸਾਰੇ ਥੱਕ ਗਏ ਕਿਸੇ ਨੂੰ ਨਹੀਂ ਸਮਝਾਈ ਪਾਲ ਲਾ ਪਾਸਾ ਮਾਇਆ ਦੇ ਵਿੱਚ ਹੀ ਰਹਿ ਗਏ ਮਾਇਆ ਤੋਂ ਪਾਰ ਨਹੀਂ ਜਾ ਸਕੀ ਪਾਰ ਮਾਇਆ ਦਾ ਹੀ ਹੁੰਦਾ माया ਦੇ ਜਕਰ ਭੀ ਜੋ ਨਹੀਂ ਨਿਕਲ ਸਕੇ ਪਰਮ ਦੇ ਚੱਕਰ ਭੀ ਜੋ ਨਹੀਂ ਨਿਕਲ ਸਕੇ ਬਾਹਰ ਪਰਮ ਚੇ ਫਸੇ ਰਹੇਗੇ ਨਾਰਦਾ ਆਦਿਕ ਵੇਦ ਮੁਨੀ ਬਹੁਤ ਅਨੰਤ ਜਿਤੇ ਵੀ ਨੌ ਜਾਂਦੇ ਨੇ ਆਉਂਦੇ ਨੇ ਤੇ ਆਏ ਤੇ ਆਏ ਥਕੇ ਕਰ ਕੋਟ ਕਸ਼ਟ ਦਰੰਤ ਕਰੋਣਾ ਕਸ਼ਟ ਉਸਾਰਦੇ ਰਹਨੇ ਬੋਲਦਾਰੀ ਨੂੰ ਰੱਬ ਕਰਦੇ ਰਹੇ ਨੇ ਕਿਸੇ ਨੂੰ ਸਮਝ ਨਹੀਂ ਆਈ ਘਰ-ਬਾਰ ਛੱਡ ਕੇ ਜੰਗਲਾਂ 'ਚ ਭੁੱਜੇ ਪੈਂਦੇ ਰਹੇ ਨੇ ਉਹ ਤੁਸੀਂ ਕੀ ਕੀਤਾ ਸਖਾ ਨੇ ਕੀ ਕੀਤਾ ਇਹਨਾਂ ਨੂੰ ਕਿੱਥੋਂ ਸਮਝਾ ਜੂਗੀ ਸਮਝ ਆਉਦੀ ਧਰਮ ਦੀ ਬਹੁਤ ਕੁਝ ਕਰਨਾ ਪੈਂਦਾ ਜਿਨ੍ਹਾਂ ਨੇ ਕੀਤਾ ਉਹਨਾਂ ਨੂੰ ਸਮਝ ਆਏਗੀ ਤੁਹਾਨੂੰ ਆ ਸਮਝ ਗਾਏ ਗਾਏ ਥੱਕੇ ਗੰਧਰਵ ਨਾਚ ਅਪਛਰ ਅਪਾਰ ਅਪਛਰਾਂ ਨਾਚ ਕੇ ਗਾਂਦੇ ਗੀਤਾਂ ਤੇ ਅੱਗੇ ਨੱਚਦੇ ਹੁੰਦੇ ਸੀ। ਉਹ ਪਛਰਾ ਨੱਚ ਕੇ ਧਰਮੇ ਗਾਇਆ ਜਾਂਦਾ ਸੀ। ਬਾਯਨ ਚੇਲੇ ਨਚਣ ਗੁਰ ਪੈਰ ਹਲਾਇਨ ਫੇਰ ਲਸਰ। ਉਹ ਧਰਮ ਦੇ ਕਹਉਂਦੇ ਸੀ। ਇਹ। ਕੱਖ ਕੇ ਸਾਰੇ ਹਾਰ ਕੇ ਕਿਸੇ ਨੂੰ ਸਮਝ ਨਹੀਂ ਆਈ। ਬੱਲੇ ਦੀ ਕੁਛ ਪਿਆ। ਸੋਧ ਸੋਧ ਥੱਕੇ ਮਹਾਸੁਰ ਪਾਇਓ ਨਹਿ ਪਾਰ। ਮਹਾਸੁਰ ਸੀ ਜਿਹੜੇ ਦੇਵਤੇ ਦੇ ਉਬੀ ਸੋ ਸੋ ਥਕਲੇ ਮਤਾ ਇੱਕ ਬਣਾਈ ਦੋ ਬਣਾਈ ਜੋਸੋਦ ਕੀਤੀ ਉਹ ਜੋਸੋਦ ਕੀਤੀ ਥਕਲੇ ਸਮਝ ਨਹੀਂ ਲੱਗੀ ਗਲਤੀ ਤਾ ਪ੍ਰਸਾਦ ਦੋਹਰਾ ਤਾ ਪ੍ਰਸਾਦ ਦੋਹਰਾ ਏਕ ਸਮੇਂ ਸ੍ਰੀ ਆਤਮਾ ਉਚਰੇਉ ਮਤ ਸਿਉ ਬੈਨ ਪ੍ਰਤਾਪ ਜਗਦੀਸ਼ ਕੋ ਕਹੋ ਤੈਨ ਦੇਖੋ ਸਾਰੇ ਜਨਾਬੀ ਆਦ ਗੁਰੂ ਗ੍ਰੰਥ ਸਾਹਿਬ ਦਾ 10ਵਾਂ ਉਹਦਾ ਨਿਚੋੜ ਆ ਗਿਆ ਹੁਣੇ ਛਾਰੇ ਦਾ ਨਿਚੋੜ ਐ ਡਾਇਰੈਕਟ ਸਵਾਲ ਕਿਤੇ ਆਈ ਨਹੀਂ ਇੱਕ ਸਮੇਂ ਸ੍ਰੀ ਆਤਮ ਉਚਰਿਓ ਮਤਸੋਂ ਬੈਣ ਉਚਰਿਓ ਮਤਸੋਂ ਬੈਣ ਇੱਕ ਬੱਤ ਇੱਕ ਪਾਸੇ ਬੱਤ ਰੱਖੀ ਐ ਇੱਕ ਪਾਸੇ ਆਤਮ ਰੱਖੀ ਐ ਕੌਣ ਬੱਤ ਉਹੀ ਗੱਲ ਖੜਗ ਉਹੀ ਚੱਡੀ ਆ ਬੱਤ ਗੁਰਮਤਿ ਆਦਮੀ ਆਦਮੀ ਜਿਵੇਂ ਰਹਿੰਦਾ ਸ਼ਰੀਰ ਦੀ ਜਦ ਹੁੰਦਾ ਫਿਰ ਉਹ ਸ਼ਰੀਰ ਜਦ ਕਹਿੰਦੇ ਨੇ ਹਰ ਕਾ ਸੇਵ ਕੋ ਸੋ ਹਰ ਜੇਹਾ ਭੇਦ ਨਾ ਜਾਣੋ ਮਾਨਸ ਆ ਉਹ ਤਾਂ ਪੁੱਛਿਆ ਇੱਕ ਸਮੇਂ ਸ੍ਰੀ ਆਤਮਾ ਉਚਰੇਉ ਕਿਸੇ ਆਤਮਾ ਨੇ ਪੁੱਛਿਆ ਕਿਸੇ ਬੰਦੇ ਨੇ ਆਤਮਾ ਹੀ ਪੁੱਛੂ ਰੋ ਆਤਮਾ ਨੇ ਪੁੱਛਿਆ ਦੱਸ ਦੇ ਦੋ ਆਦਮੀ ਨੇ ਸ੍ਰੀ ਕੜਤੇ ਪਿਛੋਂ ਆਦਮੀ ਦੋ ਉਹ ਗਿ ਕ ਸਮੇਂ ਸ੍ਰੀ ਆਤਮਾ ਉਚਰੇ ਮਤਸੋਂ ਬਹਿਣ ਬੱਜੋ ਬਹਿ ਸਰੀਰ ਦੋਹਾਂ ਦਾ ਨਹੀਂ ਰਿਹਾ ਨਾ ਪੁੱਛਣ ਵਾਲੇ ਦਾ ਸਰੀਰ ਦੀ ਗੱਲ ਹੈ ਨਾ ਦੱਸਣ ਵਾਲੇ ਦੀ ਸਰੀਰ ਦੀ ਗੱਲ ਹੈ ਸਵਾਲ ਆਤਮਾ ਦਾ ਪੁੱਛਿਆ ਬੰਤ ਤੂੰ ਗੁਰੂ ਦੇ ਤਾ ਨਹੀਂ ਪੁੱਛਿਆ ਕਿਸੇ ਆਤਮ ਜਿਹਦੇ ਅੰਦਰ ਅਵਲਾਖੀ ਦੇ ਕਿਸੇ ਨੂੰ ਜਿਹਨੂੰ ਪਿਆਸ ਹੈ ਨਾ ਆਮ ਦੀ ਭੁੱਖ ਹੈ ਉਹਨੇ ਸਵਾਲ ਹੈ ਦੱਸਣ ਵਾਲੇ ਕੋ ਜਵਾਬ ਹੈ ਗੁਰੂ ਕੋ ਜਵਾਬ ਹੈ ਦੋਹਾਂ ਦੀ ਗੱਲ ਹੈ ਸਰਵ ਪ੍ਰਤਾਪ ਜਗਦੀਸ਼ ਕੋ ਕਹੋ ਸકલ ਵਿਦਿਤਾਣ ਸਾਰੇ ਪ੍ਰਤਾਪ ਜਗਦੀਸ਼ ਦੇ ਨੇ ਸੰਸਾਰ ਦੇ ਉੱਤੇ ਸਭ ਕੁਝ ਉਹੀ ਕਰ ਰਿਹਾ ਹੈ ਉਹੀ ਦੇ ਰਿਹਾ ਸਾਰਿਆਂ ਦਾ ਭਲਾ ਉਹੀ ਕਰ ਰਿਹਾ ਇਹ ਤਾਂ ਗੱਲ ਅਸੀਂ ਸੁਣੀ ਪਰ ਮੈਨੂੰ ਸਮਝਾ ਕੇ ਦੱਸੋ ਕਿਵੇਂ ਹੈ ਕਹੋ ਸકલ ਵਿਦਿਤਾਣ ਤੂੰ ਇਹ ਸਾਰੇ ਮ ਵਿਦਿਆਰਾਂ ਮੈਨੂੰ ਸਮਝਾ ਕੇ ਦੱਸ ਮੇਰੇ ਖੰਨੇ ਚ ਪਠਾ ਗੱਲ ਛੁੱਲਿ ਛੁੱਲਦੇ ਤਾਂ ਸਾਰੇ ਜਾਣ ਮੈਨੂੰ ਇਹਦਾ ਦਰਸ਼ਨ ਕਰਾ ਸਮਝਾ ਕੇ ਸਮਝਾਉਣਾ ਹੀ ਦਰਸ਼ਨ ਹੈ ਜੇ ਸਮਝ ਨਹੀਂ ਆਇਆ ਗੱਲ ਸੁਣ ਲਈ ਦਰਸ਼ਨ ਨਹੀਂ ਹੋਇਆ ਜਿਹੜੀ ਗੱਲ ਸੁਣੀ ਹੈ ਜੇ ਸਮਝ ਆ ਗਈ ਦਰਸ਼ਨ ਹੋ ਗਿਆ ਮੈਂ ਦੇਖ ਲਮਾ ਵੀ ਹਾਂ ਕਰਤਾ ਸਾਡੇ ਸਾਹਮਣੇ ਰਿਹਾ ਨਾ ਹੁਕਮ ਦੇ ਰਹੀਂ ਸਭ ਕੁਝ ਹੋ ਰਿਹਾ ਹੁਕਮ ਦਾ ਦਰਸ਼ਨ ਕਰਨਾ ਹੀ ਦਰਸ਼ਨ ਹੈ ਕੋ ਨੂੰ ਬੁਝਣਾ ਹੀ ਦਰਸ਼ਨ ਹੈ ਇਹ ਹੈ ਹਕਮ ਦੇ ਤਰੂ ਹੋ ਰਿਹਾ ਜਸ ਕੋਸ਼ਿਸ਼ ਹਕਮ ਨੂੰ ਸਮਝਾਵਨੂ ਹਕਮ ਕੀ ਕਰ ਰਿਹਾ ਕਿਵੇਂ ਹੋ ਰਿਹਾ ਸੋ ਸਭ ਤੇਰਾ ਪੜ ਇਹ ਸਮਝਾ ਬਿੱਦੂ ਕਿਵੇਂ ਦੋਹਰਾ ਕੋ ਆਤਮਾ ਸਰੂਪ ਹੈ ਕਹਾ ਸਵਾਲ ਹੈ ਸਿਰਫ ਜਵਾਬ ਨਹੀਂ ਹੈ ਸਿਰਫ ਸਵਾਲ ਨੇ ਇਹ ਜਵਾਬ ਤਾਂ ਇਹ ਸਵਾਲ ਰੱਖੇ ਨੇ ਇੱਥੇ ਜਵਾਬ ਅਸੀਂ ਦਸ ਬੋਰੰਤ ਪੜ੍ਹ ਕੇ ਆਦ ਪੜ੍ਹ ਕੇ ਜੋ ਆਪ ਦੇਣੇ ਨੇ ਇਹ ਪਰਚਾ ਪਾਸ ਬਿਲ ਤਾਲ ਹੁੰਦਾ ਹੈ ਜਿਹੜਾ ਇਹ ਪਰਚਾ ਹੱਲ ਕਰ ਦੂਗਾ ਅਸੀਂ ਸਮਝਾ ਗਏ ਉਹਨੂੰ ਗਿਆਨ ਉਹ ਬੋਲ ਸਕਦਾ ਦਸ ਬੋਰੰਤ ਤੇ ਆ ਉਹ ਕਿਸੇ ਕੀਤੇ ਕੀ ਗਲਤੀ ਹੈ ਕੀ ਹੈ ਐ ਸਵਾਲ ਨੇ ਹੱਲ ਕਰ ਦਵੇ ਜਿਵੇਂ ਪਰਚਾ ਹੁੰਦਾ ਨਾ ਫੇਲ ਪਾਸ ਦਾ ਇਹ ਪਰਚਾ ਸਾਰੇ ਸਵਾਲ ਨੇ ਜਵਾਬ ਕਿਤੇ ਨਹੀਂ جواب ربے کوئی دسے کید کو آتما સ્વરૂપ ہے آتما ਦਾ સ્વરૂપ ਕੀ ਹੈ سوال ਆتماత్మ سارے کہہ رہے ہیں ਉਹਦਾ સ્વરૂપ ਕੀ ਹੈ ਦੱਸੋ ਕੀ ਹੈ ਹਾਂ ਕਹਾ ਸ੍ਰਿਸ਼ਟ ਕੋ ਵਿਚਾਰ ਸ੍ਰਿਸ਼ਟੀ ਦਾ ਵਿਚਾਰ ਕਿੱਥੋਂ ਸ਼ੁਰੂ ਹੁੰਦਾ ਆਤਮਾ ਤੋਂ ਬਿਨਾਂ ਦੱਸਿ ਸਿੱਧ ਪੈਦਾ ਨਹੀਂ ਹੋਈ ਸ੍ਰਿਸ਼ਟੀ ਕਿੱਥੋਂ ਪੈਦਾ ਹੋਈ ਕਿਵੇਂ ਪੈਦਾ ਹੋਈ ਇਹ ਵਿਚਾਰ ਦੱਸੋ ਇਹ ਵੀ ਸਵਾਲ ਹੈ ਕੌਣ ਧਰਮ ਕੋ ਕਰਮ ਹੈ ਕਹੋ ਸਗਲ ਵਿਸਥਾਰ ਧਰਮ ਦਾ ਕਰਮ ਕੀ ਹੁੰਦਾ ਹੈ ਕਰਮਾਂ ਦੀ ਗੱਲ ਜਿਹੜੀ ਪਿੱਛੇ ਹੁੰਨੇ ਕੌਣ ਧਰਮ ਕੋ ਕਰਮ ਹੈ ਕਰਮ ਦਾ ਕਰਮ ਕੀ ਹੈ ਕੀ ਕਰਮ ਕਰੀਏ ਜਿਹਦੇ ਨਾਲ ਧਰਮ ਦੀ ਪ੍ਰਾਪਤੀ ਹੋ ਜੇ ਸਮਝ ਆ ਜੇ ਇਹ ਵੀ ਸਵਾਲ ਹੈ ਕਹੋ ਸਗਲ ਵਿਸਥਾਰ ਸਾਰੀ ਇਹ ਤੋਂ ਸਭ ਜੀ ਜਵਾਬ ਲਈ ਦੇ ਸਕਦਾ ਦੋਹਰਾ ਕਹਿ ਜੀਤਬ ਕਹਿ ਮਰਨ ਹੈ ਕਮਨ ਸੁਰਗ ਕਾਹ ਨਰਕ ਕੈ ਜੀਤਬ ਜੀਵਣਾ ਕੀ ਚੀਜ਼ ਹੈ ਜਿਹਨੂੰ ਅਸੀਂ ਕਹਿੰਦੇ ਜੀਵਣਾ ਬਰਨਾ ਕੀ ਚੀਜ਼ ਹੈ ਬਹੁਤ ਕਿਰੂ ਕਹਦੇ ਨੇ ਕਮਨ ਸੁਰਗ ਕਾਹ ਨਰਕ ਨਰਕ ਸੁਰਗ ਕੀ ਚੀਜ਼ ਹੈ ਕਿਨੂੰ ਕਹਿਆ ਨਰਕ ਕਿਨੂੰ ਕਹਿਆ ਨਰਕ ਚਾਰ ਸਵਾਲ ਹੋ ਗਏ ਹੁਣੇ ਕੋ ਸੁਗੜਾ ਕੋ ਮੂੜਤਾ ਕਹਾ ਤਰਕ ਅਵਤਰਕ ਸੁਗੜਾ ਕੌਣ ਹੈ ਸਿਆਣਾ ਕੌਣ ਹੈ ਸੰਸਾਰ ਚ ਮੂਰ ਕੌਣ ਹੈ ਸੰਸਾਰ ਚ ਕਹਾ ਤਰਕ ਅਵਤਰਕ ਤਰਕ ਕਿੱਥੇ ਤੱਕ ਹੈ ਤਰਕ ਅਵਤਰਕ ਕਦ ਬਣ ਜਾਂਦਾ ਹੈ ਤਰਕ ਮਾੜੀ ਕੀ ਜ ਨਹੀਂ ਹੈ ਹੁਜਤ ਮਾੜੀ ਹੈ ਤਰਕ ਹੁਜਤ ਕਦ ਬਣ ਜਾਂਦਾ ਜਾ ਕੇ ਜਦ ਬੰਨ ਹਰਾਬੀ ਹੋ ਜਾਂਦਾ ਨਾ ਫਿਰ ਹੁਜਤਾ ਢੇਰ ਇਹਨਾਂ ਦੀ ਹੁਜਤਾ ਹੀ ਨੇ ਤਰਕ ਨਹੀਂ ਹੈ ਕੋਈ ਜਿਹੜੇ ਬੋਲਦੇ ਨੇ ਸਭ ਹੁਜਤਾਂ ਨੇ ਤਰਕ ਨਹੀਂ ਹੈ ਤਰਕ ਆ ਰਵ ਤਰਕ ਦੇ ਵਿੱਚ ਫਰਕ ਦੱਸਣੇ ਕੀ ਹੁੰਦਾ ਸਵਾਲ ਹੈ ਵੀ ਬੋਲਦਾ ਪਾਇ ਖੜਾ ਛੜਾਣਾ ਔਖਾ ਹੋ ਜੂਗਾ ਹੁਣ ਇਹਨਾਂ ਨੂੰ ਜਿਨ੍ਹਾਂ ਦੇ ਘਰ ਕੁੱਤੇ ਹੁੰਦੇ ਨੇ ਨਾ ਪਹਿਲਾਂ ਹੀ ਵਾਲੇ ਹੋਏ ਭਗੜਾਣੇ ਵਰਗੇ ਉਹਨਾਂ ਦੇ ਘਰ ਖੰਗੀ ਦਾ ਨਹੀਂ ਹੁੰਦਾ ਜਾ ਕੇ ਚੁੱਪ ਕਰਕੇ ਰੱਖ ਜੀਦਾ ਬਿਲਕੁਲ ਨਹੀਂ ਕਰੀਦੀ ਹੁੰਦੀ ਜੇ ਕੋਤੇ ਮਗਰ ਪੈਣਾ ਫੇਰ ਬਹੁਤ ਔਖਾ ਹੈ ਫੇਰ ਕਰਦਿਆਂ ਨੂੰ ਮਿੱਟਾ ਕਰਨੀਆਂ ਪੈਂਦੀਆਂ ਵੀ ਇਹਨਾਂ ਨੂੰ ਸਭੋ ਮੈਂ ਦਾ ਖਾ ਲਿਆ ਇਹਦਾ ਕਰਦੇ ਕੁੱਤੇ ਬਹੁਤ ਜਬਰਦਸਤ ਨੇ ਜਿਹੜਾ ਕਰ ਨੂੰ ਤੁਸੀਂ ਛੇੜ ਲਿਆ ਨਲਕਾਰਤਾ ਇਹ ਕੁੱਤੇ ਨੇ ਐਸਾ ਮਗਰ ਪੈਣਾ ਤੁਹਾਨੂੰ ਖੜਾ ਛੜਨੋਂ ਔਖ ਹੋ ਜਣ ਬੋਲਦਾ ਪਏ ਹੁਣ ਦੇਖਿਆ ਹੁੰਦੀ ਕੀ ਹੈ ਭਾਈ ਜਾਨੂ ਭੱਜਣ ਵੀ ਨਹੀਂ ਦੇਣਾ ਇਹਨਾਂ ਨੇ ਕੋਤਾ ਭੱਜਣ ਦਿੰਦਾ ਭਾਈ ਤੇ ਨੂੰ ਘੇਰ ਲੈਣਾ ਪੂਰੇ ਤੇ ਥੋੜੀ ਉਹ ਮਤਲਬ ਬੱਸ ਕਹਣਗੇ ਤੁਸੀਂ ਰੋਗੇ ਵੀ ਥੋੜਾ ਪੈਣਾ ਨਹੀਂ ਛੱਡੋ ਤੋਵਾ ਤੋਵਾ ਕਾ ਕੇ ਛੱਡਾਂਗੇ ਤੁਹਾਡੀ ਤੁਸੀਂ ਕਹ ਵੀ ਚੁੱਪ ਕਰਕੇ ਵੀ ਬੋਲਦਾ ਨਹੀਂ ਕੋਈ ਉਹ ਬੋਲਣਾ ਤਾਂ ਅਸੀਂ ਉਹਨਾਂ ਦੀ ਲਿਹਾਜ਼ ਕਰਕੇ ਨਹੀਂ ਬੋਲੇ ਕਾਲ ਦਫ਼ਤਰੀਆਂ ਦੀ ਇਹੋ ਕਹਣਗੇ ਵੀ ਆਪੇ ਬੋਲਣ ਲੱਗੇ ਲੜਾਈ ਬਾਰ-ਬਾਰ ਕਰਲੀ ਤਨਿ ਬੁੱਲੇ ਬੋਲੋ ਤੁਸੀਂ ਕੀ ਸੀਗੇ ਕੀ ਸੀ ਸਾਲਾ ਨੂੰ ਜਾਣ ਦੇਣਾ ਸੀ ਜਿਹਦੇ ਕੋਲ ਹੈਗਾ ਕੁਝ ਸੁਭੋਗਦਾਨ ਨੂੰ ਤਾਂ ਬੜੀ देर ਦੇ ਜਾਣ ਦੇਣਾ ਸਾਨੂੰ 1980 ਦੇ ਜਾਣ ਦੇਣਾ ਸੀ ਉਹਦੇ ਪੱਲੇ ਕੀ ਹੈ ਉਹ ਗਿੱਦਰ ਦੀ ਜਾਂ ਫੌਜਾਂ ਦੀ ਫਰੰਟ ਵੱਲੋਂ ਭਜਦਾ ਹੀ ਹੁੰਦਾ ਉਹ ਗਾ ਕੋਤੇ ਹੱਬ ਲੈਦੇ ਨੇ ਪਾੜ ਦੇ ਚਿੱਠੀ ਹੈ ਨਹੀਂ ਉਹ ਚਿੱਠੀ ਲੈ ਕੇ ਆਇਆ ਸੀ ਤੇ ਤੇ ਲੱਗਿਆ ਸੀ ਮੈਨੂੰ ਨੰਬਰਦਾਰੀ ਬਣ ਗਿਆ ਪਿੰਡ ਦੀ ਗਾਂ ਦੇ ਪੈ ਕੇ ਕੁੱਤੇ ਉਹ ਕਹਿੰਦੇ ਚਿੱਠੀ ਦਿਖਾ ਦੇ ਕਹਿੰਦਾ ਇਹਨਾਂ ਪੜ੍ਹਨੇ ਤੂੰ ਆ ਜਾ ਭੱਜਿਆ ਗਦੜੀ ਕਹਿੰਦੇ ਵੀ ਚਿੱਠੀ ਦਿਖਾ ਦੇ ਤੂੰ ਤੂੰ ਕਹਿੰਦਾ ਵਾ ਨੰਬਰਦਾਰੀ ਤੂੰ ਭੱਜਿਆ ਛੇਤੀ ਕਰ ਤੇਰੀ ਜਾਣ ਦੇ ਪੜਾਈ ਐ ਜੇ ਕੁੱਤੇ ਮਗਰ ਪੈਣ ਗਿਆ ਤੇਰੇ ਵੀ ਖੜਾ ਹੀ ਰਹਿਣਾ ਕੋਨੰਦਾ ਜਸ ਹੈ ਕਵਨ ਕੋਨੰਦਾ ਲਧਿਆ ਕੀ ਚੀਜ਼ ਹੈ ਜਸ ਹੈ ਕੀ ਨੂੰ ਕਹਨੇ ਨੇ ਤੇ ਕੋਨੰਦਾ ਨੰਦਾ ਰੋੜਾ ਪਾਈ ਜਨ ਨੇ ਹੁੰਦੀ ਸਵਾਲ ਹੈ ਇਹ ਜਸ ਕੀ ਚੀਜ਼ ਹੁੰਦੀ ਹੈ ਜਸ ਹੈ ਕਵਨ ਕਵਨ ਪਾਪ ਕਹੈ ਧਰਮ ਪਾਪ ਕੀ ਹੈ ਧਰਮ ਕੀ ਹੈ ਦੱਸੋ ਇਹ ਸਵਾਲ ਨੇ ਇੱਥੇ ਆ ਕੇ ਸਵਾਲ ਨੇ ਜਾ ਕੇ ਆਦ ਗੁਰੂ ਗ੍ਰੰਥ ਸਾਹਿਬ ਪੜਾ ਕੇ ਬਾਦ ਦੇ ਸਵਾਲ ਨੇ ਸਮਝ ਕੇ ਦੇ ਸਕਦੇ ਨਹੀਂ ਦੇ ਨਹੀਂ ਸਕਦੇ ਸੌਖੇ ਲੱਗਦੇ ਨੇ ਕਹਿਣ ਨੂੰ ਇਹ ਜਿਹੜਾ ਵਾਲਾ ਦੇ ਜਵਾਬ ਨੇ ਗੁਰੂ ਗ੍ਰੰਥ ਸਾਹਿਬ ਦੇ ਵਿੱਚ ਇਹਨਾਂ ਸਵਾਲਾਂ ਦੇ ਸਾਰੇ ਜਵਾਬ ਨੇ ਉੱਤੇ ਹਾਂ ਕਵਨ ਜੋਗ ਕੋ ਭੋਗ ਹੈ ਕਵਨ ਕਰਮ ਅਪਕਰਮ ਜੋਗ ਦਾ ਭੋਗ ਕੀ ਹੈ ਉਹ ਖਰਾ ਕੀ ਹੈ ਜਿਹਦੇ ਖਾਣ ਨਾਲ ਆਤਮਾ ਪ੍ਰਾਤਮਾ ਇੱਕ ਹੋ ਜਾਂਦੀ ਹੈ ਆਪਣੇ ਮੋੜ ਨਾਲ ਜੁੜ ਜਾਈਦਾ ਉਹ ਕਿਹੜਾ ਭੋਗ ਆ ਕੀ ਖਾਈਦਾ ਉਹ ਜਵਾਬ ਦਿਓ ਸਿੱਧ ਕੋਸ਼ ਵਿੱਚ ਜਵਾਬ ਹੈਗਾ ਉਹਦਾ ਜਿਹਨੂੰ ਪੜ੍ਹੀ ਹੋਵੇ ਸੁਣੀ ਹੋਵੇ ਹੋਰ ਵੀ ਜਗ੍ਹਾ ਬਥੇਰੀ ਜਗ੍ਹਾ ਜਵਾਬ ਹੈ ਜੋ ਕੋ ਭੋਗ ਕੀ ਹੁੰਦਾ ਜੇਦੂ ਪੋਗ ਰੋਗ ਵੀ ਹੁੰਦਾ ਨੇ ਭੋਗ ਤਾਂ ਰੋਗ ਨੇ ਪੋਗ ਤਾਂ ਰੋਗ ਜੋਗ ਦਾ ਭੋਗ ਕੀ ਹੋਇਆ ਕਮਨ ਕਰਮੋ ਅਪਕਰਮ ਕਰਮ ਕੀ ਹੈ ਅਪਕਰਮ ਕੀ ਹੈ ਐਸਾ ਕਰਮ ਕਿਹੜਾ ਜਿਹਨਾਂ ਫਸੀ ਜਾਂਦਾ ਜਿਹਦੇ ਨਾਲ ਦਲਦਲ ਦੇ ਵੀ ਤਸੀ ਜਾਂਦਾ ਦਲਦਲ ਦੇ ਵਿੱਚ ਤਾਂ ਜਾਵੜਿਆ ਕੋਸ਼ਿਸ਼ ਕਰਦਾ ਨਿਕਲ ਨਹੀਂ ਜਾਂਦਾ ਥੱਲੇ ਨੂੰ ਉਹ ਕਿਹੜਾ ਕਰਮ ਹੈ ਨਿਕਣ ਵਾਲਾ ਬਿਨ ਕਿਵੇਂ ਫਿਰ ਕੋਸ਼ਿਸ਼ ਕਰਦਾ ਇਹਨੂੰ ਥੱਲੇ ਨੂੰ ਲੈ ਕੇ ਜਾਂਦੀ ਹੈ ਨਿਕਲੇ ਕਿਵੇਂ ਕੌਣ ਕੱਢੇ ਰੂ ਆਪੇ ਫਾਤੜੀਏ ਤੈਨੂੰ ਕੌਣ ਛੜਾਵੇ ਰਾਮ ਹਾਂਜੀ ਦੁਹਰਾ ਕਹੋ ਸੋ ਸ਼ਰਮ ਹੈ ਦਮ ਕੋ ਕਹਾ ਕਹੰਤ ਕਹੋ ਤਾਂ ਸ਼ਰਮ ਦਾ ਕਹ ਕਹੇ ਸ਼ਰਮ ਕਿਉਂ ਕਹਦੇ ਸੋਖ ਹੈ ਜਿਹਨੂੰ ਕਹਦੇ ਨੇ ਸ਼ਰਮ ਮਿੰਤ ਉਹ ਕੀ ਬਾਣੀ ਸ਼ਰਮ ਕੀ ਹੈ ਇਹਨੇ ਮਿੰਤ ਕੀ ਕਰ ਲਈ ਅਸੀਂ ਕਾਲ ਕਮਾਈ ਕੀ ਹੈ ਜਿਹਨੂੰ ਕਹਿੰਦੇ ਨੇ ਦੋ ਕਾਲਾ ਕੀ ਹੈ ਧਰਮ ਦੀ ਕਾਲਾ ਕੀ ਹੁੰਦੀ ਹੈ ਧਨ ਕੋ ਕਹਾ ਕਹੰਤ ਜਿਹੜਾ ਪੈਸਾ ਇਹਨੂੰ ਕੀ ਕਹਿੰਦੇ ਨੇ ਸੰਸਾਰ ਦੇ ਵਿੱਚ ਧਨ ਧਨ ਪੈਸੇ ਨੂੰ ਕਹਿੰਦੇ ਨੇ ਦੌਲਤ ਕੀ ਚੀਜ਼ ਹੈ ਧਰਮ ਦੇ ਵਿੱਚ ਦੌਲਤ ਕਿਹੜੀ ਚੀਜ਼ ਦੌਲਤ ਹੈ ਕਿਹੜੀ ਚੀਜ਼ ਦੌਲਤ ਨਹੀਂ ਹੈ ਧਨ ਕਹਾ ਕਹੰਤ ਇਹਨੂੰ ਕੀ ਕਹਿੰਦੇ ਨੇ ਧਨ ਨਾਲ ਭਾਸ਼ਾ ਹੋਰ ਹੈ ਇਹਨਾਂ ਨਾਲ ਭਾਸ਼ਾ ਹੋਰ ਹੈ ਧਰਮ ਦੀ ਸੰਸਾਰੀਆਂ ਦੀ ਭਾਸ਼ਾ ਹੋਰ ਹੈ ਇਹ ਤਾਂ ਭਾਸ਼ਾ ਹੀ ਹੋਰ ਹੈ ਫਿਰ ਐ ਸਵਾਲ ਨੇ ਇਹ ਸੰਸਾਰੀਆਂ ਦੇ ਸਵਾਲ ਨੇ ਕੋ ਸੂਰਾ ਦਾਤਾ ਕਵਣ ਕਹੋ ਤੰਤ ਕੋ ਮੰਤ ਕੋ ਸੂਰਾ ਸੂਰਾ ਸੂਰਮਾ ਕੌਣ ਹੈ ਕਿ ਜਿਹਨਾਂ ਨੂੰ ਗੋਲਡਮੈਨ ਮਿਲਦੇ ਨੇ ਸੂਰਮੇ ਨੇ ਕਿ ਜਿਆਦਾ ਆਰਮੀ ਨਾਲ ਲੜਨ ਵਾਲਾ ਕੋਈ ਸੂਰਮਾ ਸੂਰਮਾ ਕੀ ਕਹਿੰਦੇ ਨੇ ਸੱਚਖੰਡ ਵਿੱਚ ਸੂਰਮਾ ਕੌਣ ਹੈ ਸਵਾਲ ਹੈ ਇਹ ਤੇ ਸੰਸਾਰ 'ਚ ਕਿਹਨੂੰ ਕਹਿੰਦੇ ਦਾ ਰੌਲਾ ਨਹੀਂ ਦਰਗਾਹ ਦੇ ਵਿੱਚ ਸਵਾਲਾਂ ਦੇ ਜਵਾਬ ਨੇ ਦਰਗਾਹ ਦੇ ਵਿੱਚ ਕੌਣ ਕੀ ਕੌਣ ਬੰਨੇ ਹੋਏ ਨੇ ਇਹ ਗੁਰਬਾਣੀ ਕਿਹਨਾਂ ਨੂੰ ਵਰਦੀ ਹੈ ਸੰਸਾਰ ਇਹਨਾਂ ਨੂੰ ਬੋਲਦਾ ਉਹਦਾ ਨਹੀਂ ਰੌਲਾ ਸਭ ਨੂੰ ਪਤਾ ਹੀ ਹੋ ਕੋ ਸੂਰਾ ਦਾਤਾ ਕਵਨ ਦਾਤਾ ਕਵਨ ਦਾਤਾ ਕੌਣ ਹੁੰਦਾ ਸੋ ਤਾਂ ਪਤਾ ਹੀ ਆ ਦਾਤੇ ਦਾ ਗੁਰਬਾਣੀ ਅਨੁਸਾਰ ਦਾਤਾ ਕੌਣ ਦਾ ਤਾਂ ਕਿੰਨੂ ਕਿਹਾ ਜਾਊਗਾ। ਕਹੋ ਤੰਤ ਕੋ ਮੰਤ ਇਹ ਜਿਹੜਾ ਹੈ ਤੰਤ ਸਾਰਾ ਇਹਦਾ ਇਹਦੀ ਸਾਰੀ ਬਥਿਆ ਦੱਸੋ। ਇਹਦਾ ਤਤ ਦੱਸੋ ਇਹ ਗੱਲਾਂ ਦਾ ਸਾਰਾ ਤਤ ਸਾਰ ਦੱਸੋ। ਇਹ ਜੋ ਕਿਹਾ ਬੁੱਤ ਕਿਹਾ ਹੋਇਆ ਹੈ ਜੋ ਇਹਦਾ ਸਾਰਾ ਸਾਡੂ ਤਤ ਦੱਸੋ ਸਾਰ ਸਮਝਾਓ ਇਹਨਾਂ ਗੱਲਾਂ ਦਾ। ਦੋਹਰਾ ਕਹਾਰੰਕ ਰਾਜਾ ਕਵਨ ਹਰਖ ਸੋਗ ਹੈ ਕਵਨ ਰਾਜਾ ਕੌਣ ਗੁਰਮਤ ਦੇ ਦ੍ਰਿਸ਼िकोण ਤੋਂ ਰਾਜਾ ਕੌਣ ਹੈ ਤਰਕ ਕੌਣ ਹੈ ਹਰਖ ਕੀ ਹੈ ਤੇ ਸੋਗ ਕੀ ਹੈ ਹਰਖ ਸੋਗ ਕਿਹਨੂੰ ਕਹਿੰਦੇ ਨੇ ਕੋ ਰੋਗੀ 라ਗੀ ਕੌਣ ਕਹੋ ਤੰਤ ਕਹੋ ਤਤਮ ਉਹ ਤਵਨ ਕੋ ਰੋਗੀ 라ਗੀ ਕਮਲ 라ਗੀ ਆ ਰੋਗੀ ਚ ਕੀ ਫਰਕ ਹੈ ਰਾਗੀ ਕਦਰੋਗੀ ਨਹੀਂ ਹੁੰਦਾ ਨਹੀਂ ਤਾਂ ਰਾਗੀ ਰੋਗੀ ਹੁੰਦਾ ਹੀ ਹੈ ਹਰ ਰਾਗੀ ਰੋਗੀ ਹੈ ਰਾਗੀ ਵੀ ਹੁਵੇ ਰੋਗੀ ਵੀ ਨਾ ਹੋਵੇ ਕਿਹੜੀ ਸਟੇਜ ਹੈ ਕੋ ਰਾਗੀ ਕੋ ਰੋਗੀ ਰਾਗੀ ਕਵਣ ਕੋ ਰੋਗੀ ਰਾਗੀ ਕਵਣ ਕਹੋ ਤਤਮੋਹੇ ਤਵਣ ਰਾਗੀ ਰੋਗੀ ਹੁੰਦਾ ਪਰ ਕਦੋਂ ਉਹਦਾ ਰੋਗ ਰਹਿ ਤੁਕਦਾ ਰੋਗੀ ਰਾਗ ਵੀ ਗਾਵੇ ਤੇ ਰੋਗ ਵੀ ਨਾ ਹੋਵੇ ਇੱਕ ਸਟੇਜ ਹੈ ਜੇ ਰੋਗੀ ਰਾਗੀ ਰੋਗੀ ਨਹੀਂ ਹੁੰਦਾ ਫਿਰ ਕੀਰਤ ਨਹੀਂ ਹੁੰਦਾ ਇਹ ਹੀ ਤਾਂ ਗੱਲ ਹੈ ਫਿਰ ਉਹ ਕੀਰਤਨ ਹੁੰਦਾ ਹੈ ਕੀਰਤਨ ਦੇ ਬਣਾਈ ਫਿਰਦੇ ਨੇ ਕੀਰਤਨੀਆਂ ਜਦ ਮਨਦਾ ਜਾਂ ਰੋਗੀ ਨੂੰ ਰਾਗੀ ਨੂੰ ਰੋਗ ਨਹੀਂ ਰਹਿੰਦਾ ਹੋ ਰੋਗ ਨਹੀਂ ਰਹਿੰਦਾ ਲੋਭ ਦਾ ਰੋਗ ਨਹੀਂ ਰਹਿੰਦਾ ਮੋਹ ਦਾ ਰੋਗ ਨਹੀਂ ਰਹਿੰਦਾ ਕੀਰਤਰੀ ਬਣਦਾ ਐਵੇਂ ਕੀਰਤਰੀ ਬਣ ਜੂਗਾ ਬੜੇ ਫਿਰਦੇ ਨੇ ਕੀਰਤਰੀਏ ਐਡੀ ਗੱਲ ਦੱਸ ਦਿੱਤੇ ਜਾਣ ਕੇ ਵੀ ਆਪਣੇ ਅੰਦਰ ਝਾਕ ਕੇ ਦੇਖ ਲਓ ਵੀ ਤੁਸੀਂ ਕੀਰਤਨੀਆ ਹੈਗੇ ਹੋ ਇਹ ਸਵਾਲਾਂ ਦੇ ਜਵਾਬ ਤਾਂ ਦੇ ਕਿ ਆਪਣੇ ਅੰਦਰ ਝਾਕ ਲੈਣ ਇਹ ਕਿ ਤੁਸੀਂ ਕੀਰਤਨੀਆ ਕਰ ਅੱਗੀਆਂ ਹੋ ਰੋਗੀਆਂ ਉਹ ਲਿਖਿਆ ਹੋਇਆ ਅਸੇ ਨਹੀਂ ਲਿਖਿਆ ਹੈ ਔਰ ਇਸ ਬਾਣੀ ਨੂੰ ਸਾਰੇ ਮੰਨਦੇ ਨੇ ਰਸਬਾਸ਼ਲ ਦੀ ਬਾਣੀ ਹੈ। ਅਕਾਲ ਉਸਤਤ। ਅਕਾਲ ਉਸਤਤ ਹੈ। ਔਰ ਰੋਗੀ ਹੋ ਗਏ ਤੁਸੀਂ। ਗੱਲਾਂ ਕਰਦੇ ਹੋ ਕਿਹੜੀਆਂ ਕੋਈ ਸ਼ਰਮ ਕਰੋ। ਹਾਂ।